ਕੋਚ ਬਸੋਚਨੀ ਕੌਚ ਕਸੇ ਕੌਚ ਕਸੇ ਬਾਰਾਜ ਬਲੋਚਨੀ ਬਾਰਾਜ ਬਲੋਚਨੀ ਬਾਰਾਜ ਹੁੰਦਾ ਕਬਲ ਹਿਰਦਾ ਬਲੋਚੜੀ ਤੇਰੇ ਹਿਰਦੇ ਵਿੱਚ ਅੱਖ ਹੈ ਤੀਸਰਾ ਨੇ ਤੜੜਾ ਹੁੰਦਾ ਨਾ ਤੀਸਰਾ ਨੇ ਵੈਸੇ ਕੁਝ ਨਹੀਂ ਹੁੰਦਾ ਸਭ ਸਾਰੀ ਬੁੱਧੀ ਐ ਬਾਲੀਆਂ ਅੱਖਾਂ ਦੀ ਦੇਖਦੀ ਹੈ ਜਦੋਂ ਬੁੱਧੀ ਬਵੇਖ ਬੁੱਧੀ ਹੋ ਜਾਂਦੀ ਹੈ ਨਾ ਫਿਰ ਬਾਲੀਆਂ ਅੱਖਾਂ ਨਹੀਂ ਦੇਖਣ ਦੀ ਲੋੜ ਨਹੀਂ ਹੁੰਦੀ ਸੰਸਾਰ ਨੂੰ ਤਾਂ ਉਹਨੇ ਦੇਖ ਲਿਆ ਹੀ ਨੀਰ ਸੰਸਾਰ ਦਾ ਮਤਲਬ ਹੀ ਨਹੀਂ ਕੋਈ ਦੇਖਣਾ ਸੰਸਾਰ ਤਾਂ ਬਚਾ ਦੇਖ ਲਿਆ ਸੰਸਾਰ ਸਮਝ ਲਿਆ ਉਹ ਦੇਖਣਾ ਕਿਉਂ ਦੇਖਣੀ ਵੀ ਆਤਮਾ ਆਪਣੀ ਆ ਦੂਜੇ ਦੀ ਆਪਣੇ ਆਤਮਾ ਜਾਂ ਦੂਜੇ ਦੀ ਦੇਖਣੀ ਕੀ ਬੁੱਧੀ ਆਪਣੀ ਤਾਂ ਪਤਾ ਹੀ ਹੈ ਦੂਜੇ ਦੀ ਦੂਜੇ ਦੀ ਬੁੱਧੀ ਨੂੰ ਤੋਲ ਲੈਣ ਲਾਰੇ ਇੱਕ ਰੁਕ ਬੋਲਣ ਤੇ ਉਹ ਹਿਰਦੇ ਦੀ ਅੱਖ ਬਣਾਣੀ ਤੋਲਿਆ ਜਾਂਦਾ ਵਾਲੀ ਅੱਖ ਨਾਲ ਜਮਾ ਤੋਲਦੂ ਦੂਜੇ ਦੀ ਗੱਲ ਦਾ ਵਜ਼ਨ ਤੋਲਣਾ ਤੇ ਦੂਜੇ ਦੀ ਬੁੱਧੀ ਨੂੰ ਤੋਲਣਾ ਇੱਕੋ ਹੀ ਗੱਲ ਕਿੱਥੇ ਬੋਲਦਾ ਕਿਨੇ ਘਰਾਂ ਵਿੱਚ ਬੋਲਦਾ ਕਿੱਡੀ ਜੜ ਓਛੀ ਆ ਜਾਂ ਜੜ ਗਹਿਰੀ ਏ ਕਿੰਡੀ ਗੱਲ ਸੱਚ ਆ ਪਿਆ ਗੱਲ ਫੋਕੀ ਹੋਈ ਏ ਜੇ ਤਾਂ ਗੱਲ ਸੱਚ ਤਾਂ ਮਿੱਠੀ ਏ ਨਹੀਂ ਤਾਂ ਫਿਰ ਜੇ ਸਾਖੀ ਆ ਉਹ ਕਾਲਪਨਾ ਗਾਥਾ ਫਿਰ ਜ਼ਲੂਣੀ ਏ ਉਹਨੂੰ ਜ਼ਲੂਣੀ ਕਹਿੰਦੇ ਨੇ ਜੇ ਐਵੇਂ ਆਲਪਤਾੜ ਫਿਰ ਫੋਕੀ ਫਿੱਕੀ ਏ ਨਾਨਕ ਫਿੱਕਾ ਬੋਲੇ ਤਨੂਨ ਫਿੱਕਾ ਹੋਈ ਹੋਈ ਗਨ ਵੀ ਹੁਲੀ ਗੱਲ ਫਿੱਕੀ ਹੈ ਜੇ ਕੋਈ ਸਾਖੀ ਵੀ ਹੈ ਗਿਆਨ ਵਾਲੀ ਇਹ ਤਾਂ ਕੋਈ ਗਿਆਨ ਵਰਦਾ ਹੈ ਉਸ ਲੋੜੀ ساری ਗੱਲ ਹੈ ਨਾ ਫਿਰ ਵੀ ਤੇ ਜੇ ਸੱਚਾ ਪਿਆਰ ਤਾਂ ਬਿਠਾ ਤਦ ਇਹਦੇ ਨੇ ਇਹ ਦੇਖ ਲੈਣੇ ਉਹ ਗੱਲਾਂ ਦੇ ਵਿੱਚ ਵੀ ਟੇਸਟ ਕਿਹੜਾ ਹੈ ਤੇ ਬਾਹਰ ਦੀ ਬਲੋਚੜੀ ਹਰਦ ਦੀ ਅੱਖ ਤੀਸਰਾ ਨੇਤਰ ਹਿਲਦੇ ਜਾਂਦਾ ਹੈ ਮੱਥੇ 'ਚ ਨਹੀਂ ਹੁੰਦਾ ਜਿਨ੍ਹਾਂ ਨੇ ਮੱਥੇ 'ਚ ਬਣਾਇਆ ਉਹ ਸਿਖ ਜੀਹ ਦਿੱਤੇ ਮੱਥੇ ਹੀ ਬੋਲਦੇ ਨੇ ਉਹ ਸਾਰੇ ਆਦਮੀ ਨੇ ਮੱਥੇ ਦਾ ਤਰੀਕਾ ਤ੍ਰਿਕੁਟੀ ਹੈਗੀ ਆ ਮੱਥੇ 'ਚ ਉੱਥੋਂ ਤਾਂ ਅੱਖਾਂ ਇਹਨਾਂ ਨਾਲੇ ਦੇਖਿਆ ਜਾ ਸਕਦਾ ਉੱਥੇ ਬਹਿ ਕੇ ਜੇ ਜੋ ਤ੍ਰਿਕੁਟੀ ਦਾ ਤਾਂ ਇਹੀ ਅੱਖਾਂ ਨਾਲ ਦੇਖੂ ਇਹਨਾਂ ਨਾਲੇ ਮੱਥੇ 'ਚ ਉਤੀ ਜੀ ਅੱਖ ਨਹੀਂ ਫੁੱਟਦੀ ਹੁੰਦੀ ਤੀਜੀ ਅੱਖ ਰਦਾ ਜਾਉਂਦਾ ਫਿਰ ਜਿਹੜੀ ਤੀਜੀ ਆ ਕਹਿੰਦਾ ਉਹ ਰਦਾ ਜਾਇ ਉਹ ਨੇਰੇ ਦੀ ਦੌੜ ਐ ਉਹ ਸੋਚ ਆਪਣੀ ਸੋਚ ਪਰ ਇਹ ਜਿਹੜੀ ਅੱਖ ਹਿਰਦੇ ਦੀ ਐ ਇਹ ਦੇਖਦੀ ਹੁੰਦੀ ਇਹਨੂੰ ਦੀਦਾ ਹੁੰਦਾ ਤੋ ਬੋਲੇ ਜੋ ਪੇਖੇ ਇਹ ਅੱਖ ਹੈ ਇਹ ਸੱਖ ਨਾਲ ਦੇਖ ਕੇ ਹੀ ਬੋਲੇ ਆ ਗਿਆ ਸਭ ਕੁਝ ਇਹ ਬਾਹਰ ਦੀ ਬਲੋਚੜੀ ਹੈ ਬ੍ਰਤਨ ਬਿਮੋਚਨੀ ਬ੍ਰਤਨ ਬਿਮੋਚਣੀ ਜਿਹੜੀਆਂ ਮਰਤੀਆਂ ਸੁਰਤੀਆਂ ਕੈਦ ਨੇ ਨਾ ਮਾਇਆ ਦੇ ਵਿੱਚ ਭਰਮ ਦੇ ਆਂਡੇ ਚ ਬੰਦ ਨੇ ਜਿੰਨੀਆਂ ਵਰਤੀਆਂ ਉਹਨਾਂ ਨੂੰ ਛਡਕਾਰਾ ਦਉਲੋ ਯੋ ਮੇਰੇ ਪਾਸ਼ਾ ਦੇ ਜਿਹੜੇ ਟੋਕਲੇ ਸੀ ਨਾ ਬੰਦੇ ਰਾਜੇ ਦੱਖਣ ਦੇ ਆਜ਼ਾਦ ਕਰਾਏ ਤੇ ਐ ਭਰਮ ਦੇ ਅੰਡੇ ਚੋਂ ਮੁਕਤੀ ਦਿਵਾਣੀ ਵਰਤਿਆਂ ਨੂੰ ਭਰਮ ਦੇ ਅੰਡੇ ਚ ਬੰਦਦਾ ਨਾ ਸਾਡੀ ਸਾਡੇ ਗਿਆਨ ਦਾ ਜਿੱਨਾ ਜਰ ਦਾਇਰਾ ਹੈ ਜਿੱਨਾ ਚ ਆਦਮੀ ਦੇ ਗਿਆਨ ਦਾ ਦਾਇਰਾ ਹੈ ਉਹ ਵਰਤੀ ਕਹਿ ਦਾਇਰੇ ਚ ਦਾਇਰੇ ਜਗਾ ਦਾ ਜਦ ਕਬੀਰ ਕਹਿੰਦਾ ਪ੍ਰੇਮ ਪਲੀਤਾ ਪ੍ਰੇਮ ਪੈਣਾ ਬੈਠਾ ਹੂ ਤਿਰ ਪ੍ਰੇਮ ਕੀਓ ਤੈ ਨਹੀਂ ਪ੍ਰਭ ਆਇਓ ਆਇਓ ਪ੍ਰੇਮ ਪਲੀਤਾ ਸੁਰਤ ਹਵਾਈ ਗੋੜਾ ਗਿਆਨ ਚਲਾਇਆ ਅਗਨ ਕਿੱਥੋਂ ਆਈ ਪਲੀਤੈ ਵਾ ਕਿੱਥੋਂ ਪਈ ਬ੍ਰਹਮ ਅਗਨ ਦਾ ਸਾਇਦੇ ਪਰ ਜਾਲੀ ਇੱਕੋ ਚੋਰ ਸਜਾਇਆ ਇਹ ਗੋੜਾ ਗਿਆਨ ਚੱਲੇ ਤੇ ਬਿਰਤੀ ਬਬੋਚਨ ਹੋ ਗਈ ਸਰਵਿਆਪੀ ਹੋ ਗਈ ਵਰਤੀ ਉੱਗਿਆ ਗਿਆਨ ਅੰਦਰੋਂ ਇੱਕ ਹੋਏ ਤਾਂ ਉਹ ਕੋ ਜਿਹੜੇ ਇੱਕ ਹੋਣਗੇ ਉਹ ਜਾਣਗੇ ਉਹ ਜਨ ਪਦਾਰਥ ਪਾਲਣਗੇ ਮਾਇਆ ਪਰੇ ਚਲੇ ਜੰਗੇ ਦੇ ਅੰਡੇ ਨੂੰ ਤੋੜ ਕੇ ਬਾਹਰ ਚਲੇ ਜਾਣਗੇ ਉਹਨਾਂ ਦਾ ਕੀ ਹੋਊਗਾ ਗੁਰਪ੍ਰਸਾਦ ਪਰਮ ਦਾ ਨਾਸ ਹੋ ਜੂਗਾ ਗੁਰਪ੍ਰਸਾਦ ਐਸਾ ਗਿਆਨ ਦਊ ਹੈ ਬਵੇਖ ਬੁੱਧੀ ਇਹ ਗੁਰਮੁਖ ਦਾ ਗਿਆਨ ਐਸਾ ਹੁੰਦਾ ਵਰਤਿਆ ਵਿਵੋਚਨ ਹੋ ਜਾਂਦੀ ਉਹਦੇ ਪਰਮਦਾ ਨਾਸ ਕਰ ਲੈਂਦੀ ਉਹਨੇ ਆਪਣੀ ਉਹ ਪਰਮਦਾ ਨਾਸ ਕਰਾਇਆ छुटकारा ਹੋ ਗਿਆ ਵਰਤੇ ਬੋਚਨ ਬਹੁਤ ਇੰਪੋਰਟੈਂਟ ਔਖਾ ਆ ਰਿਹਾ ਜੋ ਜੋ ਪਿੱਛੇ ਨੂੰ ਆ ਰਹੇ ਹਨ ਉਹਨੂੰ ਹੀ ਆ ਰਿਹਾ ਕਬ ਸੋਚ ਬਿ ਸੋਚ ਨਹੀਂ ਸੋਚ ਜਿਹੜੀ ਹੈਗੀ ਵਿਪੋਚਨ ਦੇਣਾ ਕਿਸ ਨੂੰ ਔਗੜ ਸਾਰੇ ਕੱਟ ਦੇਣ ਗੁਣ ਪੈਦਾ ਕਰ ਦੇਣ ਔਗੜ ਕੱਟ ਦੇ ਸੋਚ ਬਿ ਸੋਚ ਨਹੀਂ ਜਿਹੜੀ ਸੋਚ ਹੈ ਆਪਣੀ ਸੋਚ ਜਿਹੜੀ ਸੀ ਬਿਲਕੁਲ ਖਤਮ ਕਰਦੀ ਸੋਚ ਜਿੱਥੋਂ ਪੈਦਾ ਹੁੰਦੀ ਸੀ ਵਾਪਸ ਚਲੀ ਗਈ ਵਾਪਸ ਪੈਦਾ ਨਹੀਂ ਹੁੰਦੀ ਸੋਚ उल्टी करती भी सोच करती सोच नु पुठा मोड़ता <laughs> <laughs> बुझ गई आग निखसे ना तू सोच की सी तू निकल निकलदा सी या त्रिशला नहीं रही कोई इधर बुझ गई तू आ किथों निकल दा। सोच पैदा ही नहीं हुंदी कहना वाला सोच पैदा ही री हुंदी सोच की चिंता चिंता कोई पैदा ही नहीं हुंदी ਪਾਣੇ ਤੇ ਰਹੇ ਤੇ ਚਿੰਤਾ ਪੈਦਾ ਨਹੀਂ ਹੁੰਦੀ ਹੁੰਦੀ ਜਿਹੜਾ ਪਾਣੇ ਚ ਰਹਿੰਦਾ ਉਹਦੇ ਵਾਸਤੇ ਚਿੰਤਾ ਕੋਈ ਚੀਜ਼ ਨਹੀਂ ਹੁੰਦੀ ਪਾਣੇ ਵਾਲੇ ਦਿਨੇ ਪਾਣੇ ਚਲਣਾ ਚਾਹਤਾ ਨੋ ਦੀ ਕੋਈ ਚੀਜ਼ੇ ਚਿੰਤਾ ਉਹ ਨਾ ਜਰਾ ਜਨਾ ਆਪਣੇ ਪਾਣੇ ਚਲਦਾ ਹੈ ਕਸੇ ਕਵਚ ਕਸੇ ਕਾਜ ਜਿਹੜੀ ਕਵਚ ਹੈ ਪਰ ਕਮਜ ਕਸ ਕੇ ਰੱਖਣੀ ਪੈਂਦੀ ਹੈ ਫੇਰ ਵੀ ਜਨਾ ਜਰ ਸਰੀਰ ਹੈ ਜਿਹੜੇ ਵਾਇਆ ਦੇ ਔਗਣੇ ਇਹਨਾਂ ਤੋਂ ਫੇਰ ਵੀ ਸਾਵਧਾਨ ਰਹਿਣਾ ਪੈਂਦਾ ਲੋਭ ਤੋਂ ਚੌਕਸ ਰਹਿਣਾ ਪੈਂਦਾ ਸੰਤੋਖ ਦਾ ਜਿਹੜਾ ਸੂਤ ਨੇ ਤੜੱਗੀ ਜਿਹੜੀ ਲੱਕ ਲੱਕ ਵੱਢ ਕੇ ਰੱਖਣਾ ਪੈਂਦਾ ਵਾਇਆ ਦਾ ਕੋਈ ਵੀ ਬਾਹਰ ਲੋਭ ਦਾ ਮੋਹ ਦਾ ਇਹਦਾ ਵਸਾ ਨਹੀਂ ਕਰਨਾ ਲੋਭ ਫਿਰ ਜਾ ਗਿਆਊਗਾ ਕੌਟ ਕਸ ਕੇ ਰੱਖਣੀ ਪਊਗੀ ਜੇ ਤਾਤਾ ਦੁਖਤ ਹੋ ਗਈ ਇਹ ਤਾਂ ਠੀਕ ਹੈ ਪਰ ਮਦਾਂ ਅੰਡਾ ਫਟ ਗਿਆ فرمایا ਦੇ ਛੜੀ ਪਹਿਲਾਂ ਹੁਣ ਡੜੀ ਇਹ ਧਿਆਨ ਇਹ ਕਵਚ ਕਸ ਕੇ ਰੱਖੀ ਕਵਚ ਕਸ ਕੇ ਰੱਖ ਕਵਚ ਲਾ ਕੇ ਨਹੀਂ ਰੱਖਣੀ ਵੀ ਹੁਣ ਕੋਈ ਖਤਰਾ ਨਹੀਂ ਹੈ ਅਭੀ ਤਾਂ ਸਮੁੰਦਰ ਵਿੱਚ ਗਿਆ ਜਾਂ ਜਿੰਨਾ ਚਿਰ ਸਰੀਰ ਹੈ ਨਾ ਉਸ ਪੁੱਧਰ ਛੇ ਕੋਚ ਕਸੇ ਉਹਨੂੰ ਕਿਹਾ ਇਹ ਰਗਲਾ ਵੀ ਤਾਂ ਨੋ ਸਮੁੰਦਰ ਵਿੱਚ ਕੋਚ ਕਸੇ ਹੈ ਧਾਮਨੀ ਪ੍ਰਹਸ ਹੈ ਧਾਮਨੀ ਪ੍ਰਹਸ ਜਿਵੇਂ ਬਿਜਲੀ ਚਮਕਦੀ ਐਸਾ ਹੱਸਾ ਹੱਸਾ ਵੀ ਐਸਾ ਹੱਸੇ ਜੀ ਵੀ ਬਹੁਤ ਗਿਆਨ ਹੈ ਹੱਸੇ ਜੀ ਵੀ ਰੋਸ਼ਨੀ ਹੋਈ ਹੈ ਸੁਕਸਰ ਨਾਸੇ ਸੁਕਸਰ ਨਾਸੇ ਜਿਹੜੇ ਸਾਡੇ ਨੇ ਤੀਰ ਸਰ ਤੀਰ ਦੇ ਤੀਰ ਕ੍ਰਿਸ਼ਨਾ ਤੀਰ ਰਹਿਣ ਘਟ ਪੀਤਰ ਜੋ ਗੜ ਲਿਓ ਰਜਾਈ ਜਿਹੜੇ ਅੰਦਰੋਂ ਤ੍ਰਿਸ਼ਣਾਂ ਦੇ ਤੀਰ ਨਿਕਲਦੇ ਤੇ ਅੰਦਰ ਹੀ ਨਾਸ ਹੋ ਗਏ ਖਤਮ ਉਹ ਗਿਆ ਮੁਝ ਗਈ ਆਗ ਨਕਸੇ ਨਾ ਤੂੰ ਜਿੰਨੇ ਤ੍ਰਿਸ਼ਨਾ ਦੇ ਤੀਰ ਸੀ ਅੰਦਰ ਅੰਦਰ ਹੀ ਨਾਸ ਕਰਤੇ ਫੈਕਟਰੀ ਉਹ ਬੰਦ ਹੋ ਗਈ ਅੱਗ ਸੀਗੀ ਅੱਗ ਤੋਂ ਧੂਆ ਨਿਕਲਦਾ ਸੀ ਅੱਗੇ ਨਹੀਂ ਰਹੀ ਉਹ ਨਾਸ ਕਰਤੇ ਤੀਰ ਸਰਉਦੇ ਤੀਰ ਸੁਕ ਸਰ ਨਾਸੇ ਸੋਭ੍ਰਿਤ ਸੁਭਾਸੇ ਸੁਕ ਸਰ ਕੀ ਸੀ ਉਹ ਖੁਸ਼ਕ ਸੀਗੇ ਖੁਸ਼ਕ ਤੀਰ ਮੰਨਦੇ ਸੁਕਮਾਨੂ ਕਹਿੰਦੇ ਨੇ ਨਾ ਉਹਦੀਆਂ ਛਾਵਾਂ ਸੁਖ ਕੌਣ ਹੈ ਤੋਤਾ ਹੈ ਮਾਨਾ ਮਾਂ ਜਿਹੜੇ ਤੀਰ ਚਲਾਉਂਦਾ ਤਾਂ ਮਾਨੇ ਕੀ ਬੰਦੇ ਤੀਰ ਕੀ ਸੁਖ ਸਰਦ ਨੇ ਬੰਦੇ ਤੀਰ ਬੰਦੀ ਛਮ ਉਹ ਕਿੱਥੇ ਚਲਦੀ ਆ ਦੇਖੋ ਕਬੂਦ ਕਵਾਨ ਚੜਾਈ ਉਹ ਕਬੂਦ ਦੀ ਕਵਾਨ ਤਾਂ ਚਲਦੀਆਂ ਸੀ ਉਹਨੇ ਕਬੂਦ ਕਵਾਨ ਚੜਾਈ ਸੀ ਤ੍ਰਿਸ਼ਨਾ ਤੀਰ ਰਾਜਾ ਘਟ ਪੀ ਤਰੀ ਉੱਪਰ ਲਿਓ ਨਾ ਜਾਈ ਉਹ ਤੀਰ ਇਹ ਨਹੀਂ ਹੈ ਲੱਭਦਾ ਉਹ ਚਲਾਉਣ ਨੂੰ ਤੀਰ ਹੈ ਨਹੀਂ ਆ ਸਾਰੇ تیر ਨਾਸ ਕਰਤੇ ਸੁਖਸਰ ਇਹ ਨੂੰ ਨਹੀਂ ਪਤਾ ਪੜਨ ਤਨੂ ਵੀ ਕੀ ਐ ਸੁਖਸਰ ਹੁੰਦਾ ਸੁਖ ਤੋ ਤੇ ਨੂੰ ਐ ਨੇ ਤੋਦਾ ਵਾਣਾ تیرੋ ਲੈ ਕੇ ਉਹਦੇ ਦਾ ਕ੍ਰਿਸ਼ਨ ਨੇ تیر ਹੁੰਦੇ ਨੇ ਵਿਚਾਰੇ ਨੇ ਹੋਰ ਇਹਦੇ ਕਾਦੇ ਹੁੰਦੇ ਨੇ تیر ਜੇਤਾ ਪੜਿਆ ਹਲਦਾ ਆਦੇ ਬਾਣੀ ਕਬੀਰ ਵਾਲੀ ਉਹ ਗੱਲ ਪੜਿਆ ਹੁੰਦਾ ਕ੍ਰਿਸ਼ਨ ਆ ਰਹਾਂ ਘਟ ਪੀਤਰਿਓਂ ਵੱਢ ਲੀਓ ਫੇ ਤੈਨੂੰ ਪਤਾ ਹੁੰਦਾ ਸੁਖ ਸਰ ਕੀ ਇਹਨੇ ਇਹਨੂੰ ਕੀ ਪਤਾ ਨੇ ਤਾਂ ਹੋਰ ਗੱਲ ਤੋਂ ਇਹਦੇ ਗ੍ਰੰਥਾਂ ਜੇ ਗੱਲਾਂ ਨਹੀਂ ਹੁੰਦੇ ਜਿਹੜੇ ਗ੍ਰੰਥ ਇਹ ਪੜ ਕੇ ਆਇਆ ਇਹ ਬਾਣੀ ਦੇ ਅਰਥ ਕੇ ਇਹ ਆਦਿ ਬਾਣੀ ਦੇ ਉੱਤੇ ਆਧਾਰਿਤ ਹੈ ਔਰ ਆਦਿ ਬਾਣੀ ਤੇ ਆਧਾਰਿਤ ਇਹ ਹੈ ਜਿਹਨੇ ਆਦਿ ਬਾਣੀਆਂ ਨਹੀਂ ਪੜ੍ਹੀ ਉਹਨੇ ਰੱਖਵੇਂ ਪਤਾ ਲੱਗ ਜੂ ਵੀ ਕੀ ਹੈ ਉਹਨੇ ਹੋਰ ਜਿਹੜੇ ਗ੍ਰੰਥ ਪੜ੍ਹੇ ਨਾਲ ਉਹਦਾ ਨਾਲ ਕੋਈ ਲੰਘ ਕੇ ਨਹੀਂ ਉਹਦਾ ਵਿਆਹ ਆਲਡ ਬਟਾਲੀਆਂ ਮਾਰੀ ਜਾਂਦਾ ਆਲਪਟਲੀਆਂ ਨੂੰ ਸਾਡੇ ਵਿਧਾਨ ਸੱਚ ਮੰਨ ਕੇ ਇਹਦੇ ਖਲਾਫ ਹੋ ਗਏ ਆਲਪਟਲੀਆਂ ਗੱਲਾ ਕਰਦੇ ਨੇ ਅਰਥ ਕਰਨ ਵਾਲੇ ਉਧਰ ਵੀ ਆਲਪਟਲੀਆਂ ਕੀਤੀਆਂ ਨੇ ਆਂਤ ਇਹਨਾਂ ਦੀਓ ਡੈਕਟਰੀ ਆਪਣੇ ਆਲੇ ਹਿੰਦੀ ਦੀ ਲਾਗੂ ਕਰਦੀ ਸੂਬ੍ਰਿਤ ਸੁਵਾਸੇ ਸੂਬ੍ਰਿਤ ਅਧਿਵ੍ਰਤੀ ਬਗਲੀ ਨਾ ਸੂਬ੍ਰਿਤ ਸੁਭਾਸੇ ਮਨ ਬਿਰਤੀ ਬਦਲ ਗਈ ਸੁਭਾਸੇ ਕਰਖਤਾ ਸੁਭਾਸੇ ਪਿਛਾਵਾਂ ਖਤਮ ਕਰਤੀ ਤੇ ਤ੍ਰਿਸ਼ਨਾ ਖਤਮ ਹੋ ਗਈ ਹੁਣ ਕੀ ਹੈ ਬਿਰਤੀ ਸ਼ੁੱਧ ਬਿਰਤੀ ਸ਼ੁਭ ਬਿਰਤੀ ਹੋ ਗਈ ਔਰ ਉਹਦੀ ਜਿਹੜੀ ਬਾਸ਼ਨਾ ਨਾ ਸੁਭਾਸੇ ਸੁਮੈਲ ਸੁਗੰਧੀ ਫੈਲ ਗਈ ਸੁਗੰਧੀ ਫੈਲ ਗਈ ਉਹ ਪਹਿਲਾਂ ਦੁਰਗੰਧ ਆਉਂਦੀ ਸੀ ਨਾ ਲਾਗ ਪੜੇ ਦੁਰਗੰਧ ਸੇ ਨਾਨਕ ਦਾ ਮਾਇਆ ਬੰਦ ਜਿਹੜੇ ਮਾਇਆ ਨਾਲ ਬੰਨੇ ਨੇ ਦੁਰਗੰਧ ਨਾਲ ਜੁੜੇ ਹੋਏ ਨੇ ਜਦ ਮਾਇਆ ਨਾਲ ਛੁੱਟ ਗਿਆ ਸੁਗੰਧੀ ਪੈਦਾ ਹੋ ਗਈ ਉਹਦੀ ਸੁਗੰਧੀ ਫੈਲ ਗਈ ਕਿਵੇਂ ਫੈਲ ਗਈ ਭਗਤ ਭਗਤ ਕਰ ਹਾਂ ਭਗਤ ਭਗਤ ਕਰ ਬਜਿਆ ਫੈਲ ਗਈ ਨਾ ਸੁਗੰਧੀ ਚੋ ਜਗਾਂ ਦੇ ਵਿੱਚ ਬਰੇਟਾ ਜਿਹਨੂੰ ਜਮਰੇਟਾ ਕਹਿੰਦੇ ਭਗਤ ਭਗਤ ਕਰਕੇ ਮਸ਼ਹੂਰ ਹੋ ਗਿਆ ਉਹ ਸੁਗੰਧ ਹੋ ਗਈ ਕੁਝ ਬੂ ਫਲਗੀ ਦੋਸ ਟਕਰਸੇ ਦੋਸ ਜਿਹੜੇ ਸੀਗੇ ਦੋਸ ਸੀ ਗ੍ਰਹਣ ਔਗਣ ਐਂ ਗ੍ਰਹਣ ਲਏ ਜਿਵੇਂ ਚੰਦਰਮੇ ਨੂੰ ਗ੍ਰਹਣ ਲੱਗ ਜਾਂਦਾ ਸੂਰਜ ਨੂੰ ਗ੍ਰਹਣ ਲੱਗਦਾ ਨਾ ਐਂ ਜਿਹੜੇ ਦੁਸ਼ਟ ਬੋਲਦੇ ਸੀ ਨਾ ਜਮਰੇਟਾ ਕਹਿਣ ਵਾਲੇ ਸੀ ਉਹਦੇ ਖਿਲਾਫ ਸੀ ਜਿਹੜੇ ਗੁਰਮਤਿ ਵਿਰੋਧ ਕਰਦੇ ਸੀ ਉਹਨਾਂ ਦੇ ਮੂੰਹ ਤੇ ਸਿਆਹੀ ਫਿਰ ਮੂੰਹ ਕਾਲੇ ਤੇ ਰਦਕਾਂ ਦੰਦਕਾਨੇ ਮੂੰਹ ਕਾਲੇ ਹੋਣ ਲੱਗੇ ਕਾਲੇ ਪੈਣ ਲੱਗੇ ਜਿਹੜੇ ਲੋਕਾਂ ਦੇ ਵਿੱਚ ਬੜੀਆਂ ਟੌਹਰਾਂ ਮਾਰਦੇ ਤੇ ਨਾ ਜਿਉਂ-ਜਿਉਂ ਪਬਲਿਕ ਦੇ ਵਿੱਚ ਗਿਆਨ ਜਾ ਰਿਹਾ ਹੈ ਦੰਦਕਾਨੇ ਮੂੰਹ ਤੇ ਛਾਈ ਫਿਰਨ ਲੱਗ ਜਵਾਬ ਹੈ ਨਹੀਂ ਕੋਈ ਜਿਹੜੇ ਹੁਣ ਵੀ ਮਾਰਦੇ ਸੀ ਨਾ ਗੱਲਾਂ ਦਸਮਾਨਾਂ ਦੇ ਖਿਲਾਫ ਦੇਖੋ ਉਹਨਾਂ ਦੇ ਵੀ ਛਾਈ ਫਿਰਨ ਲੱਗ ਜਾਣੀ ਉਹ ਗੱਲ ਬਸ ਉਹੀ ਹੀ ਉਸਦੀ ਉਸਦੀ ਹਰ ਵਕਤ ਤੇ ਜਿਹੜੇ ਬੜੀਆਂ ਬੜੀਆਂ ਦਾਅਵੇ ਕਰ ਦਿੰਦੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਾ ਨੇ ਛਾਈ ਫਿਰ ਜਾਣੀ ਏ ਉਹਨਾਂ ਕੋਲ ਜਵਾਬ ਹੀ ਨਹੀਂ ਹੈਗਾ ਛਾਈ ਤਾਂਵੇ ਫਿਰਦੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਗੱਲ ਇਹ ਨਿਕਲ ਆਊਗੀ ਤਾਂ ਕੁਝ ਹੋਰੇ ਨਿਕਲਿਆ ਉਹ ਤਾਂ ਕਹਿੰਦੇ ਜਿਵੇਂ ਦੋ ਆਦਮੀ ਖੜੇ ਨੇ 'ਚ ਅਖੇ ਅੰਦਰ ਕੀ ਆ ਵੀ ਅੰਦਰ ਕਹਿ ਨਾ ਨੇ ਅੰਦਰ ਰਾਬਾ ਅਖੇ ਪੇਸ਼ੀ ਪੈਣੀ ਓਹ ਕਹਿੰਦਾ ਰੱਬ ਤਾਂ ਹੁੰਦਾ ਹੀ ਨਹੀਂ ਹਾਂ ਤੇਰੇ ਠੀਕ ਹੈ ਨੂੰ ਪੁੱਛਿਆ ਕਿ ਨੂੰ ਸੁਪਾਈ ਰਣਾ ਵੀ ਰਬ ਹੁੰਦਾ ਕਹਿੰਦਾ ਨਹੀਂ ਦੂਰ ਨੂੰ ਪੁੱਛਿਆ ਕਹਿੰਦਾ ਹੁੰਦਾ ਕਹਿੰਦਾ ਸੁਪਾਈ ਗਾਂ ਚ ਲਿਆ ਗਿਆ ਉਹ ਕਹਿੰਦਾ ਤੂੰ ਇਹ ਮੈਂ ਕੱਢ ਹੁੰਦਾ ਜੇ ਹੁੰਦਾ ਹੀ ਨਹੀਂ ਉਹ ਕਹਿੰਦਾ ਭਾਈ ਜੇ ਗਾਂ ਨਿਕਲਿਆ ਜੇ ਗਾਂ ਹੋਇਆ ਜੇ ਨਾ ਹੋਇਆ ਤੂੰ ਵੀ ਉਹੇ ਜਾ ਮੈਂ ਵੀ ਉਹੇ ਜਾ ਜੇ ਹੋਇਆ ਤੂੰ ਫਸ ਜਾਣਾ ਮੈਂ ਛੁੱਟ ਜਾਣਾ ਮੈਂ ਦੋ ਹੱਥੀ ਲੱਡੂ ਲੈ ਕੇ ਚੱਲਿਆ ਮੈਂ ਮਰਨਾ ਹੈਗਾ ਪਾ ਦੀ ਰੋਇਆ ਦਰਦ ਦਾ ਜੋ ਆਪਾਂ ਬੜੇ ਹੀ ਨਹੀਂ ਉਧਰ ਹੈ ਨਹੀਂ ਆਪ ਨੂੰ ਪਤਾ ਅਗੇ ਨਹੀਂ ਮੈਂ ਤਾਂ ਕਹਨਾ ਹੈਗਾ ਤੂੰ ਕਹਨਾ ਹੈ ਜੇ ਹੋਇਆਗਾ ਤੇਰੇ ਕੋਈ ਜਵਾਬ ਹੈ ਬਿਰਗੋ ਤਾਂ ਹੈਗਾ ਮਤਬਨ ਇਸ ਕਰਕੇ ਜਿਹੜੇ ਹੋਰ ਕੁਝ ਬੰਦੇ ਸੀ ਨਾ ਕੋਈ ਹੈ ਹੋ ਨਹੀਂ ਇਹ ਤਾਂ ਪੜਤ ਦੀ ਲਿਖੀ ਹੋਈ ਹੈ ਜਾਂ ਕਹਾ ਨਿਕਲੇ ਨਾ ਕੋਈ ਹੋਰ ਹੈ ਪਰ ਉਹ ਕਾਲੇ ਤੇ ਨਦਕਾਉਣਾ ਤੇ ਸਿਆਹੀ ਪੈ ਫਰ ਜੜੀ ਇਹ ਬੂ ਤੇ ਸਿਆਹੀ ਫਰੇ ਜਾਂਦੀ ਹੁੰਦੀ ਹੈ। ਜੇ ਆਦਮੀ ਝੂਠਾ ਪੈ ਜਵੇ ਪਰੇ ਦੇ ਵਿੱਚ ਪਬਲਿਕ ਦੇ ਵਿੱਚ ਤੇ ਸਿਆਹੀ ਉਹ ਫਿਰ ਉਹਦੇ ਮੂੰਹ ਤੇ ਹੋਰ ਕੀ ਹੁੰਦਾ। ਚੰਚਲਾ ਪ੍ਰਯੰਗੀ ਬੇਦ ਪ੍ਰਸੰਗੀ ਤੇਜ ترੰਗੀ ਖੰਡ ਅਸੁਰੰ ਚੰਚਲਾ ਪ੍ਰਯੰਗੀ ਚੰਚਲਾ ਕਹਿੰਦੇ ਨੇ ਵੈਸੇ ਤਾਂ ਬੁੱਧਰੂ ਕਹਿੰਦੇ ਨੇ ਚੰਚਲਾ ਬਹੁਤ ਤੇਜ਼ ਜਿਹੜੀ ਬੁੱਧੀ ਹੁੰਦੀ ਹੈ ਨਾ ਤੇਜ਼ ਚੱਲਣ ਵਾਲੀ ਬੁੱਧੀ ਤੇਜ਼ ਚਾਲ ਵਾਲੀ ਬੁੱਧੀ ਉਹ ਚੰਚਲਾ ਹੁੰਦੀ ਹੈ ਚੰਚਲ ਮਨ ਨੂੰ ਵੀ ਕਹਿੰਦਾ ਨਾ ਪਹਿਲਾਂ ਫਿਰ ਚੰਚਲਾ ਨੂੰ ਕਿਉਂ ਤੇਜ਼ ਗਤੀ ਜਦੋਂ ਮਨ ਨੂੰ ਕਰਨ ਦੀ ਸਮਰੱਥਾ ਬੁੱਧੀ 'ਚ ਹੋ ਜਾਂਦੀ ਹੈ ਨਾ ਫਿਰ ਇਹ ਚੰਚਲਾ ਪ੍ਰੇਂਗੀ ਹੋ ਜਾਂਦੀ ਹੈ ਇਹ ਗੱਲ ਦਾ ਵੀ ਨਹੀਂ ਪਤਾ ਰੂ ਪੜ੍ਹਨ ਤੱਕ ਨਹੀਂ ਪਤਾ ਇਸ ਗੱਲ ਦਾ ਕਿਉਂਕਿ ਉਹ ਮਨ ਤੇ ਤਨ ਤੇਜ਼ ਚਲਿਓ ਜਗ ਬਾਤ ਜਦ ਮਾਤ ਦਾ ਸਰੀਰ ਮਨੋਂ ਤੇਜ ਚੱਲਦਾ ਮਨ ਕੋ ਦਾ ਸਰੀਰ ਹੈ ਨਹੀਂ ਉਹਦਾ ਸਰੀਰ ਵੀ ਨਾਲ ਹੈ ਜਿੰਨਾ ਮਨ ਤੇਜ ਭਜਦਾ ਉਹਨਾਂ ਉਹਦੀ ਦੇਹ ਭਜਦੀ ਹੈ ਸਣੇ ਦੇ ਨਾਲ ਭਜਦੀ ਹੈ ਉਦੋਂ ਵੀ ਜਿਆਦਾ ਤੇਜ ਮਨ ਤੇ ਤਨ ਤੇ ਕਿਉਂਕਿ ਮਨ ਨੂੰ ਘੇਰਨ ਵਾਸਤੇ ਕਿਸੇ ਵੀ ਸ਼ਿਕਾਰ ਨੂੰ ਘੇਰਨ ਵਾਸਤੇ ਜੋ ਸ਼ਿਕਾਰੀ ਹੈ ਸ਼ਿਕਾਰ ਕਰਨ ਵਾਲੀ ਚੀਜ਼ ਹੈ ਚਾਹੇ ਉਹ ਕੁੱਤਾ ਹੈ ਚਾਹੇ ਸ਼ੇਰ ਹੈ ਚਾਹੇ ਕੁਝ ਵੀ ਉਹਦੀ ਸਪੀਡ ਉਹ ਤੋਂ ਜਿਆਦਾ ਚਾਹੀਦੀ ਹੈ ਤਾਂ ਕਿ ਉਹ ਨੂੰ ਸ਼ਿਕਾਰ ਨੂੰ ਮਨੂ ਕੇ ਨਾਸ ਤੇ ਦੀ ਸਪੀਡ ਹਮੇਸ਼ਾ ਉਹ ਤੋਂ ਤੇਜ਼ ਹੋਣੀ ਚਾਹੀਦੀ ਹੈ ਇਸ ਕਰਕੇ ਚੰਚਲਾ ਪ੍ਰਿੰਦੀ ਹੈ ਚੰਚਲਾ ਪ੍ਰਿੰ ਜੋ ਬਿਜਲੀ ਦੀ ਸਪੀਡ ਹੈ ਨਾ ਬਿਜਲੀ ਨੂੰ ਵੀ ਚੰਚਲਾ ਕਰਨੀ ਦੇ ਬਿਜਲੀ ਦੀ ਸਪੀਡ ਬਹੁਤ ਤੇਜ਼ ਹੈ ਬਿਜਲੀ ਦੀ ਸਪੀਡ ਐਨੀ ਤੇਜ਼ ਹੈ ਉਦੋਂ ਦਾ ਸ਼ਾਇਦ ਬਿਜਲੀ ਹੋਲੀ ਬਰੀ ਜਦੋਂ ਇਹਨਾਂ ਨੇ ਲਿਖੀ ਹੈ ਗੱਲ ਸੱਤ ਚੱਕਰ जमीन ਜ਼ਮੀਨਦਾਰਾਂ ਦੇ ਵਾਲੇ ਤਾਰ ਦੇ ਲਿਆ ਦੀ ਹੈ ਨਾ ਆਪਣੀ ਧਰਤੀ ਦੇ ਵਾਲੇ ਵਾਲੇ ਇੱਕ ਸਰੇ ਤੇ ਹੋਵੇ ਸੋਚ ਦੂਏ ਸਰੇ ਤੇ ਹੋਵੇ ਬਲਬ 21 ਕਲਟ ਵਿੱਚ ਬਲਬ ਜਲ ਜਾਂਦਾ ਹੈ 184000 ਵੀਲ ਦੀ स्पीड ਇੱਕ ਸਕਿੰਟ ਦੀ ਤੇ ਐਡੀ ਸਪੀਡ ਹੋਰ ਕਹੀਦਾ ਹੈ ਨਹੀਂ ਬਿਜਲੀ ਵਰਗੀ ਸਪੀਡ ਹੈ ਤੇਰੀ ਐਦਾ ਚਮਕਦੀ ਉਧਰ ਜਾ ਚਮਕਦੀ ਉਧਰ ਚਮਕਦੀ ਉਧਰ ਚਮਕਦੀ ਉਧਰ ਜਾ ਚਮਕਦੀ ਆਖਰੀ ਚਮਕਰ ਦਿੰਦੀ ਜਦੂ ਦੇ ਪਾਸੇ ਜਾ ਚਮਕਦੀ ਚੰਚਲਾ ਪ੍ਰੇਮਗੀ ਤੇਰਾ ਜਿਹੜਾ ਅੰਗ ਹੈ ਨਾ ਅੰਗ ਅੰਗ ਪਹਿਲਾਂ ਜਿਹੜਾ ਸੀ ਉਹ ਤੇ ਪ੍ਰਯੰਗ ਹੋ ਗਿਆ ਹੁਣ ਹੋਰ ਅੰਗ ਡਿਵੈਲਪਮੈਂਟ ਹੋ ਗਿਆ ਅੰਗ ਦੇ ਜਿਵੇਂ ਬੁੱਧ ਤੇ ਬੋਧ ਤੇ ਪ੍ਰਬੋਧ ਹੋ ਜਾਂਦਾ ਨਾ ਲਖ ਪਹਿਲਾਂ ਕੁਦੇ ਸੀ ਉਹਦੇ ਤੇ ਹੋਰ ਚੜ ਗਿਆ ਕੋਟ ਪ੍ਰਬੋਧ ਹੋ ਗਿਆ ਪ੍ਰੰਗੀ ਇਹਵੇਂ ਤੇ ਪ੍ਰੰਗੀ ਹੋ ਗਿਆ ਹੋਰ ਸ਼ਕਤੀ ਆ ਗਈ ਜਿੰਨੀ ਸ਼ਕਤੀ ਪਹਿਲਾਂ ਸੀ ਨਾ ਹੋਰ ਸ਼ਕਤੀ ਮਿਲ ਗਈ ਜਿੰਨਾ ਗਿਆਨ ਪਹਿਲਾਂ ਸੀ ਹੋਰ ਗਿਆਨ ਹੋ ਗਿਆ ਪ੍ਰੰਗੀ ਹੋ ਗਈ ਬੇਦ ਪ੍ਰਸੰਗੀ ਪ੍ਰਸੰਗ ਕੀ ਹੈ ਪ੍ਰਸੰਗ ਬੇਦ ਦਾ ਹੀ ਆ ਗਿਆ ਜਾਂਦਾ ਹੀ ਆ ਹੋਰ ਪ੍ਰਸੰਗ ਕੋਈ ਨਹੀਂ ਹੈ ਬਗਾਰ ਗਿਆਨ ਤੇ ਸ਼ੁੱਧ ਗਿਆਨ ਤੇ ਤਤ ਗਿਆਨ ਤੇ ਕੋਈ ਪ੍ਰਸੰਗ ਹੋਰ ਛੇੜ ਹੋਈ ਨਹੀਂ ਹੋਰ ਕੋਈ ਪ੍ਰਸੰਗ ਨਹੀਂ ਵੇਦ ਪ੍ਰਸੰਗ ਹੀ ਉਹਨ ਇਥੇ ਵੀ ਵੇਦ ਆ ਗਿਆ ਵੇਦ ਦਾ ਪ੍ਰਸੰਧਿਆ ਸਰਪ ਦੁਪਗਾਂ ਦਾ ਪ੍ਰਸੰਧ ਹੋਰ ਪ੍ਰਸੰਧੇ ਕੋਈ ਨਹੀਂ ਵੇਦ ਪ੍ਰਸੰਗੀ ਤੇਜ ਸਾਰਾ ਵੇਦ ਪ੍ਰਸੰਧਾ ਦਾ ਸੁਗ੍ਰੰਥ ਵੀ ਇਹ ਵੇਦ ਪ੍ਰਸੰਗੇ ਆਤਮਾ ਹੀ ਹੈ ਬੁਰੇ ਪਾਸੇ ਨੂੰ ਜਾਂਦੀ ਹੋਵੇ ਆਤਮ ਚੰਗੇ ਪਾਸੇ ਨੂੰ ਜਾਂਦੀ ਹੋਵੇ ਆਤਮ ਭਲਾਈ ਕਰਦੀ ਹੋਵੇ ਆਤਮ ਬੁराई ਕਰਨੀ ਉਹ ਵੀ ਆਤਮਾ ਨੂੰ ਰੀਡ ਕੀਤਾ ਸਰੀਰ ਤਾਂ ਚਲਾਇਆ ਚੱਲਦਾ ਬੈਠੀ ਤਾਂ ਅੰਦਰ ਆਤਮਾ ਜ਼ੁਲਮ ਕਰਦੀ ਉਹ ਵੀ ਆਤਮਾ ਪੁਨ ਪਲਾ ਕਰਦੀ ਉਹ ਕਰ ਜੋ ਕੁਛ ਰਹੀ ਆਤਮਾ ਹੀ ਕਰ ਰਹੀ ਹੈ ਸੋਝ ਰਿਹਾ ਆਦਮੀ ਹੈ ਦੇ ਲੈਵਲ ਤੇ ਜੋ ਸੋਚ ਰਿਹਾ ਉਹ ਹੀ ਕਰ ਰਿਹਾ ਹੈ ਕਰਨ ਦੀ ਕੋਸ਼ਿਸ਼ ਕਰ ਰਿਹਾ ਸਿਰੇ ਚੜਦਾ ਨਾ ਚੜਦਾ ਉਹ ਲਾਗល ਹੈ ਸਾਰੀ ਕਰਤ ਆਤਮਾ ਦੇ ਸਿਰ ਤੇ ਹੈ ਸਰੀਰ ਦਾ ਦੁਆਰਾ ਕਰਦੇ ਹਾਂ ਸਿੱਖੂ ਜੋ ਮਿਸਤਰੀ ਆਉਣਾ ਯਾਰ ਨਾਲ ਮਿਸਤਰੀ ਕੀ ਕਰੂਗਾ ਉਹ ਆਦਮੀ ਹੈਗਾ ਜਿਹਦੇ ਹੱਥ ਵੱਡੇ ਨੇ ਕਿਵੇਂ ਚੱਕ ਲੂਗਾ ਕੋਈ ਚੀਜ਼ ਕਿਵੇਂ ਕੋਈ ਪਲਾਸ ਫੜ ਲੂਗਾ ਉਹ ਜਿਹੜੇ ਹੱਥਰੀ ਹੈ ਇਹ ਨਵਾਂ ਦਾ ਹੱਥ ਤਾਂ ਇੱਕ ਮਸ਼ੀਨ ਹੋਇਆ ਨਾ ਇਹ ਤਾਂ ਮਸ਼ੀਨ ਹੋਇਆ ਸਰੀਰ ਤਾਂ ਮਸ਼ੀਨ ਹੈ ਇੱਕ ਕਲ ਵਾਲੀ ਆਤਮਾ ਤੇਜ ਤੁਰੰਗੀ ਤੇਜ ਤੁਰੰਗੀ ਜਿਹੜੀ ਤੋਰ ਹੈ ਤੇਰੀ ਤੁਰੰਗ ਘੋੜੇ ਨੂੰ ਵੀ ਕਹਿੰਦੇ ਤੁਰੰਗੀ ਤੇਰੀ ਤੇਰੀ ਚਾਲ ਬਹੁਤ ਤੇਜ ਹੈ ਤੁਰਨ ਦੀ ਸੈਂਸ ਵਿੱਚ ਹੈ ਤੁਰੰਗੀ ਕੋੜੇ ਦੀ ਬਹੁਤ ਜ਼ਿਆਦਾ ਚਾਲ ਨਹੀਂ ਹੁੰਦੀ ਜੇ ਤੁਸੀਂ ਕਹੋ ਇਧਰੋਂ ਹੋਰ ਵੀ ਬਹੁਤ ਚਾਲ ਬਣੇ ਜਿਹੜੇ ਤੇਜ਼ ਭਜਦੇ ਨੇ ਤੇਰੀ ਚਾਲ ਸ਼ਕਤੀ ਹੈ ਨਾ ਚਾਲ ਭੱਜਣ ਦੀ ਬਹੁਤ ਤੇਜ਼ ਹੈ ਖੰਡ ਅਸਰੰਗ ਖੰਡ ਅਸਰੰਗ ਬਸ ਐ ਸਮਝ ਲੋ ਅਸਲ ਨੇ ਜਿਹੜੇ ਉਹ ਕਮ ਦੇ ਵਿਰੋਧ ਕਰਨ ਵਾਲੇ ਨੇ ਉਗੜ ਉਹਨਾਂ ਨੂੰ ਦਾ ਦੋ ਕਲਮ ਨਹੀਂ ਹੇਲਣ ਦਿੱਤੀ ਜਾ ਕੇ ਸਿਰ ਚੜ ਕੇ ਢਾ ਲੈਣੀ ਬਹੁਤ ਤੇਜ਼ ਪੱਜਣ ਵਾਲਾ ਥੋੜਾ ਪੱਜਣ ਵਾਲੇ ਨੂੰ ਦੋ ਕਲਮ ਨਹੀਂ ਜਾਣ ਦਿੰਦਾ ਐਸ ਜਿਹੜੇ ਅਸਲ ਨੇ ਆਸਰੀ ਸ਼ਕਤੀਆਂ ਨੇ ਸੱਚ ਦੇ ਵਿਰੋਧੀ ਸ਼ਕਤੀਆਂ ਨੇ ਉਹਨਾਂ ਨੂੰ ਮਾਰ ਲੈਦੀਆਂ ਇਹ ਦਬਲੇ ਗੈਲਰੀ જય જય ਹੋਸੀ ਮਖਾਸੁਰ ਮਰਦਨ ਆਦ ਅਨਾਦੀ ਅਗਾਦ ਉਰਦਨ ਤੋਂ ਕੇ ਤੂੰ ਅਨਾਦੀ ਹੈ ਸ਼ੁਰੂ ਤਾਂ ਇਹ ਦਨ ਉਹ ਅਨਾਦੀ ਗੈਦਰੇ ਇਹ ਨਹੀਂ ਵੀ ਹੋਲ ਕਹਿਣ ਲੱਗੇ ਨੇ ਸ਼ੁਰੂ ਤਾਂ ਕਹਿੰਦੇ ਨੇ ਵੀ ਇਹ ਅਨਾਦੀ ਹੈ ਆਦ ਕੋਈ ਨਹੀਂ ਇਹ ਕਿੱਦੋਂ ਨਹੀਂ ਪੈਦਾ ਹੋਈ ਸਕਤੀ ਆਤਮਾ ਨਹੀਂ ਕਿੱਦੋਂ ਪੈਦਾ ਹੋਈ ਹੋਈ ਆ ਤੋਂ ਲੈ ਕੇ ਬੰਦੇ ਹੋ ਜਾਂਦਾ ਹੈ ਸ਼ੁਰੂ ਤੋਂ ਲੈ ਕੇ ਬੰਦੀ ਗਈ ਹੈ ਗੱਲ ਇਹ ਅਨਾਦੀ ਹੈ ਤੋਂ ਦਾ ਵੀ ਹੁਣ ਥੀ ਲੋਕ ਮੰਨਦੇ ਨੇ ਅਗਾਧ ਉਰਦਮ ਅਗਾਧ ਹੈ ਬੁੱਧੀ ਤੋਂ ਪਰੇ ਹੈ ਨੂੰ ਸਮਝੋ ਬੁਰਖੀ ਉਰਦਮ ਸਭ ਕੁਝ ਪੜਨ ਦਿਆ ਹੈ ਯਾਦ ਹੋ ਦਿਆ ਪ੍ਰਗਟ ਹੋ ਸਭ ਕੁਝ ਪਲਟਿਆ ਜਾਂਦਾ ਜੋ ਦੀ ਸੋਚ ਹੈ ਨਾ ਉਹ ਤੋਂ ਉਹਨੂੰ ਪਲਟ ਕੇ ਰੱਖ ਦਿੰਦੀ ਹੈ ਉਧਲ-ਪੁਧਲ ਕਰ ਦਿੰਦੀ ਹੈ ਸਭ ਕੁਝ ਕੰਟਕਾ ਵਿਰਾਜੈ ਰਣ ਝੁਣ ਬਾਜੈ ਰੁੜ ਝੁੜ ਕੰਟਕਾ ਵਿਰਾਜੈ ਰੁਣ ਝੁਣ ਬਾਜੈ ਕੰਟਕਾ ਵਿਰਾਜੈ ਤੇਰਾ ਜਿਹੜਾ ਹਿਰਦਾ ਸਭ ਜ ਲੋ ਕੜਿਆਲੇ ਆ ਕੰਟਕਾ ਕੰਟਕਾ ਬਰਾਜਾ ਕੰਟਕਾ ਬਰਾਜਾ ਰੁਣਚੁਣ ਬਾਜਾ ਜਦ ਕੰਟਕਾ ਦੇ ਵਿੱਚੋਂ ਸ਼ਬਦ ਪੈਦਾ ਹੁੰਦਾ ਨਾ ਹਿਲਦੇ ਵਿੱਚੋਂ ਸ਼ਬਦ ਪੈਦਾ ਹੁੰਦਾ ਤਾ ਬਾਹਰ ਗੱਲਾਂ ਹੋਣ ਲੱਗ ਜਾਂਦੀਆਂ ਨੇ ਜਦ ਬੱਦਲ ਗਰਜਦਾ ਨਾ ਤ ਮੋਰ ਬੋਲਦੇ ਨੇ ਬੋਰੀ ਰੁਣਚੁਣ ਲਾਇਆ ਲਾਇਆ ਸਾਬਣ ਆਇਓ ਨਹੀਂ ਸਖੀ ਮੋਰੀ ਰੋੜ ਛੋੜ ਪੈਣੀ ਸਾਹਣ ਆਹ ਪੈਣੀ ਸਾਹਣ ਮੋਰੀ ਰੋੜ ਛੋੜ ਜਿਹੜੇ ਗੁਰਮਖ ਨੇ ਉਹ ਵੀ ਬੋਲਣ ਲੱਗ ਜਾਂਦੇ ਨੇ ਇਹ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਬੋਲਣਾ ਜਿਵੇਂ ਬੱਦਲ ਕਰ ਦਿੱਤਾ ਬੋਰ ਬੋਲਦੇ ਨੇ ਨਾ ਏਵੇਂ ਜਦੋਂ ਪਰਮ ਗਿਆਨ ਪੈਦਾ ਹੁੰਦਾ ਗੁਰਮੁਖ ਵੀ ਥੋੜ੍ਹੀ ਥੋੜ੍ਹੀ ਗੱਲ ਕਰਨ ਲੱਗ ਜਾਂਦੇ ਨੇ ਜਿਹਦੀ ਇੱਕ ਸੁਣ ਲੈਣੇ ਨੇ ਕੁਝ ਤਾਂ ਪਹਿਲਾਂ ਉਹਨਾਂ ਨੂੰ ਪਤਾ ਹੀ ਹੁੰਦਾ ਪਰ ਜਿੱਥੇ ਕਿ ਨਹੀਂ ਪਤਾ ਹੁੰਦਾ ਸਮਝ ਆ ਜਾਂਦੀ ਹੈ ਉਹ ਬੋਰਾ ਵਾਂਗੂ ਕੁਛ ਨਾ ਕੁਛ ਇੱਕ ਦੂਰੇ ਨਾਲ ਚੁੱਝਬਾਰ ਕੇ ਸਮਝਾਉਣ ਲੱਗ ਜਾਂਦੇ ਨੇ ਉਹ ਵੀ ਗੱਲ ਕਰਨ ਲੱਗ ਜਾਂਦੇ ਨੇ ਗੋਰੀ ਤਾਂ ਗਾ ਬੋਰਾ ਦਾ ਮਤਲਬ ਹੈ ਮੋਰ ਨਹੀਂ ਹੋ ਗੋਰੀ ਕਿਨੇ ਗੋੜਾ ਮੋਰੀ ਆਵਾਜ਼ ਅੱਜ ਖਣਦੋਈ ਹੋਈ ਹੈ ਬੇਵਕ ਬੁੱਧੀ ਦੀ ਆਵਾਜ਼ ਹੈ ਜਿਹੜੇ ਕਹਿੰਦੀ ਮੇਰੇ ਨੇ ਉਹ ਬੋਲਣ ਲੱਗਦੇ ਨੇ ਗੋਰੀ ਮੇਰੇ ਬੋਰ ਬੋਰ ਕਰਦ ਅਤਕਲਾੜ ਤਰ ਅਤਕਲਾੜ ਤਰ ਜਿਹੜੇ ਕਹਿੰਦੀ ਮੇਰੇ ਨੇ ਨਾ ਉਹ ਮੇਰੀ ਬੋਲੀ ਸਮਝ ਕੇ ਬੋਲੀ ਬੋਲਣ ਲੱਗ ਜਾਂਦੇ ਬਾਦੀ ਬੋਲੀ ਬੋਲਣ ਲੱਗ ਜਾਂਦੇ ਬੋਲਦੇ ਨੇ ਐਸੇ ਨੂੰ ਤੋਤੜੀ ਕਿਹਾ ਹੋਇਆ ਹਾਂ ਪਿਛੇ ਕਿਹਾ ਹੈ ਨਾ ਚੰਡੀ ਜੀ ਚੰਡੀ ਜੀ ਰਤਨ ਜੀ ਇਹ ਹੈ ਉਹ ਤੋਤੜੀ ਬੋਲੀ ਬੋਲਣ ਲੱਗ ਜਾਂਦਾ ਤੇਰੇ ਬੋਰ ਮੋਰਾ ਦੀ ਗੱਲ ਸਮਝਦਾ ਮੋਰਾ ਦੇਖੋ ਨਿਆਣੇ ਦੀ ਗੱਲ ਨਿਆਣੇ ਨੂੰ ਸਮਝ ਆ ਜਾਂਦੀ ਐ ਸਾਨੇ ਨੂੰ ਨਹੀਂ ਹੁੰਦੀ ਨਿਆਣੇ ਕਦੋਂ ਦੀ ਗੱਲ ਸਮਝ ਲੈਂਦੇ ਨੇ ਗੁੱਗ ਕਦੋਂ ਦੀ ਗੱਲ ਸਮਝ ਲੈਂਦੇ ਨੇ ਸਾਰੇ ਗੱਲ ਚੱਲ ਪੈਂਦੀ ਐ ਥੋੜੀ ਥੋੜੀ ਸੱਚ ਦੀ ਗੱਲ ਸਾਰੇ ਚੱਲ ਪੈਂਦੀ ਐ ਥੋੜੀ ਥੋੜੀ ਵੀਲਾ ਇਹ ਤਾਂ ਹੈ ਕਹਿੰਦੇ ਤੇ ਗੱਲ ਤਾਂ ਆ ਹੈ ਘੰਟਾ ਕਾ ਬਰਾਜਾ ਦਾ ਘੰਟਾ ਹੈ ਜਿੱਥੋਂ ਕਰਜਨ ਪੈਦਾ ਹੁੰਦੀ ਜੋ ਮਨ ਬੋਲਦਾ ਹੈ ਗगन ਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਜਿਹੜੀ ਉਹ ਆਵਾਜ਼ ਬਾਹਰ ਆਉਂਦੀ ਹੈ ਕਾਸ਼ੀ ਤੇ ਤੋਂ ਰੁਪ ਕਾਸ਼ੀ ਦੀ ਹੁੰਦੀ ਹੈ ਕੰਟੀ ਹਰਦੇਜੇ ਜਦੋਂ ਬੈਦਲ ਹੁੰਦੀ ਰ ਕਾਸ਼ੀ ਤੇ ਤੈਨੂੰ ਪਜਾ ਤੈਨੂੰ ਕਾਸ਼ੀ ਜਾਏ ਕਹਿੰਦਾ ਕਾਸ਼ੀ ਫੁੱਟੇ ਪਰਤਾ ਤੂੰ ਕਹਾਂ ਸੁਗਾਏ ਵਿਚਾਰਾ ਪੰਡਤ ਕੀ ਦੱਸੇ ਇਹ ਪੜ੍ਹ ਲਤਾ ਅਰਥ ਕਰਨ ਵਾਲੇ ਨੂੰ ਕੀ ਪਤਾ ਐ ਇਹ ਨੂੰ ਕੀ ਪਤਾ ਕਿ ਤੋਤਨ ਪੈਦਾ ਹੁੰਦੀ ਹੈ ਕਾਸ਼ੀ ਕੀ ਹੁੰਦੀ ਹੈ ਇਹਨੇ ਤਾਂ ਆਪਣੀ ਕਾਸ਼ੀ ਉਹ ਬਣਾਇਆ ਸ਼ਾਇਰ ਹਰਦੇਜੇ ਜਦੋਂ ਬੈਦਲ ਹੁੰਦੀ ਐ ਪਰਮਪੈ ਭਾਜੇ ਪਰਮਪੈ ਭਾਜਾ ਪਰਮੋਰ ਪੈ ਸੰਸਾਰ ਦੇ ਗੁਰਮੁਖਾਂ ਦੇ ਪਰੰਪਰਾ ਪੈਦੋਈ ਚੀਜ਼ਾਂ ਪਜ ਰਹੀ ਹੋਦੀ ਸੁਣ ਤੋ ਸੁਰੰ ਜਦ ਦੇਵਤੇ ਸੁਕਦੇ ਰਹ ਉਹਨਾਂ ਦੇ ਪਜ ਰਹੇ ਨੇ ਸੁਣ ਤੋ ਸੁਰੰ ਸੁਣਦਾ ਉਹਦਾ ਦੇਵਤੇ ਦੇਵਤੇ ਉਹਦਾ ਹਾਲ ਆ ਬੋਰਿਆ ਜਿਹੜੇ ਦੇਵਤੇ ਨਹੀਂ ਉਹਨਾਂ ਦੇ ਮਿਛੂ ਲੜ ਰਿਹਾ ਨਾਮ ਸੁਣ ਤੇ ਯਾਰ ਮਿਛੂ ਉਹਨਾਂ ਦਾ ਰਿਐਕਸ਼ਨ ਹੋਊਗਾ ਦੋਆਂ ਤੇ ਅਗਲੀ ਪੰਕਤੀ ਚ ਕੋਕਲ ਸੁਣ ਲੱਜਾ ਕੋਕਲ ਸੁਣ ਲੱਜਾ ਜਿਹੜੇ ਬਹੁਤ ਰਸੀਲੇ ਗੀਤ ਗਾਉਣ ਵਾਲੇ ਸੀ ਨਾ ਪਰ ਸੱਚ ਪੂਰਾ ਨਹੀਂ ਸੀ ਕੋਕਲ ਸੁਣ ਲੱਜਾ ਗੀਤ ਤਾਂ ਠੀਕ ਸੀ ਉਹਨਾਂ ਦੇ ਪਰ ਪੂਰਾ ਗਿਆਨ ਨਹੀਂ ਸੀ ਗਿਆਨ ਦੇ ਵਿੱਚ ਕਮੀ ਸੀ ਭਾਵੇਂ ਭਾਜਨ ਜਿਵੇਂ ਇਹਦੂ ਵੀ ਗਾਉਂਦੇ ਨੇ ਨਾ ਭਾਜਨ ਪਰ ਉਹ ਗਿਆਨ ਤਾਂ ਪੂਰਾ ਨਹੀਂ ਹੁੰਦਾ ਇਹ ਗੀਤ ਨੂੰ ਸੁਣ ਕੇ ਉਹਨਾਂ ਨੂੰ ਵੀ ਲੱਜ ਆਉਣ ਲੱਗੀ ਵੀ ਸਾਡੇ ਚ ਸੀ ਕੋਕਲ ਸੁਣੋ ਲੱਜ ਕੋਕਲ ਦੀ ਆਵਾਜ਼ ਮਿੱਠੀ ਲੱਗਦੀ ਹੈ ਸਾਰੇ ਆਲੂ ਚੰਗੀ ਹਲਦੀ ਆ ਵੀ ਸੁਹਾਵਣੀ ਹੁੰਦੀ ਆਵਾਜ਼ ਮਾੜੀ ਨਹੀਂ ਹੁੰਦੀ ਪਰ ਉਹ ਦਿਨ ਉਹ ਵੀ ਗਾਹਾਂ ਵਧੀਆ ਗੱਲ ਹੈ ਜਿਹੜਾ ਕੀਰਤਨ ਹੈ ਨਾ ਕੁਰਬਾਨੀ ਦਾ ਕੁਰਬਾਨੀ ਦਾ ਜਿਹੜਾ ਗਾਇਨ ਹੈ ਇਹ ਜਿਹੜੇ ਦੂਸਰੇ ਗਾਇਨ ਨੇ ਜਿਵੇਂ ਚਲੋ ਉਹ ਵੀਰ ਨੇ ਜੋ ਕੁਝ ਕਾਇਆ ਪਹਿਲਾਂ ਕਿਹਾ ਵਿੱਚ ਲਿਖਿਆ ਉਹ ਕੋਕਲਦਾਈ ਸੀ ਸਾਰਾ ਲਿਖਿਆ ਨਾ ਫਰਾਂ ਉਹ ਸਾਰਾ ਇਹ ਰਦ ਕਰਤਾ ਸ਼ਰਮ ਹੋਣ ਲੱਗੀ ਵੀ ਮੈਂ ਕੀ ਲਿਖ ਬੈਠਿਆ ਉਹ ਕੋਕਲ ਦੀ ਆਵਾਜ਼ ਆ ਸਾਰੀ ਉਹ ਜੋ ਕਬੀਰ ਨੇ ਪਹਿਲਾਂ ਕੱਚੀ ਬਾਣੀ ਲਿਖੀ ਹੈ ਬਾਣੀ ਬਾੜੀ ਨਹੀਂ ਆ ਉਹ ਪਰ ਕੱਚੀ ਕਾਚਾ ਉਹ ਵਿੱਚ ਉਹ ਕੋਕਲ ਦੀ ਆਵਾਜ਼ ਕੋਕਲ ਸੁਣ ਲੱਜਾ ਜਿਹੜੇ ਰਵੈਣ ਲਿਖੀ ਹੋਈ ਆ ਤੁਲਸੀ ਦਾਸ ਨੇ ਉਹ ਵੀ ਕੋਕਲ ਦੀ ਆਵਾਜ਼ ਹੈ ਕੋਕਲ ਦੀ ਉਹ ਗੱਲ ਕਰ ਰਿਹਾ ਹੈ ਕੰਨ ਆਪ ਤੋਂ ਦਾਦੁਰ ਬਖਤਾ ਬਹੇ ਹਮੇ ਪੁੱਛਤ ਕੋਲ ਤੁਲਸੀ ਪਾਪੂਸ ਕੇ ਸਮੇ ਤੁਲਸੀ ਪਾਪੂਸ ਕੇ ਕੋਕਲ ਸਾਦੇ ਮੂਲ ਤੁਲਸੀ ਕਹਿੰਦਾ ਜਦੋਂ ਬਰਸਾਤ ਆਉਂਦੀ ਹੈ ਨਾ ਕੋਲ ਚੁੱਪ ਕਰ ਜਾਂਦੀ ਹੈ ਔਰ ਤੋਂ ਦਾਦਰ ਬਖਤਾ ਭਏ ਗੁਰ ਕਾ ਗੰਦੇ ਡੱਡੂਆਂ ਦਾ ਸਮਾਂ ਆ ਗਿਆ ਬੋਲਣ ਦਾ ਹਮੇ ਪੁੱਛਤ ਕੌਣ ਸਾਡੀ ਆਵਾਜ਼ ਕਿਹਨੇ ਸੁਣੀ ਐ ਡੱਡੂ ਬਹੁਤ ਬੋਲੇ ਨੇ ਉਹ ਪਿੱਛੇ 10 ਸਾਲ ਹੋ ਗਏ ਡੱਡੂਆਂ ਨੂੰ ਬੋਲਦੇ ਟੈਂ ਟੈਂ ਡੱਡੂ ਸੀ ਨਾ ਆਪਣਾ ਕਾਲਾ ਫਗਾਨਾ ਉਹਦੇ ਵਿਝੇ ਹੋਰ ਬਹੁਤ ਬੋਲ ਪਏ ਐ ਡੱਡੂ ਨੇ ਸਾਰੇ ਬੋਲਦੇ ਕੋਣੋ ਦਰਸ਼ਨ ਤੋਂ ਬੋਲ ਪਿਆ ਕਵਾੜਾ ਡੱਡੂ ਥੱਲੇ ਉਹਨਾਂ ਕੋਲ ਪੀੜਾ ਏ ਨੰਦੀ ਬਰਸਾਤ ਹੁੰਦੀ ਐ ਡਡੂ ਦੀ ਉਹ ਇਹਨਾਂ ਨੂੰ ਕਹਿ ਰਹੇ ਨੇ ਕੋਕਲ ਪਰ ਜਦ ਕੁਰਬਾਨੀ ਪ੍ਰਗਟ ਹੋਈ ਕੋਕਲ ਵੀ ਸ਼ਰਪਾ ਗਈ ਕੋਕੜ ਸੁਣ ਲੱਜਾ ਉਹ ਗੱਲ ਕਹੇ ਹੋਈ ਛੜੀ ਇਹ ਕਿਲਮਿਕ ਭਾਜਾ ਕਬੀਰ ਵੀ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ ਲਾਜੇ ਵਾਲੀ ਗੱਲੇ ਯਾਰ ਕਾਸ਼ੀ ਜੀ ਬੈਠ ਕੇ ਐਡਾ ਬੜਾ ਵਿੱਚ ਗ੍ਰੰਥ ਲਿਖਿਆ ਇਹ ਜਲਦੀ ਗੱਲ ਲਿਖੀ ਗਈ ਫਿਰ ਕਹਿੰਦਾ ਜਦ ਇਹ ਲਿਖਿਆ ਫਿਰ ਕਹਿੰਦਾ ਲੋਕ ਕਹਿੰਦੇ ਇਹ ਗੀਤ ਹੈ ਇਹ ਗੀਤ ਨਹੀਂ ਭਾਈ ਉਹ ਗੀਤ ਸੀਗੇ ਮੇਰੇ ਉਹ ਲੋਕ ਇਹਨੂੰ ਵੀ ਗੀਤੇ ਕਹੀ ਜਾਂਦੇ ਨੇ ਵਾਹ ਵਾਹ ਕੈਸੇ ਗਾਉਂਦਾ ਹੈ ਗਾਉਂਦਾ ਲੋਕ ਤਾਂ ਇਹ ਕਹਿੰਦੇ ਨੇ ਵਧੀਆ ਗਾਉਂਦਾ ਪਰ ਇਹ ਜਿਹੜੇ ਗੱਲ ਸੀ ਪਿਛੋਖ ਵੀਰ ਨੇ ਪੱਕੀ ਵਾਲੀ ਦਿਗਾਈ ਨਾ ਇਹ ਬ੍ਰਹਮਚਾਰ ਸੀ ਉਹਨੂੰ ਗੈਰਨ ਕੋਕਲ ਸੁਣਾ ਲਾਚਾ ਜੇ ਤੇ ਬੁਲਾ ਵੋਲਿਆ ਸੇ ਸਾਦੀ ਬੋਲਿਆ ਹੋਰ ਬੋਲ ਦੇ ਨੇ ਕبھی ਬੋਲ ਦੇ ਨੇ ਉਹ ਕੋਕਲ ਦੀ ਆਵਾਜ਼ ਸੱਚ ਕਹਿੰਦਾ ਨਾ ਉਹ ਵੀ ਬਹੁਤ ਪਖੰਡਵਾਦ ਨੂੰ ਕੱਟਦੇ ਨੇ ਬਹੁਤ ਉਹ ਗਰਦਰ ਕبھی ਬੋਲਿਆ ਪਖੰਡਵਾਦ ਕਟਿਆ ਉਹਨਾਂ ਨੇ ਵੀ ਪਰ ਉਹ ਜਦ ਇਹ ਗੁਰਮਤ ਫਾਇਦਾ ਹੁੰਦੀ ਹੈ ਉਹ ਉਹ ਵੀ ਲੈ ਇਹਦੇ ਸਾਹਮਣੇ ਉਹ ਵੀ ਹਥਿਆਰ ਛੱਡ ਦਿੰਦੇ ਕੋਕਲ ਸੁਣ ਲੱਜਾ ਲੱਜਾ ਕਿਲ ਦੇ ਵਿੱਚ ਕਿਲ ਵਿਖ ਸੀਗੇ ਜੋ ਕਬੀਰ ਚ ਕਿਲ ਸੀਗੇ ਤਾਂ ਹੀ ਬਿਆਕੁਲ ਸੀ ਕੋਕਲ ਵਾਲੇ ਗੀਤ ਵੀ ਕਹਿੰਦਾ ਵਿੱਚ ਹੀ ਪਏ ਤੇ ਕਿਉਂਕਿ ਇਹਨੂੰ ਸੁਣ ਕੇ ਕਿਲ ਵਿਖ ਭਾਜ ਜਾਂਦੇ ਨੇ ਕਿਲ ਹੁੰਦਰ ਹੈ ਚਿੰਤਾਵਾਂ ਵੇਖੂਦੀਆ ਵਾਇਆ ਵਾਇਆ ਕਰਕੇ ਜਿਹੜੀਆਂ ਚਿੰਤਾਵਾਂ ਨੇ ਨਾ ਮਾਇਜ ਫਸੇ ਕਰਕੇ ਉਹ ਦੂਰ ਹੋ ਜਾਂਦੇ ਸੁਖੋ ਸੁਖੋ ਉਪਰਾਜਾ ਸੁਖੋ ਉਪਰਾਜਾ ਸੁਖ ਪੈਦਾ ਹੋ ਜਾਂਦਾ ਤਾਂ ਕੋ ਉਹਦੇ ਨਾਲ ਸੁਖ ਪੈਦਾ ਨਹੀਂ ਸੀ ਹੋਇਆ ਨਹੀਂ ਸੀ ਖੰਡਵਾਦ ਤਾਂ ਕਟਿਆ ਗਏ ਸੀ ਦੋ ਗੱਲਾਂ ਨਹੀਂ ਸੀ ਹੋਈਆਂ ਪਖੜਵਾਦ ਤਾਂ ਕੱਟ ਹੁੰਦਾ ਸੀ ਨਾ ਕਿਲਵਿਕ ਭੱਜੇ ਸੀ ਨਾ ਸੁਖ ਪੈਦਾ ਹੋਇਆ ਸੀ ਸੁਖੋ ਉਪਰਾਜਾ ਦਾ ਪਤਾ ਲੱਗਿਆ ਸੱਚ ਦਾ ਨਹੀਂ ਸੀ ਪਤਾ ਲੱਗਿਆ ਹਾਂ ਸੋ ਕੋ ਉਪਰਾਜ ਮਦ ਉਰੰਦ ਮਦ ਉਰੰਦ ਦੇ ਹਿਰਦੇ ਵਿੱਚ ਇਹ ਕੀ ਦੇ ਇਹ ਦੇਵਤਿਆਂ ਦੇ ਸੁਰਗ ਉੱਤੇ ਆਇਆ ਨਾ ਦੇਵਤਿਆਂ ਦੇ ਵਿੱਚ ਇਹ ਹਾਲਾਤ ਬੈਠਾ ਹੈ ਦੇਵਤਿਆਂ ਨੂੰ ਇਹ ਲਾਭ ਹੋਇਆ ਦੁਰਜਨ ਦਲ ਦੱਜਾ ਹੈ ਅਲੋ ਜਿਹੜੇ ਦੁਰਜਨ ਨੇ ਹੁਣ ਦਲ ਦੁਰਜਨ ਵੀ ਤਾਂ ਹੈਗੇ ਨੇ ਜਿਹੜੇ ਵਿਰੋਧੀ ਨੇ ਦੱਜਾ ਉਹ ਦੱਜ ਗਏ ਉਹ ਸੜ ਗਏ ਦੁਨੋਂ ਉਹਨਾਂ ਦੇ ਅੰਦਰ ਸੜ ਗਿਆ ਮਨ ਤਨ ਉਹ ਮਰਦਾ ਉਹ ਨਾਲ ਦਾ ਰਜਦਾ ਹੁ ਕੀ ਕਰਨ ਬੋਲ ਸਕਦੇ ਦੀ ਗੱਲ ਦਾ ਜੋੜ ਸਾਬਦ ਹੋ ਗਿਆ ਅੰਦਰ ਅੰਦਰ ਰਜਦੇ ਨੇ ਉਹ ਜਿਵੇਂ ਪੱਠੇ ਚ ਇੱਟ ਫਸੀ ਹੁੰਦੀ ਐ ਆ ਗੋਹਦੀ ਉਹ ਵਿਚਾਰੀ ਭਜ ਸਕਦੀ ਨਹੀਂ ਰਜੂਏ ਉੱਥੇ ਹੋਰ ਕੀ ਕਰੂ ਖੰਦਰ ਵੜ ਜਾਂਦੇ ਨੇ ਅੰਦਰ ਇੱਧਰ ਹੋ ਨਾ ਭੱਜੇ ਰੋ ਰਣ ਭੱਜੇ ਭੱਜ ਲਫਦੋਣਾ ਚਾਹੀਦਾ ਭੱਜ ਨਹੀਂ ਨਾ ਭੱਜੇ ਰੋ ਰਣ ਬਰਤਾਂ ਨਹੀਂ ਭੱਜਿਆ ਹੋਊਗਾ ਉਹਦਾ ਦੁਰਜਨ ਦਲ ਦੱਜਾ ਮਨ ਤਨ ਰਿਜੇ ਸਭੈ ਨਾ ਭੱਜੈ ਸਭੈ ਨਾ ਭੱਜਾ ਨਾ ਭੱਜਾਂ ਸਭੈ ਨਾ ਭੱਜੈ ਰੋ ਰਣ ਭਾਇਦਾ ਕੋਈ ਨਹੀਂ ਹਣਾ ਚੋ ਭਾਇਦਾ ਮਤਲਬ ਆ ਆਪਣਾ ਹੜਤਾਂ ਬਿੱਡੀ ਛੱਡਦੇ ਖੜੇ ਉੱਥੇ ਸਟੈਂਡ ਉਹੀ ਰੱਖਦੇ ਨੇ ਸਟੈਂਡ ਹੀ ਰੱਖ ਛੱਡਦੇ ਉਹ ਸਾਇਤ ਨੂੰ ਸਾਰੇ ਹੀ ਨਹੀਂ ਅੰਦਰੋਂ ਅੰਦਰ ਰਿਜੇ ਜੰਦਲੇ ਜਾਏ ਬੋਲਣ ਨਾਲ ਪਰ ਛੱਡਦੇ ਨਹੀਂ ਜੜੂ ਜਿਨ੍ਹਾਂ ਨੇ ਨਹੀਂ ਬੰਨਿਆ ਗੁਰਬਤਨ ਨੂੰ ਉਹਦੋਂ ਨਹੀਂ ਬੰਨਿਓ। ਉਰਦੀ ਪੂਜਾ ਕਰੀਗੇ ਨਾ ਦਰ ਜਹਰੀ ਜੀ ਕਰ। ਹੁਣ ਵੀ ਕਰੀ ਜਾਂਦੇ ਨੇ। ਪੱਜਾ ਮਤਲਬ ਛੱਡੀ ਨਹੀਂ ਬਣੀ ਉਹ ਗੱਲ ਉਹਨਾਂ ਨੇ ਹਟタル ਵੀ। ਦਾ ਮਤਲਬ ਪੱਜਾ ਲਬਦਾ ਉਹ ਪੱਜੇਰੀ ਹਨ ਉਹ। ਇਸ ਗੱਲ ਨਾਲ ਉਹਨਾਂ ਦਾ ਮੰਦੀ ਪੱਜਾ। ਰੋਹ ਰਲੂਦ। ਸਦਾ ਗੁੱਸਾ ਕਰਕੇ ਵਿਰੋਧੀ ਹੋ ਕੇ ਖੜੇ। ਵਿਰੋਧ ਚ ਖੜੇ ਹੋਗੇ। ਉਹ ਬਰੋਹ ਜੀ ਅਨੰਦਪੁਰ ਸਾਹਿਬ ਖੜੇ ਹੋਏ ਸੀ ਬਰੋਹ ਚ ਰੋਹ ਰਣੂਦ ਗੁੱਸੇ ਨਾਲ ਲੜਾਈ ਕਰਦੇ ਰਹੇ ਸਭਾਂ ਵੀ ਸਾਨੂੰ ਐ ਕਹਿੰਦੇ ਨੇ ਬਾਈ ਦਾ ਰਿਆ ਨੇ ਕੀਤੀ ਦੀ ਇਹ ਗੱਲ ਸੀ ਵੀ ਇਹ ਪੱਥਰ ਪੂਜ ਕਾਹੇ ਕੋ ਪਾਹਨ ਪੂਜਦਾ ਅਸਲ ਤਾਂ ਗੱਲ ਇਹ ਸੀ ਵਿੱਚੋਂ ਲੜਾਈ ਦਾ ਹੋਰ ਕੀ ਕਾਰਨ ਸੀ ਸਾਡੇ پکڑਣ ਤੇ ਜੋੜ ਕਰਦਾ ਕਿਉਂ ਕਰਦਾ ਇਹ ਗੁੱਸੇ ਨਾਲ ਜੰਗ ਨੂੰ ਮਤਲਬ ਐ ਜੰਗ ਦੇ ਸੰਸਾਰੀ ਜੰਗ ਦੇ ਤਿਆਰ ਤੇ ਆ ਗਏ ਰੋ ਰਣਗਾ ਸਭ ਸਾਰੀ ਜਗ ਉਹ ਰੋ ਰਣਗਾ ਸਭ ਸਾਰੀ ਜਗ ਸੰਸਾਰੀ ਲੜਾਈ ਦੇ ਹਜ਼ਾਰਾ ਤੇ ਉਤਰੇ ਗਿਆਨ ਚਰਚਾ ਦੀ ਲਾਈ ਛੱਡ ਕੇ ਹੱਥੋਂ ਪਾਈ ਦੀ ਲੜਾਈ ਵੱਲ ਮੁਝ ਜਦ ਜਿਹੜੇ ਦੁਰਜਲੂਦ ਦੇ ਜੈ ਜੈ ਹੋਸੀ ਮੈਖਾਸੁਰ ਮਰਦਨ ਚੰਡ ਚਕਰਤਨ ਆਦ ਗੁਰੰ ਹਰ ਕੋਈ ਬੱਚੇ ਦੇ ਹਿਸਟਰੀ ਵੀ ਦਸੀ ਹਿਸਟਰੀ ਬੱਚੇ ਆ ਜੈ ਜੈ ਹੋਸੀ ਮੈਂ ਖਾਸਰ ਮਰਦਨ ਇਹ ਖਾਸਰ ਮਰਦਨ ਇਹ ਮੈਂ ਖਾਸਰ ਮਰਦਨ ਤੇਰੀ ਇਸ ਗੱਲ ਕਰਕੇ ਜੈ ਜੈਕਾਰ ਹੋ ਰਹੀ ਹੈ ਚੰਡ ਚਕਰਤਨ ਆਦ ਗੁਰੰ ਚੰਡ ਚਕਰਤਨ ਜਿਹੜੇ ਚੇਤਨਾ ਲੋਕਾਂ ਦੇ ਭਲੇ ਪੁਰਸ਼ ਨੇ ਉਹਨਾਂ ਦੇ ਜਿਹੜੇ ਬਦਲਦੇ ਉਹ ਚੱਕਰਤ ਹੈਰਾਨ ਹੋ ਜਾਂਦੇ ਨੇ ਹੈਰਾਨ ਅਲੋਕੀ ਅੱਖਾਂ ਕੀ ਕਿਉਂ ਕਹਿੰਦਾ ਸਾਰੀ ਗੇਵੇਂ ਪਲਟਦੀ ਐ ਰੰਦ ਜੋ ਕੁਝ ਲੋਕਾਂ ਨੂੰ ਦੱਸਿਆ ਹੋਇਆ ਸਿਰਫ ਵੱਤ ਉਹ ਵੱਤ ਗਲਤ ਸੀ ਉਹ ਪਲਟਦੀ ਸਾਰੀ ਉਹ ਵੀ ਹਯੋਰੀ ਉਲਟੀ ਅਸਲ ਕੀ ਹੈ ਉਲਟੀ ਗੱਗ ਉਲਟੀ ਗੱਗ ਬਹਾਲ ਉਲਟੀ ਬਹਦੀ ਤਾ ਚੱਕਰ ਤਾਂ ਹੋ ਗਏ ਉਹ ਜਿਹੜੇ ਜੱਗੇ ਭਲੇ ਆਦਮੀ ਸੀ ਨਾ ਜਾਣ ਵਾਲੇ ਉਹ ਚੱਕਰ ਤਾਂ ਹੋ ਗਏ ਜਿਹੜੇ ਰਾਹ ਜਾ ਰਹੇ ਤੋਂ ਰਾਹ ਗਲਤ ਸੀ ਉਹਨਾਂ ਨੇ ਕੋਹ ਹੋਰ ਯੱਡ ਤਾਂ ਨਹੀਂ ਸੀ ਕੋਛਾ ਰਿਆ ਸਾਡੀ ਬਾਲਾ ਦਾ ਨਾਮ ਜਪੇਦਾ ਉਹ ਬਾਲਾ ਆੜਾ ਨਾਮ ਨਾਵੇਂ ਰਹੀ ਉਹ ਦੂਵੇ ਪਾਸੇ ਬਦਲ ਲਿਆ ਉਹਨਾਂ ਨੇ ਆਪਣਾ ਬਦਲ ਲਿਆ ਜਾਂ ਬਦਲਿਆ ਪਰ ਪਰ ਤੇ ਰਿਜ਼ਲਟ ਆਉਣ ਲੱਗੇ। ਜੇ ਦਵਾਈ ਬਦਲੀ। ਹਰ ਖੁਰਾਕ ਦਾ ਰਿਜ਼ਲਟ ਆਉਣ ਲੱਗ ਗਿਆ। ਹਰ ਖੁਰਾਕ ਦਾ ਉਹਦਾ ਰਿਜ਼ਲਟ ਆਉਣ ਲੱਗ ਗਿਆ। ਸੰਦ ਚਕਰਤਨ ਆਦ ਗੁਰਮ। ਆਦ ਗੁਰਮ ਦੇਖੋ ਗੁਰਮ ਲਫ਼ਜ਼ ਹੈ। ਆ ਤੋ ਹੀ ਲੈ ਕੇ ਤੂੰ ਗਿਆਨ ਦੇਣ ਵਾਲਾ। ਗੁਰਮ ਪੁਲਿਤ ਆ ਗਿਆ ਹੁਣ ਲਫ਼ਜ਼। ਆਦ ਗੁਰੇ ਨਮਾ। ਇਹ ਗੁਰੇ ਆ। ਆਦ ਗੁਰੇ ਨਮਾ ਤੁਸੀਂ ਹੈ। ਜੋਗਾਦ ਗੁਰੇ ਨਮਾ ਸਤ ਗੁਰੇ ਨਮਾ ਸ੍ਰੀ ਗੁਰਦੇਵ ਜੀ ਇਹ ਇਹ ਉੱਥੇ ਲੈ ਜਾ ਕੇ ਜੋੜੀਏ ਗੱਲ ਆਦ ਗੁਰ ਆਦ ਗੁਰ ਆਦ ਤੋਂ ਲੈ ਕੇ ਤੂੰ ਗੱਲ ਦੇ ਰਿਹਾ ਪਹਿਲੀ ਜੂਨ ਤੋਂ ਲੈ ਕੇ ਹੁਣ ਤੱਕ ਤੇਰਾ ਹੀ ਗਿਆਨ ਹੈ ਆਦ ਗੁਰ ਜਦੋਂ ਤੋਂ ਜੀ ਪੈਦਾ ਹੋਇਆ ਜੱਤ ਤੀ ਤੂੰ ਗੁਰ ਗੱਲ ਦੇ ਰਿਹਾ ਸਾਰੀਆਂ ਪੌੜੀਆਂ ਤੈਨੂੰ ਚੜਾਇਆ ਹੁਕਮ ਨਾਲੇ ਸਾਰੀਆਂ ਪੌੜੀਆਂ ਚੜਾਇਆ ਹੁਕਮ ਨਾਲੇ ਜਬੇ ਹੁਕਮ ਨਾਲੇ ਮਰਦਾ ਰਿਹਾ ਹੁਕਮ ਨਾਲੇ ਡਿਵੈਲਪਮੈਂਟ ਹੋਈ ਹੈ ਆਦ ਗੁਰੂ ਚਾਚਰੀ ਪ੍ਰਯੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬ੍ਰਤੇ ਚਾਚਰੀ ਚਰਚਾ ਦਾ ਵਿਸ਼ਾ ਕੀ ਹੈ ਤੇਰਾ ਚਾਚਰੀ ਪ੍ਰਯੋਧਨ ਉਹ ਜਿਹੜੀ ਹੈ ਚਰਚਾ ਕਰਨ ਵਾਲੀ ਇਹਦਾ ਵਿਸ਼ਾ ਕੀ ਹੈ ਕਿਉਂ ਇਹ ਕੰਮ ਕੀ ਹੈ ਨਾ ਪ੍ਰਯੋਧਨ ਦੁਸ਼ਟ ਵਿਰੋਧਨ ਇਹਦਾ ਪ੍ਰਯੋਜਨ ਕੀ ਆ? ਇਹਦਾ ਮਤਲਬ ਕੀ ਆ? ਪਰ ਜੋ ਧਰਨ ਨਾਲ ਪਰਜੋਤਨ ਧਰਨ ਦਦ ਹਾਂ ਤਾਨ ਗਿਆਨ ਕਿਦੇ ਰਹੀ ਐ? ਦੁਸ਼ਟ ਬਰੋਧ ਨੂੰ ਐਸਾ ਤਾਂ ਦੇ ਰਹੀ ਐ ਜਿਹੜੀ ਦੁਸ਼ਟਤਾ ਦਾ ਵਿਰੋਧ ਕਰੇ। ਦੁਸ਼ਟਤਾ ਦੇ ਵਿਰੋਧ ਕਰਨ ਲਈ ਕਾਬਲ ਬਣਾ ਰਹੀ ਐ। ਅਸਾ ਗੰਦੇ ਰਹੀ ਹੈ ਜੋ ਔਗਣਾ ਦਾ ਵਿਰੋਧ ਕਰ ਸਕੋਂ ਤੁਸੀਂ ਔਗਣਾ ਦਾ ਵਿਰੋਧ ਕਰਨ ਵਾਲਾ ਗਿਆਨ ਵੰਡ ਰਹੀ ਹੈ ਸ਼ਕਤੀ ਦੇ ਰਹੀ ਹੈ ਸਭ ਨੂੰ ਔਗਣਾ ਦਾ ਵਿਰੋਧ ਕਰਨ ਵਾਲੀ ਰੋਸ਼ਨੀ ਦੇ ਰਹੀ ਹੈ ਸਭ ਨੂੰ ਰੋਸ ਔਗਣਾ ਦਾ ਵਿਰੋਧ ਕਰਨ ਵਾਲਾ ਨਾਮਦਾਨ ਦੇ ਰਹੀ ਹੈ ਸਭ ਨੂੰ ਧਾਨਾ ਹੈ ਨਾ ਲਫਜ਼ ਹਾਂ ਰੋਸ ਅਰੋਧਨ ਰੋਸ ਹੈ ਜਿਹੜਾ ਗੁੱਸਾ ਉਹਦਾ ਅਰੋਹਤ ਨੂੰ ਉਹਨੂੰ ਪੈਦਾ ਹੋਣ ਤੇ ਬੰਦ ਕਰ ਲੋ ਗੁੱਸ ਉਹ ਤਾਂ ਕੀ ਕਰਦਾ ਫਿਰ ਉਹਨਾਂ ਗਿਆਨ ਆਉਂਦਾ ਕੀ ਕਹਿੰਦਾ ਗੁੱਸੇ ਨੂੰ ਖਾਣ ਵਾਲਾ ਆ ਉਹ ਇਸ ਬੁੱਧੀ ਵਿਵੇਕ ਵਾਲੇ ਨੂੰ ਗੁੱਸਾ ਹੁੰਦਾ ਹੀ ਨਹੀਂ ਗੁੱਸੇ ਨਾਲ ਨਹੀਂ ਗੱਲ ਕਰਦਾ ਜੇ ਗੁੱਸੇ ਨਾਲ ਗੁੱਸੇ ਨਾਲ ਫੇਰ ਉਹੀ ਲੜਾਈ ਸ਼ੁਰੂ ਹੋ ਜੂ ਤੂੰ ਗੁੱਸੇ ਦੀ ਗੱਲ ਨਹੀਂ ਹੈ ਕੱਲ ਮਜ਼ਾਕ ਚਾਹ ਹੱਸ ਕੇ ਆ ਉਹਦੀ ਵੇਬ ਕੂਫੀ ਦੀ ਗੱਲ ਹੈ ਗੁੱਸਾ ਕਹ ਲੈ ਸਾਵਦਾ ਕਰਾਂ ਵੀ ਬਾਗਲ ਨੇ ਤੇ ਗੁੱਸਾ ਉਹਨਾਂ ਨੂੰ ਆਵੇ ਸਾਨੂੰ ਆਦੇ ਆਵੇ ਬਾਗਲ ਜਿਹੜਾ ਸਾਬ ਹੋ ਗਿਆ ਜਿਹੜਾ ਝੂਠਾ ਸਾਬ ਹੋ ਗਿਆ ਗੁੱਸਾ ਉਹਨੂੰ ਆਉ ਸਾਨੂੰ ਆਦੇ ਆਉਗਾ ਇਹਦਾ ਨੁਕਸਾਨ ਹੋਇਆ ਗੁੱਸਾ ਉਹਨੂੰ ਆਊਗਾ ਸਾਡਾ ਕੀ ਨੁਕਸਾਨ ਕਰਿਆ ਉਹਨੇ ਕਰਨਾ ਚਾਹੁੰਦਾ ਸੀ ਹੋਇਆ ਹੀ ਨਹੀਂ ਸਾਡਾ ਕਹਾਦਾ ਸੀ ਗੁਰੂ ਦਾ ਨੁਕਸਾਨ ਸੀ ਜਿਹਨੇ ਸੱਚੀ ਬੇਦਾ ਕੀਤੀ ਪਬਲਿਕ ਦੀ ਪਬਲਿਕ ਹੋਦੀ ਹੈ ਜੋ ਪਰਮੈਸ਼ਰ ਕੰਮ ਕਰ ਰਿਹਾ ਉਹ ਤਾਂ ਉਲਟੀ ਲਾਈਨ ਖਿੱਚ ਰਹੀ ਸੀ ਖਿੱਚ ਕਿਉਂ ਨਹੀਂ ਖਿੱਚ ਹੋਈ ਯਾਰੇ ਦੱਸ ਦੇਣਾ ਨਾ ਖਿੱਚ ਹੁੰਦੀ ਹੁੰਦੀ ਆ ਕਿਉਂ ਨਹੀਂ ਖਿੱਚ ਹੋਈ ਜੇ ਇਹ ਗੱਲ ਪ੍ਰਗਟ ਹੋ ਜਾਣੀ ਹੈ ਤੇ ਗੁੱਸਾ ਹੋ ਉਹ ਕਹਿੰਦਾ ਉਹਨਾਂ ਨੇ ਦੱਜਣਾ ਉਹਨਾਂ ਨੇ ਹਾਂ ਦਰਜਲ ਦਰ ਤਜਾ ਤਜਾ ਮੰਨਤਾ ਰਜਾ ਬਸ ਦਾ ਰਜਾ ਰੇਤੀ ਜਾਣ ਲੱਜੀ ਜਾਣ ਚਾਲੂ ਕੀ ਆਹੀ ਇਹਨਾਂ ਕੋਲ ਕੁਝ ਪੱਲੇ ਕੀ ਪੈਣਾ ਆ ਦੋ ਲੈਣਾ ਉਹਨਾਂ ਦੇ ਆ ਦੋ ਚੀਜ਼ਾਂ ਪੱਲੇ ਪਈ ਦੱਜਾ ਔਰ ਜੈ ਪਰ ਬਨਣਾ ਉਹਨਾਂ ਨੇ ਫੇਰ ਇਸ ਕਰਕੇ ਤੈਨੂੰ ਕਰੋਰ ਕਹਿੰਦੇ ਨੇ ਉਹ ਲੋਕ ਇਹ ਤੇਰਾ ਮਾੜਾ ਪੱਖ ਹੈ ਕਿ ਉਹਨਾਂ ਨੂੰ ਰਜਾ ਕਹਿੰਦਾ ਅਜੀਰੂ ਬੋਰੇ ਨੂੰ ਵੀ ਆਪਾ ਬੋਰਾ ਕਹਾਂਗੇ ਉਹ ਕਹੋਗੇ ਤਾਂ ਜੀ ਬਹੁਤ ਕਿਉਂਕਿ ਨਾਨਕ ਨੂੰ ਕਹਿੰਦੇ ਸੀ ਗੁਰਨਾਨ ਦੇਵ ਫਿਟਕੇ ਕਰਾਂ ਕੋਈ ਕਹੇ ਭੂਤ ਨਾ ਕੋਈ ਕਹੇ ਬਤਾਲਾ ਨਹੀਂ ਨਹੀਂ ਫਿਟਕੇ ਨਹੀਂ ਜਦੋਂ ਭੂਤ ਬਤਾਲਾ ਫਿਰ ਕਹਿੰਦੇ ਸੀ ਨਾ ਕਬੀਰ ਨੂੰ ਕੁੱਤਾ ਕਹਿੰਦੇ ਸੀ ਕਹਿੰਨਾ ਹੁਕੂਕਰਾਮ ਕੋ ਉਤਿਆ ਮੈਰੋ ਲੋ ਫਿਰ ਬੋਰਾ ਕਹਿੰਦੇ ਸੀ ਕਹਿੰਦੇ ਹੁੰਦੇ ਨੇ ਔਰ ਹਿਜੇ ਦੇ ਸਿੱਧੇ ਉੱਤਰ ਹੋਰ ਕਹਿੰਦਾ ਕੀ ਤੂੰ ਮਰਾਚ ਬਦੁੱਸਨ ਪੰਨਾ ਜਨ ਵਿਦਾਂਸਨ ਤੂੰ ਰਾਜ ਹੈ ਜਿਹੜਾ ਜਿਹੜੇ ਬਹੁਤ ਆਪਣੇ ਆਪ ਨੂੰ بڑے ਬੈਠੇ ਨੇ ਸੰਤ ਜਿਹਨੂੰ ਦੇਖ ਕੇ ਲੋਕ ਡਰ ਜਾਂਦੇ ਨੇ ਇਹਨਾਂ ਦੇ ਕਹਾਣੀਆਂ ਬਣਾਈ ਹੋਈਆਂ ਨੇ ਫਲਾਣ ਨੂੰ ਸਰਾਫ ਦੇ ਕਰਤਾ ਝੂਠ ਬੋਲ ਕੇ ਅਜੇ ਵੀ ਹੁਣ ਵੀ ਬੋਲਦੇ ਨੇ ਕਈ ਝੂਠ वैसे जेडे हुंदे ने ना चेले ओ पहले गुरुआं नु उड़ा दे ने गुरु नी उड़दे हुंदे। पीछो ਝੂਠ ਬੋਣਾ ਲੱਗ ਜਾਂਦੇ ਨੇ। ਇਹਨਾਂ ਤਰ੍ਹਾਂ ਸੋ ਬਾਰੇ ਝੂਠ ਬੋਲੇ ਹੋ ਨੇ ਇਹਨਾਂ ਨੇ। ਝੂਠੀਆਂ ਕਤਬਾਂ ਲਿਖ ਮਾਰੀਆਂ। ਔਰ ਜਦੋਂ ਉਹਨੂੰ ਬਾਣੀ ਦੇ ਕਿਸੇ ਨੂੰ ਆਏ ਨਹੀਂ ਥੋੜੂ ਈ ਆਉਂਦੇ। ਗੁਰਬਾਣੀ ਕੀ ਕਹਿੰਦੀ ਤੁਸੀਂ ਕਿਡੀਆਂ ਕਾੜੀਓ ਉਹ ਤਾਂ ਸਾਰੀਆਂ ਪਖੜਨ ਵਾਲੀਆਂ ਨੇ ਗੱਲਾਂ। ਝੂਠ ਦੇ ਤੇ ਕੋਈ ਚੀਜ਼ ਆਪਣੀ ਭੱਲ ਬਣਾਈਏ ਝੂਠ ਬੋਲ ਕੇ ਝੂਠ ਬੋਲ ਕੇ ਭੱਲ ਬਣਾਈ ਹੋਈ ਆ ਉਹ ਉਹ ਤੂੰ ਬਰਾਸ਼ ਨੇ ਹੈ ਅ ਤੂੰ ਬਰਾਸ਼ ਹੋਸੇ ਦਾ ਲਾਉਣਾ ਬਣਾ ਕੇ ਲੋਕਾਂ ਨੂੰ ਡਰਾਵੇ ਝੂਠੀ ਭੱਲ ਬਣਾ ਕੇ ਨਾ ਪ੍ਰਚਾਰ ਕਰਕੇ ਲੋਕਾਂ ਨੂੰ ਡਰਾ ਕੇ ਰੱਖੇ ਉਹ ਤੂੰ ਬਰਾਸ਼ ਹੋ ਕਿਹਾ ਹੋਇਆ ਇਹਦਾ ਤਾਂ ਬਧਦ ਕਰ ਦਿੰਦੀ ਹੈ ਜਾਰੇ ਪੁੱਟ ਕੇ ਨਾਸੇ ਕਰ ਦਿੰਦੀ ਹੈ ਬਿਲਕੁਲ ਇਹ ਗੱਲਾਂ ਦਾ ਬਿਦਲ ਜਨ ਬਿਦਲ ਜਨ ਕਰਨਾ ਦੀ ਆ ਬਿਦਲ ਖਨਾ ਉਹਦਾ ਅੰਸਬ ਵੀ ਛੱਡਦੀ ਅੰਸ ਕਹਾਂ ਨੂੰ ਕਹਾਂ ਨੂੰ ਖਤਮ ਰਹਿਣੂ ਪੈਦਾ ਹੀ ਨਹੀਂ ਹੋਊਗਾ ਇਹ ਚੀਜ਼ ਉਹਦੇ ਪੜਲਾਏ ਵਾਸਤੇ ਕੀ ਹੈ ਪਗੜ ਵਾਸਤੇ ਕੀ ਹੈ ਪਰਲਾਏ ਆ ਕੇ ਸਾਰਾ ਹੀ ਨਾਸ ਹੋ ਜਾਂਦਾ ਨਾ ਸਾਰੀ ਸ੍ਰਿਸ਼ਟੀ ਆ ਪਗੜਨ ਬਾਅਦ ਵਾਸਤੇ ਪਰਲੇ ਆ ਜਾਂਦੀ ਨਾਸ ਹੋ ਪਖੰਡਵਾਸ ਤੇ ਪਰਲੇ ਦਾ ਰੂਪ ਹੈ ਦਾ ਸਾਰੇ ਜਿਵੇਂ ਸਪਰੇਅ ਕਰ ਦਿੰਦੇ ਸਾਰੇ ਉਹ ਕਾਫੂਸ ਮਰ ਜਾਂਦਾ ਨਾ ਸੁਬੇ ਕਰੇ ਫਸਲ ਲੈ ਜਾਂਦੀ ਹੈ ਕਾਫੂਸ ਮਰ ਜਾਂਦਾ ਨਾਮ ਦੀ ਸਪਰੇਅ ਹੋਈ ਤੇ ਕਾਫੂਸ ਮਰ ਗਿਆ ਉਹ ਜਿਹੜੇ ਬਰੇ ਨੇ ਉਹਨਾਂ ਵਾਦੇ ਦਾ ਪਰਲਾ ਆ ਗਈ ਨੋ ਜੱਗ ਬਿਦੁਸਨ ਜਿਵੇਂ ਜਗ ਬਿਨ ਸਾਰਾ ਨਾਸ ਕਰ ਦਿੰਦੀ ਹੈ ਨਾ ਕਦੇ ਪੈਦਾ ਕਰਨੀ ਕਦੇ ਨਾਸ ਸਾਰਾ ਇਹ ਸੰਸਾਰ ਨੂੰ ਨਾਸ ਕਰਨ ਦੀ ਸ਼ਕਤੀ ਰੱਖਦੀ ਹੈ ਪਖੰਡ ਬਾਦ ਨਾਸ ਕਰਨਾ ਕੀ ਔਖਾ ਇਹਦੇ ਵਾਸਤੇ ਸ਼ੁੱਧ ਨਾਸ ਕਰਨਾ ਕੀ ਔਖਾ ਇਹ ਤਾਂ ਸਾਰਾ ਸੰਸਾਰ ਨੂੰ ਜ ਚਾਹੁੰਦੀ ਹੈ ਜਦ ਖਤਮ ਕਰ ਦਿੰਦੀ ਜਾਂ ਚਾਹੁੰਦੀ ਹੈ ਪੈਦਾ ਕਰ ਲੈਂਦੀ ਹੈ ਪਖੰਡ ਪੈਦਾ ਕਰਨ ਕੀ ਔਖਾ ਪਹੜਨ ਨਾਸ ਕਰਨਾ ਕੀ ਔਖਾ ਸ਼ੁੱਧ ਮਤੇ ਪਰ ਬਤਾ ਤੇਰਾ ਸ਼ੁੱਧ ਹੈ ਤੂੰ ਪਖੰਡਵਾਸ ਪੈਦਾ ਨਹੀਂ ਕਰਦੀ ਪਖੰਡਵਾਸ ਪੈਦਾ ਹੋ ਜਾਂਦਾ ਹੈ ਪਖੰਡਵਾਸ ਅਸਲ ਚ ਕੀ ਹੁੰਦਾ ਥੱਲੇ ਦੀਆਂ ਪੌੜੀਆਂ ਨੇ ਥੱਲੇ ਦੀਆਂ ਪੌੜੀਆਂ ਨੇ ਇਹ ਚੜ ਕੇ ਹੀ ਜਾਉਂਦਾ ਹੈ ਪਖੰਡਵਾਸ ਜਦ ਹੁੰਦਾ ਜਦ ਉਹ ਕਹਿੰਦੇ ਨੇ ਬਸ ਅਸੀਂ ਹੋਈਏ ਹੋਰ ਰੱਬ ਬਸ ਹੋਰ ਕੁਝ ਨਹੀਂ ਉਹ ਫੇ ਪਖੰਡਵਾਸ ਥੱਲੇ ਦੀ ਪੌੜੀ ਵਾਲੇ ਆਪਣੇ ਆਪ ਨੂੰ ਕਹਿਣ ਵੀ ਅਸੀਂ ਗਾਹਾਂ ਤੇ ਸਿਰੇ ਤੇ ਹੀ ਖੜੇ ਆਂ ਤਾਂ ਕੁਝ ਹੈ ਨਹੀਂ ਉਹ ਪੌੜੀ ਪਹਾੜਵਾਲ ਬਣ ਜਾਂਦੀ ਐ ਦੀ ਪੌੜੀ ਤੇ ਜ਼ਰੂਰ ਚੜ੍ਹ ਕੇ ਆਉਣਾ ਉਸੇ ਆਪਣੀ ਪੌੜੀ ਨੂੰ ਕਹਿਣ ਆ ਜਾਂਦੇ ਫਿਰ ਪਾੜਨ ਨਹੀਂ ਕਹਿੰਦਾ ਫਲ ਕਾਰਨ ਫੂਲੀ ਬਣ ਰਹਾਏ ਫੁੱਲ ਤੱਕ ਪਹੁੰਚਾਉਣ ਨੂੰ ਸਾਰੀਆਂ ਪੌੜੀਆਂ ਚੜ੍ਹਦੀਆਂ ਪੈਣੀਆਂ ਘਟਿਆ ਗਿਆਨ ਵਾਲਿਆਂ ਵਾਸਤੇ ਉਹ ਕਲਾਸ ਸੀਗੀ ਪਰ ਉਹਦਾ ਪੜਾਉਣ ਵਾਲਿਆਂ ਨੇ ਆਪਣੀਓ ਕਲਾਸ ਨੂੰ ਫਾਈਨਲ ਬਣਾ ਦਿੱਤਾ ਕੰਮ ਕੇਪਾ ਘੜਵਾਸੀ ਚੂੜਬੋਲ ਕਾ ਕਹਿ ਤਬਾਏ ਤੇਰਾ ਬੋਨ ਕਹਾਂ ਨਹੀਂ ਇਹ ਦਹਾਂ ਜਾਣਦੇ ਰੋਕਦੇ ਕਾਂ ਜਾਣਦੇ ਰੋਕਣਾ ਬਰਸੀ ਕਾਂ ਦਰਾ ਵਦ ਕਰ ਹੇ ਜਾਲਪਾ ਜਯੰਤੀ ਸ਼ਤਰ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜਿੱਤ ਪ੍ਰਾਪਤ ਕਰਨ ਲਈ ਜਾਲ ਪਾ ਜੰਤੀ ਜਿੱਤ ਪ੍ਰਾਪਤ ਕਰਨ ਲਈ ਕਹ ਦਤੇ ਫਤਿਹ ਪ੍ਰਾਪਤ ਕਰਨ ਲਈ ਕਹ ਦਤੇ ਸਾਰੇ ਪਖੰਡ ਬਾਤ ਤੇ ਫਤਿਹ ਪ੍ਰਾਪਤ ਕਰਨ ਲਈ ਪਖੰਡ ਬਾਤ ਤੇ ਛਤਰ ਮਥੰਤੀ ਛਤਰਵਾਂ ਨੂੰ ਜਿਹੜੇ ਸਾਰੇ ਛਤਰੂ ਨੇ ਨਾ ਛਤਰੂ ਕੌਣ ਜਿਹੜੇ ਅਸਲ ਤੇ ਵੀ ਜਿਹੜੇ ਸੱਚ ਦਾ ਰਾਹ ਰੋਕਦੇ ਨੇ ਉਹ ਛਤਰੂ ਨੇ ਹੋਰ ਕੋਈ ਕੋਈ ਨਹੀਂ ਹੈ ਛਤਰੂ ਕੋਈ ਨਹੀਂ ਸ਼ਤਰਗਣ ਸਜਾਰਾ ਰੋਕਣ ਉਹ ਗਣ ਹਾਰੇ ਜਿਹੜੇ ਦੁਨੀਆ ਦਾ ਰਾਹ ਰੋਕਦਾ ਅੱਗੇ ਹੈ ਨਹੀਂ ਕੁਛ ਪਖੰਡਵਾਦ ਉਹ ਸ਼ਤਰੂ ਨੇ 70 ਪਬਲਿਕ ਦਾ ਸ਼ਤਰੂ ਨੇ ਨਾ ਉਹ ਦੁਸ਼ਟ ਪ੍ਰਦਾਹਨ ਦੁਸ਼ਟਾਂ ਦੇ ਉੱਤੇ ਖੜਾ ਕਰ ਦੁਸ਼ਟ ਪ੍ਰਦਾਹਨ ਗਾੜ ਮਤੇ ਗਾੜ ਮਤੇ ਗੂੜ ਗਿਆਨ ਤੇਰਾ ਬਤਾ ਜਿਹੜਾ ਹੈ ਵੱਤ ਹੈ ਤੇਰੀ ਤੇਰੀ ਬੱਤ ਬਹੁਤ ਹੀ ਗੁੜੀ ਹੈ ਗੜੀ ਮਤਲਬ ਹੈ ਗੂੜਾ ਗਿਆਨ ਗੂੜ ਗਤੇ ਜੈ ਜੈ ਹੋਸੀ ਮਖਾਸੁਰ ਮਰਦਨ ਆਦ ਜੁਗਾਦ ਅਗਾਦ ਜੈ ਜੈ ਹੋਸੀ ਮਖਾਸੁਰ ਮਰਦਨ ਹੈ ਮਖਾਸੁਰ ਮਰਦਨ ਤੇਰੀ ਇਸ ਕਲੂ ਵਿੱਚ ਜੈ ਜੈ ਕਾਰ ਹੋ ਰਹੀ ਹੈ ਆਦ ਜੁਗਾਦ ਅਗਾਦ ਗਤੇ ਤੇਰੀ ਆਤੋ ਲੈ ਕੇ ਸ਼ੁਰੂ ਤੋਂ ਲੈ ਕੇ ਜਿਹੜੀ ਗਤੀ ਹੈ ਚਾਲ ਆ ਜੜੀ ਤੇਰੀ ਜਬ ਦੁਨੀਆ ਚੱਲ ਰਹੀ ਹੈ ਜਬ ਦਰਿਆ ਚੱਲ ਰਿਹਾ ਸਮੁੰਦਰ ਤੱਕ ਲੈ ਜਾਂਦਾ ਆਗਾਜ਼ ਗਥੇ ਬਰੁਖੀ ਬੁੱਧੀ ਤੋਂ ਪਰੇ ਦੀ ਉਹ ਗੱਲ ਹੈ ਖਤਰਿਆਂ ਖਤੰਗੀ ਆਪੈ ਆ ਭੰਗੀ ਜਿਹੜੇ ਅੱਗੇ ਤੇਰੇ ਨਾਲ ਟੱਕਰ ਦੇਣੇ ਲੋਹੇ ਸੂਰਬ ਖਤੰਗੀ ਬੜੇ ਬੜੇ ਚਰਚਾ ਕਰਨ ਵਾਲੇ ਜਿਹੜੇ ਰਾਖਸ਼ ਆ ਕੇ ਟੱਕਰ ਦੇਣੇ ਉਲਟੀ ਬੁੱਧੀ ਵਾਲੇ ਕੁਬੁੱਧਾਲੇ ਜਿਆਦਾ ਆ ਕੇ ਤੈਨੂੰ ਟੱਕਰ ਦੇਦੇ ਨੇ ਚੱਚਾ ਕਰਦੇ ਨੇ ਖत्रीਆਂ ਆਪ ਐ ਉਹਨਾਂ ਵਾਸਤੇ ਗਿਆ ਖਤੰਗੀ ਉਹਨਾਂ ਵਾਸਤੇ ਆਪ ਹਥਿਆਰ ਰੂਪੇ ਹੁੰਦੂ ਹਥਿਆਰ ਨਹੀਂ ਫੜਦੇ ਪੈਂਦੇ ਤੇਰਾ ਅੰਗ ਅੰਗ ਹਥਿਆਰ ਹੈ ਤੇਰੇ ਅੰਗੇ ਸਾਰੇ ਹਥਿਆਰ ਰੂਪ ਨੇ ਅੰਗ ਕੀ ਨੇ ਹੁਣ ਹਥਿਆਰ ਕਿਵੇਂ ਇਹਦੇ ਅੰਗਰੇ ਸਾਰੇ ਕੀ ਨੇ ਗੁਣੇ ਦੇ ਅੰਗਰੇ ਆਕਰ ਅੰਗ ਕੀ ਨਾ ਟੋੜੇ ਨੇ ਕੱਟਦੇ ਕੀ ਨਾ ਕੱਟਦੇ ਓ ਗੁਣ ਨੇ ਉਹਨਾਂ ਕੋਲ ਓਗਣੇ ਗੁਣ ਨੇ ਜਿਹੜੇ ਅੱਗੇ ਟਕਰਾਉਂਦੇ ਨੇ ਓਗਣਾਰੇ ਨੇ ਇਧਰ ਗੁਣ ਨੇ ਓਗਣਾ ਨਹੀਂ ਕੱਟ ਹੁਣ ਉਹਨਾਂ ਨੇ ਨਹੀਂ ਕੱਟ ਹੁਣ ਇਹੋ ਖਤਰਿਆਨ ਕੋਲ ਕੀ ਨੇ ਓਗਣ ਸੁਕਾਰੀ ਨੇ ਸੁਕਾਰ ਖੋੜ ਕੀ ਹੁੰਦਾ ਉਗਲ ਤੇਰੇ ਕੋਲ ਕੀ ਨੇ ਗੁਣ ਇਹ ਜੇਕਰ ਤੇਰੇ ਕੋਲ ਨਬਰਤਾ ਹੋਰ ਗਰੀਬੀ ਹੈ ਨਵੇਂ ਸੋਹਰਾ ਹੋਏ ਤੇਰੇ ਕੋਲ ਨਬਰਤਾ ਹੋਰ ਗਰੀਬੀ ਆ ਉਹਨਾਂ ਕੋਲ ਹੰਕਾਰ ਹੈ ਉਹਨਾਂ ਕੋਲ ਔਗਣ ਨੇ ਤੇਰੇ ਕੋਲ ਗੁਣ ਕੱਟੇ ਉਹਨਾਂ ਲਈ ਜਾਣ ਕਤਰਿਆਨ ਖਤੰਗੀ ਆਪ ਕੱਟਦੀ ਆ ਫਿਰ ਕੀ ਦਿੱਦੀ ਕੀ ਔਰ ਨੂੰ ਘਟਕੇ ਆ ਪਹਿਰਾਨ ਆ ਪਹਿਰਾਨ ਬਰਦਾ ਔਰ ਆਪ ਔਰ ਤੈਨੂੰ ਕੋਈ ਕੱਟ ਨਹੀਂ ਸਕਦਾ ਆਦ ਅਨੰਗੀ ਅਗਾਦ ਗਤੇ ਆਜ ਤੱਕ ਨਹੀਂ ਲੱਗੀ ਹਾ ਤੋ ਅਨੰਗੀ ਅਗਾਦ ਗਤੇ ਅਗਾਦ ਕੋਈ ਸਰੀਰ ਨਹੀਂ ਹੈ ਤੇਰਾ ਰੱਬ ਦਾ ਮਤਲਬ ਸਿੱਧੇ ਨਹੀਂ ਹੈ ਕੋਈ ਗੁਰੂ ਖੱਡ ਮਾਸ ਦੀ ਕੋਈ ਦੇ ਨਹੀਂ ਹੈਗੀ ਕੋਈ ਅੰਗ ਪੈਰ ਐਸਾ ਨਹੀਂ ਹੈ ਜੈਸਾ ਸੰਸਾਰੀ ਆਦਮੀ ਦਾ ਕਿ ਸਦਾਇਆ ਔਰ ਤਦਾਖੁਦ ਹੈ ਚਾਹੇ ਇਹਨਾਂ ਨੇ ਉਹ ਮੂਰਤੀ ਰੁੱਗੀ ਕਹਿ ਕੇ ਉਹ ਮੂਰਤੀ ਘੜਤੀ ਕੋਈ ਮੂਰਤੀ ਦੇ ਅੰਗ ਪੈਰ ਬਣਾਏ ਹੋਏ ਨੇ ਨਾ ਕਬੂ ਹੱਥ ਸਾਰਾ ਕੁਝ ਹੈ ਤੂੰ ਅੰਗੀ ਅਨ ਅੰਗੀ ਹੈ ਅੰਗ ਕੋਈ ਨਹੀਂ ਹੈ ਤੇਰਾ ਬੁੱਧੀ ਦਾ ਕੀ ਆਪੋ ਹੁੰਦਾ ਬੁੱਧੀ ਦੇ ਗੋਣਾ ਬੁੱਧੀ ਦੇ ਅੰਦਰ ਉਦੇ ਗੁਣਾਂ ਦੇ ਅੰਗ ਨੇ ਸਾਰੇ। ਤੋ ਦਰਵਾਰਾ ਹੈ ਵੀ ਅੰਗ। ਦਰਬੋਲ ਹੈ ਵੀ ਅੰਗ। ਅਕਾਲ ਪੁਰਖ ਦੇ ਵੀ ਅੰਗ। ਬਸ ਇਹ ਅੰਗ ਨੇ ਤੇਰੇ ਹੋਰਾਂ ਕੋਲ ਹੋਰ ਕੁਝ ਨਹੀਂ ਹੁੰਦਾ। ਅਜੂਦੀ ਹੈ ਵੀ ਅੰਗ। ਸਾਇਬਾਂ ਘ ਹੈ ਵੀ ਅੰਗ। ਦਰਗਾਰ। ਦਰਗਾਰ। ਇਹ ਅੰਗ ਨੇ ਤੇਰੇ ਹੋਰ ਕੁਝ ਨਹੀਂ। ਤੂੰ ਦਰਪਾਇਆ ਪੈਰੂ ਕੱਢ ਦੇਣ ਪੈ ਕਾਹੂ ਕੋ ਦੇਤ ਨਾ ਪਹਿਮਾਨ ਤੋ ਜਾ ਕੇ ਜੀ ਪੈਬਰ ਨੇ ਨਾ ਕੇ ਰੁਪਏ ਨੇ ਬੜਾ ਲਾਜ ਬਿਹੰਦਨ ਬੜਾ ਲਾਜ ਬੜਾ ਲਾਜ ਕੌਣ ਬਿੱਲਾ ਬੜਾ ਲਾਜ ਕੀ ਹੁੰਦਾ ਵਿਸਾਕਾ ਤੂਤ ਇਹ ਜਣਾ ਆਇਆ ਨਾ ਆਪਣੇ ਬਗਲਾਰ ਬਿੱਲਾ ਵਿਸ਼ਵਾਸ ਘਾਤ ਕਰ ਦੇਣ ਅਖਾਮੀ ਦੇ ਬੰਦੇ ਨੇ ਕੋਈ ਸਰਦਾ ਕਰਕੇ ਆ ਜਾਂਦਾ ਕੋਲ ਸਿੱਖ ਬਣ ਕੇ ਉਹਨੂੰ ਖਾ ਜਾਂਦੇ ਨੇ ਇਹ ਵਿਸ਼ਵਾਸ ਘਾਤ ਹੈ ਅਸਲ ਦੇ ਵਿੱਚ ਵਿਸ਼ਵਾਸ ਘਾਤ ਹੈ ਉਹਦਾ ਵਿਸ਼ਵਾਸ ਕਰ ਲੈਂਦੇ ਨੇ ਭਗਤੀ ਕਰਦਾ ਇਹ ਉਹਨੂੰ ਖਾ ਜਾਂਦੇ ਨੇ ਵਿਸ਼ਵਾਸ ਘਾਤੇ ਹੋਇਆ ਨਹੀਂ ਇਹ ਵਿਸ਼ਵਾਸ ਘਾਤੀ ਨਹੀਂ ਬਲਿਆ ਚੁੱਪ ਕਰਕੇ ਅਖਾਮੀ ਦੇ ਬੰਦੇ ਜੂਆ ਵਿਸ਼ਵਾਸ ਕਰ ਲੈਂਦਾ ਇਹ ਤਾਂ ਸੁੱਤਾ ਪਿਆ ਉਹ ਬੜਾ ਹੀ ਨਾਲ ਦੌੜਦਾ ਚਫਟਕੇ ਆਪ ਨੂੰ ਖਾਲਨ ਇਹ ਵੀ ਡਡੂ ਉਹ ਉਹ ਕਰਦਾ ਬਗਲਾ ਕਰਦਾ ਇਹ ਵਿਸ਼ਵਾਸ ਘਾਤ ਨੇ ਉਹਦੇ ਤੇ ਹੀ ਕਰਦੇ ਨੇ ਘਾਤ ਜਿਹੜਾ ਇਹਨੂੰ ਤੇ ਵਿਸ਼ਵਾਸ ਕਰੇ ਜਿਹੜਾ ਇਹਦੇ ਨੇੜੇ ਜਾਵੇ ਹਾਂ ਬਿਰਲਾਜ ਬਿਹੰਡਣ ਬਿਹੰਡਣੀ ਬਹਿੜੜੀ ਇਹਦਾ ਕੀ ਹੈ ਇਹਦੀ ਬੋਲਤੀ ਬੰਦ ਕਰ ਦਿੰਦੀ ਆ ਇਹ ਤਾਂ ਇਹਦੇ ਸਾਹਮਣੇ ਬੋਲ ਨਹੀਂ ਸਕਦੇ ਵਿਚਾਰੇ ਇਹ ਤਾਂ ਇਹਨਾਂ ਦਾ ਦਿਮਾਗ ਤਾਂ ਜਿਹੜਾ ਨਾ ਉੱਥੇ ਹੀ ਹੋ ਜਾਂਦਾ ਦੇਖਦੀ ਸਾਰੇ ਸੋ ਦੋ ਜੰਦ ਚ ਚੁਰ ਦੰਡਣੀ ਚ ਚੁਰ ਚ ਚੁਰ ਰੋਕ ਗਰੀ ਆ ਅੱਖਾਂ ਦੇ ਘੋਲ ਨਾ ਬਣਾਉਣ ਵਾਲਾ ਹੋ ਉਹ ਜੀ ਨਾ ਨੇ ਕਥਾ ਕਹਾਣੀਆਂ ਬਣਾਈਆਂ ਨਹੀਂ ਇਹਨੇ ਦਿੱਤਾ ਜਿਵੇਂ ਦਾ ਐਂ ਵਿਗੜ ਗਿਆ ਨਿਕਲ ਗਿਆ ਸਾਡੇ ਵੀ ਉੱਥੇ ਆਪਣੇ ਨਾਲ ਜੀ ਸੀ ਆਖੇ ਜੀ ਇਹਦੀ ਕਾਲੀ ਜੀਵ ਹੈ ਆਪਣੇ ਇਹਦੇ ਨਾਲ ਅਰਤੀ ਕਾਰ ਵਾਲੇ ਦੇ ਨਾਲ ਯੂਪੀ ਚ ਰਹਿੰਦਾ ਇਹਨਾਂ ਆਪਣੇ ਹਰਮਨ ਸਿੰਘ ਦੇ ਨਾਲ ਉਹ ਕਹਿੰਦੇ ਕਾਲੀ ਜੀਬ ਹੈ ਉਹਦੀ ਬਹਲਾ ਮੇਰੇ ਕੋਲ ਲਿਆ ਮੈਂ ਵੜਦਾਂ ਨਾ ਜੀਬ ਉਹਦੀ ਤੁਸੀਂ ਡਰਾਓ ਨੂੰ ਬਿਨ ਡਰਾਉ ਦਿਓ ਇਹ ਤੁਸੀਂ ਡਰਾਓ ਲੋਕਾਂ ਨੂੰ ਜਾ ਕੇ ਕਾਲੀ ਜੀ ਮੈਂ ਜਾ ਉਹਨੂੰ ਕਹਿ ਦੋ ਮੇਰਾ ਬਗਾੜੇ ਕੀ ਬਗਾੜ ਦੇ ਉਹ ਕਹਿ ਦੋ ਜਾ ਤੇ ਤਾਂ ਡਰਦੇ ਸੀ ਸਾਰੇ ਅਜੀ ਸੰਗੜ ਲਾ ਲਏ ਨੇ ਇੱਕ ਛੇਤਰ ਨਹੀਂ ਚੱਲਦੇ ਹੁੰਦੇ ਤੇ ਇਹ ਜੇ ਹਾੜੇ ਕੱਢਣ ਲੱਗੇ ਤੇ ਕਾਲੀ ਜੀ ਬਣ ਚਿੱਟੀ ਜੀ ਉਹਨਾਂ ਜਾ ਕੇ ਹੁੰਦਾ ਤਾਂ ਕਹਿੰਦੇ ਹਰਵੰਸਨ ਵੀ ਹਤਵੰਦ ਵਾਲਾ ਤੁਹਾਡੇ ਨਾਲ ਅਸੀਂ ਗੱਲ ਕਰਦੇ ਆਪੇ ਨਹੀਂ ਕਰਦੇ ਛੇਤਰ ਜੋ ਸਾਡਾ ਤਕੜਾ ਆਪੇ ਨਹੀਂ ਗੱਲ ਕਰਦੇ ਸੁੱਖ ਦੇ ਬਰਦ ਸੀਨਾ ਕਹਿੰਦਾ ਜੀ ਦਾ ਤਾਂ ਨਹੀਂ ਪਿੰਡ ਦੇ ਤੇ ਇਹਨਾਂ ਨੇ ਕੰਮ ਨਹੀਂ ਕਰਨਾ ਮੈਂ ਕਿਹਾ ਠੀਕ ਹੈ ਕਹਿੰਦਾ ਸਾਡਾ ਨਹੀਂ ਕੰਮ ਚੱਲਦਾ ਇਹਨਾਂ ਨੇ ਕੰਮ ਕਰਨਾ ਪੀ ਕੇ ਪੈ ਜਾਣਗੇ ਮੈਂ ਕਿਹਾ ਠੀਕ ਹੈ ਤੁਸੀਂ ਆਪਣਾ ਅਸੀਂ ਤਾਂ ਤੁਹਾਡੇ ਘਰ ਦੇ ਸੇਵਕ ਹੁਣ ਹੁਣ ਮੈਂ ਕਹਾਂ ਦੱਸੋ ਕੀ ਕਹਾਂ ਇਹ ਤਾਂ ਮੈਂ ਗੁਰੂ ਘਰ ਦੇ ਤੁਸੀਂ ਮਾਲਕ ਹੋ ਤਾਂ ਦੱਸੋ ਉਹ ਬੰਦ ਕਰਦਾ ਦੱਸੋ ਕੀ ਕਹੀਏ ਹਰ ਵਕਤ ਸੋ ਨਹੀਂ ਇਹਨਾਂ ਚ ਸਾਰਿਆਂ ਚ ਵਧੀਆ ਆਦਮੀ ਦੋ ਤਿੰਨ ਨੇ ਉਹਨੀਆਂ ਗਾ ਉਹ ਸਭ ਜਾਣਦੇ ਪਰ ਕੀ ਕਰੇ ਬੰਦੇ ਚੰਗੇ ਕਿੱਥੋਂ ਲੈ ਗਿਆ ਬਈ ਕਿੱਥੋਂ ਬੰਦੇ ਚੰਗੇ ਲੈ ਗਿਆ ਗਿਆ ਤਾਂ ਕਹਿੰਦੇ ਖੜ ਕੇ ਦੇਖੋ ਜੀ ਸਾਨੂੰ ਕੋਈ ਨਹੀਂ ਗਿਆ ਇਹ ਤਾਂ ਆ ਸੇ ਬਈ ਜਾਣਦੇ ਆ ਰੋੜੀ ਕੋਟੜਾ ਟਾਹੋਟੜਾ ਜਾਣਦੇ ਸੀਸ ਗਾਇ ਨੂੰ ਖੜਾ ਕਰਦਾ ਜਾ ਲੈਟਰ ਪਾਇਆ ਇਹਨਾਂ ਨੇ ਜਗਾ ਲੈ ਕੇ ਬਈ ਵੀ ਸੀ ਉੱਥੇ ਗਿਆ ਹੋਇਆ ਉਹਨਾਂ ਨੇ ਵੀ ਦੇਖੋ ਅਸੀਂ ਕਹਿੰਦੀ ਤਾਂ ਹੁੰਦੇ ਨਹੀਂ ਨਾ ਸਾਨੂੰ ਬਾੜੀ ਹੋਦੀ ਹੈ ਨਾ ਅਸੀਂ ਪੜਦੇ ਉਹ ਇਹਦਾ ਗੁਰੂ ਘਰ ਦੀ ਆ ਅੱਛੇ ਬਈ ਕਰਨ ਜਾਣਦੇ ਲੋਡੀ ਗੁਰਨੀ ਟਾਂਸ ਉੱਠਣ ਦੀ ਆਸੇਬ ਹੈ ਗੁਰੂ ਚਲੋ ਇਹਦੇ ਵਿੱਚੋਂ ਜੇ ਕੋਈ ਦੇ ਦੂ ਜਿਹੜਾ ਕੋਈ ਦੇ ਦੂ ਜਹਾਂ ਜਿਹੜਾ ਕਰੂਗਾ ਇਮਾਨਦਾਰੀ ਨਾਲ ਜਿਹੜਾ ਕਰੂਗਾ ਨਿਸ਼ਠ ਹੋ ਕੇ ਸੇਵਾ ਨੂੰ ਕੋ ਮਿਲ ਜੂ ਉਹਨਾਂ ਨੂੰ ਵੀ ਕਾਇ ਉਹਨਾਂ ਨੂੰ ਜਿਹੜਾ ਤਾਂ ਨਿਸ਼ਠ ਹੋ ਕੇ ਸੇਵਾ ਕਰੂ ਸੇਵਾ ਮੰਨ ਕੇ ਸੇਵਾ ਕਰੂ ਉਹ ਕੁਝ ਲੈ ਜੂ ਨਹੀਂ ਮਿਲਣਾ ਕੋਈ ਨਹੀਂ ਲੈ ਜੂਗੀ ਹੋ ਹੋਰ ਕੀ ਕਹੇ ਹੋਰ ਕੀ ਕਰੇ ਆ ਗਿਆਨ ਵਾਲੀ ਗੱਲ ਲਈ ਉਆਪੇ ਮੰਦਰ ਵਿੱਚ ਸਾਡੇ ਕੋਲ ਚੱਚੁਰ ਦੰਡਣੀ ਚੱਚੋ ਡੰਡੜੀ ਦੰਡੜੀ ਤੇਜ ਪ੍ਰਚੰਡਣੀ ਤੇਜ ਪ੍ਰਚੰਡਣੀ ਆਦ ਵਰਤੇ ਕਿਉਂ ਐ ਡੰਡੜੀ ਅਸਲ 'ਚ ਤੇਜ ਪ੍ਰਚੰਡ ਆਪਣੇ ਤੇਜ ਨਾਲ ਉਹਨੂੰ ਚੁੱਪ ਕਰਾ ਦਿੰਦੀ ਐ ਗੱਲ ਨਾਲੇ ਚੁੱਪ ਕਰ ਜਾਂਦਾ ਉਹੋ ਤੇਜ ਪ੍ਰਚੰਡਣੀ ਆਦ ਵਰਤੇ ਤੇਜ ਪ੍ਰਚੰਡਣੀ ਆਦ ਵਰਤੇ ਪੈਸਾ ਹੁਕਮ ਕੋ ਦੇਦਣਾ ਨਾ ਪੈਵੰਤਾਨ ਉਹਨਾਂ ਨੂੰ ਕਿਹਾ ਹੋਇਆ ਰੋਬੀ ਪਾਸ਼ਾ ਦਾ ਕਹਿੰਦਾ ਅਸੀਂ ਪੈਸੇ ਨਹੀਂ ਬੰਦੇ ਹੁੰਦੇ ਤੁਸੀਂ ਅਖਰਾਂ ਦਿਖਾਓ ਸਾਨੂੰ ਅਸੀਂ ਨਹੀਂ ਬੰਦੇ ਕਿਉਂ ਆਪਣੇ ਹੁਕਮ ਚਲਾਉਣਾ ਕਿਸੇ ਨੂੰ ਪੈ ਦੇ ਕੇ ਅਸੀਂ ਤਾਂ ਪਰਮੇਸ਼ਰ ਦੇ ਕੋਲ ਚੱਲਣਾ ਹਾਂ ਦੂਜਿਆਂ ਨੂੰ ਵੀ ਕਾਣਾ ਵੀ ਸੁਖ ਹੈ ਭਾਈ ਹੁਕਮ ਦੇ ਵਿੱਚ ਚੱਲਣ ਤੇ ਹੁਕਮੇ ਚੱਲੋਗੇ ਸੁਖ ਹੈ ਜਿਹਨੇ ਚੱਲਣਾ ਉਹਨੂੰ ਸੁਖ ਮਿਲ ਲਈ ਜਲੂਗਾ ਦੁਫੀਰ ਹੋਗਾ ਅਸੀਂ ਆਪਣੇ ਬਾਣੇ ਨਹੀਂ ਚਲਾਉਂਗੇ ਅਸੀਂ ਆਪਣੇ ਬਾਣੇ ਤਾਂ ਆਪੇ ਨਹੀਂ ਚੱਲਣਾ ਸੁਰਨਾਰ ਪ੍ਰਤੀਪਾਰਣ ਪਤਿਤ ਉਧਾਰਨ ਦੁਸ਼ਟ ਨਿਵਾਰਨ ਤੋਖ ਹਾਰੇ ਸੁਰ ਨਾਰ ਪ੍ਰਤੀਪਾਰਣ ਪ੍ਰਤੀਪਾਲ ਚਾਹੇ ਨਾਰ ਨੇ ਆਮ ਨੇ ਦੇਵਤੇ ਨੇ ਚਾਹੇ ਸੁਰ ਦੇ ਸੁਰ ਕਦੋਂ ਹੋ ਜਾਂਦਾ ਜਦੋਂ ਕਹਿੰਦਾ ਸੱਚੇ ਮਾਰਗ ਤੇ ਚੱਲ ਪੈਂਦਾ ਨਾ ਕਿਸੇ ਕੋ ਬੈਠ ਰੋਣ ਲੱਗ ਜਾਂਦਾ ਕੋਈ ਜ ਜਨ ਮਾਨਸ ਤੇ ਦੇਵਤੇ ਕੀ ਹੈ ਬੰਦਾ ਮਾਨਸੇ ਨਰੇ ਹੈ ਨਾ ਜੇ ਤਾਂ ਨਿਊਟਰਲ ਗੇਰ ਚ ਆਪਣਾ ਬਸ ਭਾਈ ਨਿਆਣੇ ਪਾੜ ਲੈਣਾ ਖਾਣਾ ਹੋ ਹੱਥ ਬੰਨ੍ਹ ਦਿੰਦਾ ਜੇ ਸੋਰਾ ਥੋੜਾ ਜਿਹਾ ਉਹ ਸੁਰ ਚ ਸੁਰ ਬੁਲਾਉਂਦਾ ਥੋੜਾ ਜਿਹਾ ਆਪਣੇ ਆਪ ਨੂੰ ਢਾਲਦਾ ਹੁਕਮ ਚੱਲਣ ਹੁਕਮ ਅਨਸਾਰ ਆਪਣੇ ਸੁਭਾਅ ਨੂੰ ਢਾਲਦਾ ਪਈ ਜੋ ਹੁਣ ਪ੍ਰਮਾਤਮਾ ਨੇ ਕਰਤਾ ਚਲੋ ਕੰਮ ਕਰਨਾ ਤਾਂ ਆਪਣਾ ਹੈਗਾ ਵਾਕੀ ਘਾਟਾ ਬਾਦ ਦੋਦੇ ਹੱਥ ਇੰਨਾ ਕੁ ਵੀ ਜਿਹੜੀ ਗੱਲ ਕਹਨੋ ਵੀ ਸੋਹਰੇ ਸੁਰਨਾਰ ਕਹਿੰਦਾ ਐਡੀ ਗੱਲ ਵੀ ਜਿਹੜਾ ਬੰਦੋ ਵੀ ਸੋਹਰੇ ਉਹਨੂੰ ਇਹ ਹੁੰਦਾ ਜੇ ਕੋਈ ਕੰਮ ਵਿਗੜ ਜਾਂਦਾ ਕਹਿੰਦਾ ਭਾਈ ਹੁਣ ਵਿਗੜ ਗਿਆ ਕੀ ਕਰੀਏ ਆਪਾਂ ਤਾਂ ਬਗਾੜਿਆ ਨਹੀਂ ਪਰਮੇਸ਼ਰ ਦੀ ਰਜ਼ਾ ਸੀ ਵਿਗੜ ਗਿਆ ਉਹਦੀ ਕੱਲ ਨੂੰ ਸਬਰ ਜੂ ਕੋਈ ਹੋਰ ਸਮਾਰ ਦੂਗਾ ਕੋਈ ਸਬਰ ਜਾਂਦਾ ਕੋਈ ਵਿਗੜ ਜਾਂਦਾ ਕੋਈ ਵੀ ਇਹ ਬਹੁਤਾ ਨਹੀਂ ਕਰਨਾ ਚਾਹੀਦਾ ਆਪਣੇ ਬਾਸਨਾ ਸਮਾਨ ਨੂੰ ਦੇ ਬਗਾਰ ਦੇ ਉਹਦਾ ਤੇ ਬੋਝ ਘਟ ਪੈਂਦਾ ਜਿਹੜਾ ਆਪਣੀ ਕਲਾਕਾਰੀ ਦੇਖੀ ਜਾਵੇ ਮੇਰਾ ਦਵਾ ਗਲਤੀ ਹੋ ਗਈ ਉਹ ਹੋ ਗਈ ਉਹਦੇ ਗਲਤੀਆਂ ਸਮਝ ਉਧਰ ਜਿਆਦਾ ਖਰਚ ਕਰੀ ਜਾਂਦਾ ਪਤ ਤੋ ਉਧਾਰ ਨਹੀਂ ਉਹਨਾਂ ਦਾ ਜਿਹੜਾ ਦੀਜਾ ਉਹਨਾਂ ਦੇ ਵਿੱਚ ਕਭੀ ਹੈ ਪਤ ਪਰ ਬਲੀਅਤਾ ਉਹ ਦੂਰ ਕਰ ਰਹੀ ਹੈ ਸਾਰਿਆਂ ਦੀ ਅੰਤਰਾਤਮਾ ਦੀ ਆਵਾਜ਼ ਹੈ ਨਾ ਅੰਤਰਾਤਮਾ ਉਹਨਾਂ ਦੇ ਅੰਦਰੋਂ ਬੋਲ ਕੇ ਅੰਦਰੋਂ ਬੋਲ ਕੇ ਮਤ ਦੇ ਰਹੀ ਹੈ ਵੀ ਆਹ ਕੰਮ ਨਾ ਕਰੋ ਦੁਸ਼ਟ ਨਿਵਾਰਨੀ ਦੋਖਾਰੇ ਜਿਹੜੀ ਦੁਸ਼ਟਾ ਉਹਨਾਂ ਦੀ ਦੁਸ਼ਟਤਾ ਉਹ ਤਾਂ ਖੜਾ ਛਿੜਾ ਰਹੀ ਹੈ ਨਿਵਾਰਣ ਕਰ ਰਹੀ ਹੈ ਦੋਖਾਰੇ ਦੋਖਾਰੇ ਦੋਖ ਦੁਖ ਦੋਖ ਨੇ ਦੋਖ ਨੇ ਕਬੀਰ ਕਬੀਰ ਕਰਕੇ ਦੁਖ ਨੇ ਉਹਨਾਂ ਦੀਆਂ ਕਬੀਰ ਦੂਰ ਕਰ ਲਈ ਜਾਇ ਜੈ ਹੋਸੀ ਸ੍ਰਿਸ਼ਟੀ ਕਰੇ ਆਲਾ ਕਰਕੇ ਵੀ ਤੇਰੀ ਜੈ ਕਰਾ ਕਿ ਵਿਸ਼ਵ ਦਾ ਬਿੰਦੂ ਵੀ ਸਾਰਾ ਨਾਸ ਵੀ ਕਰ ਦਿੰਦੀ ਹੈ ਤੂੰ ਇੱਕ ਮਿੰਟ ਚ ਪ੍ਰਥਪਾਦ ਵੀ ਕਰਦੀ ਹੈ ਨਾਸ ਆਸ ਵੀ ਕਰਦਨੀ ਹੈ ਸ੍ਰਿਸ਼ਟੀ ਕਰੇ ਹਰਣ ਅ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ ਇੱਕ ਅੱਖ ਦੇ ਝਮਕੇ ਜੈ ਦੇਰਾ ਕੰਮ ਹਰਣ ਪੜਨ ਜਾ ਕਾ ਫੋਰ ਸੁਖਣੀ ਸਾਹਿਬ ਚ ਉਹੀ ਗੱਲ ਲਿਖੀ ਆ ਤੇਰੀ ਜਾਇਜਾ ਹੈ ਪਰ ਕਹਿੰਦਾ ਨਾ ਹਲ ਨੂੰ ਪੜਨਾ ਤੇਰਾ ਨੇਤਰ ਫੋੜ ਇੱਕ ਅੱਖ ਦੇ ਚਮਕੇ ਨਾਲ ਸ੍ਰਿਸ਼ਟੀ ਪੈਦਾ ਕਰਨ ਦੀ ਅੱਖ ਸ੍ਰਿਸ਼ਟੀ ਤਾਂ ਕੋ ਬਚਿਆ ਨਹੀਂ ਸਭ ਕੁ ਤੇਰਾ ਪੈਦਾ ਕੀਤਾ ਤੇ ਨਾਸ ਕਰ ਦੇ ਜੈ ਜੈਕਾਰ ਕਰਨ ਤੇਰਾ ਹੀ ਰਹਿ ਗਿਆ ਹੋਰ ਕੀ ਦਾ ਪ੍ਰਕਾਸ਼ੇ ਉਨਤਨ ਨਾਸੇ ਦਾਬਲੀ ਪ੍ਰਕਾਸ਼ੇ ਜਿਹੜੀ ਬਿਜਲੀ ਹੈ ਇਹ ਪ੍ਰਕਾਸ਼ ਕਿੱਥੇ ਬਿਜਲੀ ਐ ਪੈਦਾ ਹੋ ਜੂਗੀ ਐ ਪੈਦਾ ਕਰ ਦੋ ਇਹ ਵਿਚਾਰੇ ਜਿਹੜੇ ਬਿੱਲਾਂ ਚਲਾ ਲੈਣਗੇ ਕੰਮ ਕਰ ਲੈਣਗੇ ਕੋਈ ਗਰਮੀ ਹੋ ਪੱਖੇ ਚੱਲ ਪੈਣਗੇ ਇਹਨਾਂ ਦੇ ਸੁੱਖ ਹੋ ਜੂ ਸੁੱਖ ਵਾਤਾਈ ਹੈ ਨਾ ਰੋਸ਼ਨੀ ਹੋ ਇਹ ਧਾਮਣੀ ਕਿਨੇ ਦਿੱਤੀ ਹੈ ਬਿਜਲੀ ਕਿਨੇ ਬਣਾਈ ਹੈ ਚਲੋ ਖੋਜੀਓ ਸੀ ਨਾ ਪਾਣੀ ਉਹਦਾ ਤੇਰੀ ਹੋ ਰਚਨਾ ਦੇ ਵਿੱਚ ਆਦਮੀ ਤਾਂ ਖੋਜੀ ਹੈ ਅ ਪ੍ਰਕਾਸ਼ ਕੇ ਨੰਦ ਤੱਕ ਤੇਰੇ ਬਣਾ ਕੀਤਾ ਹੈ ਅ ਤਾਂ ਖੋਜ ਲਿਆ ਲੱਭ ਲਿਆ ਪਾਣੀ ਥੱਲੇ ਧਰਤੀ ਚ ਆਦਮੀ ਨੇ ਲੱਭ ਲਿਆ ਥੱਲੇ ਪੀ ਲਿਆ ਜਿਉਂਦਾ ਹੀ ਨਾ ਪੀਦਾ ਕੀ ਕੋਈ ਥੱਲੇ ਧਰਤੀ ਤੇ ਪਾਣੀ ਹੈਗਾ ਆਦਮੀ ਨੇ ਖੋਜ ਲਿਆ ਲੱਭ ਲਿਆ ਪੀ ਲਿਆ ਪਟਕੇ ਟੋਆ ਰਣਕਾ ਲਾ ਲਿਆ ਟੂ ਬੈਲਾ ਲਿਆ ਵਰਤਦੇ ਹੁਣ ਪਾਣੀ ਨੂੰ ਪੈਦਾ ਨਹੀਂ ਨਗੀਤਾ ਪੈਦਾ ਥੋੜੀ ਆਦਮੀ ਨਹੀਂ ਕੀਤਾ ਆ ਦਾਮਨੀ ਪ੍ਰਕਾਸ਼ੇ ਡਬਲ ਨੂੰ ਪ੍ਰਕਾਸ਼ ਤੂੰ ਕਰ ਰਹੀ ਹੈ ਹੁਨਤਣਾਸ ਜਿਹੜੀ ਵਿਵੇਕ ਬੁੱਧੀ ਹੈ ਨਾ ਗਾਹਾਂ ਦਾਮਨੀ ਸੀ ਨਾ ਬਣ ਲੈ ਉਹਨੂੰ ਵੀ ਪ੍ਰਕਾਸ਼ ਤੂੰ ਕਰ ਰਹੀ ਆਈਂ ਬਵੇਖ ਬੁੱਧੀ ਬਲੋ ਜੋਤ ਪ੍ਰਕਾਸ਼ੇ ਅਤਲ ਬਲੇ ਉੜਦਾਈ ਨੂੰ ਨਾਸ ਕਰ ਰਹੀ ਹੈ ਕਿਵੇਂ ਕਹਦੇ ਨਾ ਕਰ ਰਹੀ ਹੈ ਜੋਤ ਪ੍ਰਕਾਸ਼ੇ ਉਹਦੇ ਅੰਦਰ ਹੋਰ ਜੋਤ ਪ੍ਰਕਾਸ਼ ਕਰਕੇ ਅਤਲ ਬਲੇ ਜਿਹੜਾ ਉਹਦੇ ਅੰਦਰ ਪਰਮ ਦਾ ਨਾਸ ਕਰ ਰਹੀ ਹੈ ਹੋਰ ਉਹਨੂੰ ਗੱਲ ਦੇ ਕੇ ਜੋਤ ਪ੍ਰਕਾਸ਼ੇ ਅਤਲ ਬਲੇ ਅਤਲ ਬਲੇ ਕਿੰਨਾ ਬਲ ਦੇਣਾ ਅਤਲ ਬਲ ਦੇਣਾ ਇਹਨਾਂ ਬਲ ਦੇਣਾ ਉਹਦੇ ਸਾਰੇ ਪਰਮ ਦਾ ਨਾਸ ਹੋ ਜਾਣ ਅਤਲ ਬਲ ਤੇਰੇ ਚਾਹ ਅਤਲ ਬਲ ਸਾਰੇ ਚ ਪੈਰਾ ਕਰ ਦੇ ਤੱਤੋਲ ਬਲੋ ਨੂੰ ਕਹਿੰਦੇ ਨੇ ਬਲ ਹੋ ਆ ਬੰਦਨ ਛੁੱਟੇ ਬੰਦਨ ਕਾਦ ਪਏ ਸੀ ਇਹ ਜਿਹੜੇ ਬੰਦਨ ਪਏ ਨੇ ਕਾਦ ਪਏ ਸੀ ਬਲ ਛੁੱਟ ਗਿਆ ਬੰਦਨ ਪੜੇ ਜੇ ਤਾਰ ਮਨ ਅਡਾੜ ਹੋਗੇ ਘਰ ਜਨ ਲਈ ਹੋਗੀ ਬਾਲਾ ਪੇ ਘਟ ਗਿਆ ਚਾਹ ਹੁਣ ਭਾਈਆ ਜੇ ਲਈ ਹੋਈ ਤਾਂ ਅਸਾ ਤੱਕੜੇ ਜਾਣੀ ਆ ਅਭ ਦਿੱਤਿਓ ਫੋਟ ਪੈ ਜਾ ਸ਼ਕਤੀ ਤੇ ਘਟ ਜਾਣੀ ਹੈ। ਬਲ ਛੁੱਟ ਕੇ ਉਹ ਬੰਧਨ ਪਰੇ। ਬਲ ਘਟ ਗਿਆ, ਬੁੱਧ ਬਲ ਘਟ ਗਿਆ। ਬੰਧਨ ਵਿੱਚ ਬੈ ਕੇ ਕਛੂ ਨਾ ਹੋ ਤੋ ਪਾਇ ਉਹ ਕੋਈ। ਕਿੱਡੀਆਂ ਮੱਤਾਂ ਦੇ? ਸਭ ਉਹ ਨੇ। ਉਹ ਨਹੀਂ ਹੋ ਸਕਦਾ ਕੋਈ ਵੀ ਚਾਹੇ ਜਿੰਨੇ ਵਰਜੀ ਉਹ ਦੱਸੀ ਜਾਣ। ਜੋਤਿਸ਼ੀ ਕੋਈ ਉਪਾਏ ਨਹੀਂ ਕੰਮ ਕਰਦਾ ਹੈ ਕੇਸੇ ਘਾਟੇ ਬੰਦੇ ਚ। ਕਜੂਨਾ ਹੋਦੋ ਪਾਇ ਬਾਣੀ ਕਹਿੰਦੀ ਹੈ ਕੋਈ ਪਾਇ ਹੈ ਨਹੀਂ ਕਿਸੇ ਚੀਜ਼ ਦਾ ਸਾਡੇ ਕੋਲ ਅੱਜ ਵੀ ਕੋਲ। ਉਹ ਆਉਣਾ ਦਾ ਖਲ ਪੀਣ ਦਾ ਢੱਕ ਬਣਾਇਆ ਦੱਸ। ਸਭ ਝੂਠ ਹੈ ਪਾਇ ਪਾਇ ਕੋਈ ਨਹੀਂ। ਫਿਰ ਤਾਂ ਆਦਮੀ ਸ੍ਰੀ ਖੁਦਾ ਹੋ ਗਿਆ ਜੋ ਪਾਇ ਹੈ। ਸਾਡੇ ਕੋਲ ਹਰ ਇੱਕੀ ਦਾ ਜੋ ਪਾਇ ਹੈ। ਫਿਰ ਤਾਂ ਅਸੀਂ ਬਰਬਾਦ ਨਹੀਂ ਸਕਦੇ ਮੌਤਵੀ ਨਹੀਂ ਸਾਡੇ ਵਾਸਤੇ। ਇਹ ਤਾਂ ਹਕੂਮਤ ਨਾਲ ਟੱਕਰ ਆਉਣਾ ਜਿਹੜਾ ਪਾਇ ਦਰਨਾ। ਹਕੂਮਤ ਦਾ ਵਿਰੋਧ ਕਰਨ। ਉਹ ਨੂੰ ਮਾਰਨਾ ਚਾਹੁੰਦਾ ਮੈਂ ਕਹਿੰਦਾ ਮਾਰ ਕੇ ਦਿਖਾ ਮੈਨੂੰ ਉਪਾਏ ਕਰਦੇ ਆ ਨਾ ਆਪਾਂ ਜਾਨਵਰਾਂ ਤੋਂ ਜੰਗਲੀ ਤੋਂ ਉਪਾਏ ਕਰਦੇ ਆਂ ਮੀਂਹ ਤੋਂ ਉਪਾਏ ਕੀ ਤੇਨੂੰ ਮਕਾਨ ਬਣਾ ਲੈ ਆਪਾਂ ਗਰਮੀ ਤੋਂ ਉਪਾਏ ਕੀ ਤੇ ਨੇਸੀ ਲਵਾ ਲੈ ਪੱਖੇ ਚਲਾ ਲੈ ਉਪਾਏ ਕਰਦੇ ਆ ਨਾ ਇਹ ਤਾਂ ਕੋਈ ਉਪਾਏ ਨਹੀਂ ਆਦਾ ਪਰਮੇਸ਼ਰ ਤੋਂ ਕੋਈ ਨਹੀਂ ਉਪਾਏ ਹੋ ਸਕਦਾ ਕਾ ਜਨਾ ਹੋ ਤਾਂ ਪਾਏ ਫਿਰ ਕੀ ਕਿਹਾ ਕਹਿੰਦੇ ਬਲ ਹੋ ਆ ਛੋਟੇ ਆ ਫਿਰ ਅਤਲ ਬਲ ਹੋ ਜਿੱਦਣ ਵੱਲ ਹੋ ਗਿਆ ਵੱਲ ਨੂੰ ਛੁੱਟ ਜਾਣਗੇ ਉਹ ਤੇ ਪੈਦਾ ਕਰੋ ਫਿਰ ਏਕਤਾ ਪੈਦਾ ਕਰੋ ਚਤਰਬਲ ਜਿੱਦਣ ਇਕਤਾ ਹੋ ਗਈ ਜੇ ਸਾਰਾ ਮੁਲਕ ਇੱਕ ਜਗ੍ਹਾ ਗੁੱਠੀ ਚ ਹੋਵੇ ਜਿਹੜਾ ਮੁਲਕ ਇੱਕ ਜਗ੍ਹਾ ਇਹ ਮੁਠੀ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਸرائیਲ ਐਨਾ ਕੁ ਮੁਲਕ ਹੈ وقت ਪਾਇਆ ਫਿਰ ਇਕਤਾ ਇਕਤਾ ਸ਼ਕਤੀ ਹੈ ਬਲ ਉਹ ਆ ਫਿਰ ਬਲ ਹੋ ਜਾਊਗਾ ਬੰਦਨ ਛੁੱਟੇ ਬੰਦਨ ਛੁੱਟ ਜਾਣਗੇ ਉਹ ਅਤੁੱਲ ਵਾਲਾ ਉਹ ਗੱਲ ਹੈ ਸਭ ਕੁਝ ਹੋ ਦਪਾਇ ਸਰਾ ਪਾਇ ਹੋ ਜਾ ਪਰ ਉਪਾਇ ਕਿਵੇਂ ਹੋਗਾ ਇਕਤਾ ਜੂਗਾ ਪਾਇ ਇਕਤਾ ਦੇ ਬਿਨਾ ਪਾਇ ਨਹੀਂ ਇਹ ਇਕਤਾ ਵੀ ਮਰਜੀ ਨਾਲ ਨਹੀਂ ਹੁੰਦੀ ਆਪਣੇ ਮਰਜੀ ਛੱਡ ਕੇ ਇਕਤਾ ਹੁੰਦੀ ਹੈ ਇਕਤਾ ਚ ਪਰਮੇਸ਼ਰ ਦੀ ਮਰਜ਼ੀ ਸਭ ਦੀ ਮਰਜ਼ੀ ਹੈ ਸਭ ਦੀ ਮਰਜ਼ੀ ਹੀ ਪਰਮੇਸ਼ਰ ਦੀ ਮਰਜ਼ੀ ਹੈ ਜੇ ਤੇ ਸਭ ਦੀ ਮਰਜ਼ੀ ਇੱਕ ਥਾਂ ਹੋਣੀ ਹੋ ਉੱਤੇ ਪਰਮੇਸ਼ਰ ਦੀ ਮਰਜ਼ੀ ਹੈ ਸਭ ਦੇ ਅੰਦਰ ਆਓ ਆਪਣੀ ਆਪਣੀ ਮਰਜ਼ੀ ਦੀ ਪਰਮਿਸ਼ਨ ਦੀ ਮਰਜ਼ੀ ਨਹੀਂ ਹੁੰਦੀ ਜੇ ਆਪਣੀ ਆਪਣੀ ਮਰਜ਼ੀ ਹੈ ਉੱਤੇ ਇੱਕ ਨਹੀਂ ਹੋ ਸਕਦੀ ਕਿਸੇ ਜਿਬਰੀ ਨਹੀਂ ਹੋ ਸਕਦੀ ਜੇ ਆਪਣੀ ਆਪਣੀ ਮੱਤ ਹੈ ਇਕਦਾ ਨਹੀਂ ਹੋ ਸਕਦੀ ਜੇ ਹੁਕਮ ਲੈ ਵਿੱਚ ਪੜਨੇ ਸਾਰੇ ਚੈਨਲ ਤੇ ਤਾਂ ਹੋ ਸਕਦੀ ਸਾਰੀ ਵਰਲਡ ਦੀ ਹੋ ਸਕਦੀ ਕੋਈ ਝਗੜਾ ਹੀ ਨਹੀਂ ਇਹ ਤਾਂ ਇਹ ਤਾਂ ਪਹਿਲਾਂ ਵੀ ਜਵਾਹਰ ਲਾਲ ਵੀ ਕਹਿੰਦਾ ਸੀ ਝਗੜਾ ਰੀ ਪਰ ਉਹਨੇ ਦੱਸਿਆ ਜੀ ਵੀ ਕਿਵੇਂ ਹੋ ਗੁਰੂ ਕਿਹੜਾ ਪਤਾ ਸੀ ਉਹਨੂੰ ਧਰਮ ਦਾ ਕੀ ਗਿਆਨ ਸੀ ਦੱਸਿਆ ਨਹੀਂ ਵੀ ਇੱਕਦਾ ਹੋ ਗਿਰਨ ਮਹਾਤਮਾ ਕਹਿੰਦੇ ਸੈਨਾ ਉਹਨਾਂ ਨੂੰ ਕਿਹੜਾ ਧਰਮ ਦਾ ਉਹਦਾ ਧਰਮ ਨੂੰ ਬੰਦੇ ਹੀ ਨਹੀਂ ਸੀ ਧਰਮ ਦੇ ਵਿਰੋਧੀ ਸੀ ਉਹ ਤਾਂ ਇਹ ਤਾਂ ਇਹ ਜਿਹੜੇ ਵਕੀਲ ਹੁੰਦੇ ਨੇ ਆ ਪੜ ਲੈਂਦੇ ਨੇ ਵਿਦਵਾਨ ਉਹ ਧਰਮ ਦੇ ਵਿਰੋਧੀ ਹੁੰਦੇ ਨੇ ਇਹ ਤਾਂ ਕਹਿੰਦੇ ਜੋ ਸਾਨੂੰ ਅਗਲਾ ਕਿਸੇ ਨੂੰ ਹੈ ਇਹ ਥੋੜੀ ਬੁੱਧੀ ਵਾਲੇ ਹੁੰਦੇ ਨੇ ਹੰਕਾਰ ਹੋ ਜਾਂਦਾ ਇਹ ਤਾਂ ਇਹ ਥੋੜੇ ਕਹਿੰਦਾ ਹੰਕਾਰ ਹੋ ਜਾਂਦਾ ਉਹ ਹੋ ਜਾਂਦਾ ਚైనా ਦੇਖ ਤਾਂ ਕਹਤੇ ਉੱਤੇ ਇੱਕੋ ਦੂਜੀ ਦੂਜੀ ਤਾਂ ਪੈਦਾ ਹੁੰਦੀ ਉਹਨਾਂ ਨੂੰ ਅਜਿਹੜੀ ਆ ਨਾ ਬੋਲਣ ਦੀ ਕਹਿੰਦੇ ਨੇ ਆਜ਼ਾਦੀ ਏਕਤਾ ਦੀ ਪੈਦਾ ਹੁੰਦੀ ਕਦੇ ਵੀ ਇਹ ਰੱਖਸ਼ੀ ਵਰਤੀ ਦੀ ਗੱਲ ਆ ਬੋਲ ਬੋਲਣ ਦੀ ਜਦ ਜਿਹੜੀ ਤੇ ਰੱਖਸ਼ੀ ਦੀ ਹੈ ਇਹ ਬੋਲਤੀ ਬੰਦ ਕਰਦਾ ਬੋਲਦੀ ਕੁਰਬਾਨੀ ਬਲਦੀ ਬੋਲਤੀ ਬੰਦ ਕਰਦੀ ਹੈ ਬੋਲੋ ਤਾਂ ਅਕਲ ਦੀ ਗੱਲ ਬੋਲੋ ਨਹੀਂ ਕਿ ਪਰੋ ਜਸਦੀ ਭਾਈ ਕਰੋ ਜੋ ਬੋਲਦੇ ਹੂ ਵੀ ਠੀਕ ਹੈ ਤੁਹਾਡੀ ਗੱਲ ਕੁਝ ਵੀ ਬੋਲਣਾ ਜਿਹੜਾ ਕੋਈ ਕੁਝ ਵੀ ਬੋਲਦੇ ਹੋਇਆ ਜਾਂਦੀ ਏ ਇਹ ਗਲਤ ਹੈ ਇਹਦਾ ਇਹਦਾ ਸਾਰੀ ਸ਼ਰਾਰਤ ਦਾ ਕਰ ਹੈ ਇਹ ਝਗੜੇ ਦਾ ਕਰ ਇਹ ਬਦਵਾਨਾਂ ਦੇ ਦਿਮਾਗ ਦੀ ਗੱਲ ਹੈ ਬੋਲਣ ਦੀ ਜਾਂਦੀ ਬੋਲਣ ਦੀ ਜਾਂਦੀ ਕਿ ਮੈਂ ਤੂੰ ਸੁਪਰੀਮ ਕੋਰਟ ਦੇ ਤਰ੍ਹਾਂ ਜਾ ਕੇ ਕਾਣਾ ਕੱਢਣ ਲੱਗ ਜਾ ਬੋਲਣ ਦੀ ਜਾਂਦੀ ਏ ਸਾਰੂ ਵਿਵਿਧਾ ਜਾਂਦੀ ਏ ਊਰਜਾ ਤਾਂ ਜਿਆਦਾ ਜਾਂਦੀ ਪੜ ਲੂਗਾ ਕੋਰਟ ਦੇ ਖਿਲਾਫ ਕਿਉਂ ਕੋਈ ਬੋਲ ਸਕਦਾ ਉੱਥੇ ਆਜ਼ਾਦੀ ਕਿੱਥੇ ਗਈ ਆਜ਼ਾਦੀ ਕਿੱਥੇ ਸੀ ਵੀ ਬੋਲ ਸਕਦਾ ਕੋਈ ਕੋਰਟ ਦੇ ਖਿਲਾਫ ਕਦੋਂ ਤੋਂ ਕੋਰਟ ਲੱਗ ਜਾਂਦੇ ਆਜ਼ਾਦੀ ਕਿਸ ਹੱਦ ਤੱਕ ਹੈ ਆਜ਼ਾਦੀ ਸਾਬਦੇ ਦਰਹੇ ਜਾ ਕੇ ਸਾਬਦੇ ਦਰਹੇ ਆਜ਼ਾਦੀ ਹੈ ਸ਼ਰਾਰਤ ਜਿੱਥੇ ਪੈਦਾ ਕਰਨੀ ਉੱਥੇ ਆਜ਼ਾਦੀ ਨਹੀਂ ਸ਼ਰਾਰਤ ਦੇ ਕੋਈ ਆਜ਼ਾਦੀ ਨਹੀਂ ਕ੍ਰੇਸ ਪੈਦਾ ਕਰਨ ਵਾਲੇ ਜਿਹੜੀ ਗੱਲਾਂ ਕ੍ਰੇਸ ਪੈਦਾ ਹੁੰਦਾ ਉਹ ਤੇ ਸ਼ਕਤੀ ਹੋਣੀ ਚਾਹੀਦੀ ਹੈ ਜੇ ਇਹ ਕਾਨੂੰਨ ਬਣ ਜਾਣਗੇ ਫੇਰ ਰਾਜਾਂ ਦੇ ਰਾਜ ਦੇ ਕਾਨੂੰਨ ਹੁੰਦੇ ਸੀ ਰਾਜਾਂ ਦੇ ਰਾਜ ਇੱਕ ਤਰ੍ਹਾਂ ਸਾਰੇ ਨੂੰ ਕੈਦ ਹੋ ਜਾਂਦੀ ਸੀ ਜਿਹੜੀ ਝੂਠੀ ਹੈ ਗਵਾਹ ਵੀ ਕੈਦ ਵਕੀਲ ਵੀ ਕੈਦ ਇੱਕ ਤਰ੍ਹਾਂ ਕੈਦ ਇੱਕ ਤਰ੍ਹਾਂ ਉਹ ਕਿਹਦੇ ਦੀ ਸੀ ਕੈਦ ਹੁਣ ਕੀ ਹੈ ਸਾਰੇ ਦਾ ਸ਼ਰਾਰਤੀ ਸ਼ਰਾਰਤੀ ਹੈ ਕੌਣ ਨੇ ਮਕਾਲਾ ਦਾ ਲੋਕਾਂ ਨੂੰ ਲੁੱਟਣ ਦਾ ਪੇਸ਼ਾ ਲੋਕਾਂ ਨੂੰ ਲੁੱਟਣ ਦਾ ਪੇਸ਼ਾ ਬਗਾਲ ਹੋਰ ਕੁਝ ਨਹੀਂ ਹੈ। ਬਦਵਾਨ ਹੈ ਆਪਣੇ ਆਪਣੇ ਤਰੀਕਿਆਂ ਨਾਲ ਲੋਕਾਂ ਦੀ ਜੇਬ ਵਿੱਚ ਪੈਸੇ ਖੋਈ ਜਾਂਦੇ ਨੇ। ਉਹ ਇਹਨਾਂ ਨੇ ਕਹ ਲੈਣ ਸਾਹਿਬ। ਦਾਨ ਵੀ ਪ੍ਰਕਰਖਣੀ ਦਾਨ ਜਿਹੜੇ ਦਾਨ ਬਣੇ ਲੋ ਇਹਨਾਂ ਨੂੰ ਮਗਾਪਾ ਦੂਰ ਭਾਦਦੀ ਆਪਣੇ ਰੜੇ ਨਹੀਂ ਆਉਂਦੀ ਦਾਲੋਂ ਨਹੀਂ ਰੜੇ ਆਉਦੇ ਇਹ ਨਰਵਤ ਇਹਦੇ ਨੇੜੇ ਆਉਂਦੇ ਨਾ ਗੁਰਬਖਸ਼ ਭੜੇ ਆਦਮੀ ਨੇੜੇ ਆ ਸਕਦੇ ਤੇ ਬੜੇ ਦੂਰ ਸੇਕ ਹੁੰਦੇ ਭੜਿਆਂ ਨੂੰ ਤੇ ਤੋ ਉਹ ਡੇੜੇ ਵੀ ਨਹੀਂ ਆਉਂਦੇ ਜਿਵੇਂ ਭੜੇ ਆਦਮੀ ਦਾ ਪਰ ਖੁੱਦ ਦਾ ਮਤਲਬ ਹੈ ਜੇ ਰਣਜੀਤ ਸਿੰਘ ਨੂੰ ਇਨੀ ਅਕਲ ਹੁੰਦੀ ਡੋਹਰੇ ਨੂੰ ਲੜੇਗਾ ਲੌਂਦਾ ਆ ਬੁੱਧੀ ਨਹੀਂ ਸੀ ਰਣਜੀਤ ਸਿੰਘ ਕੋਲ ਕਾਲੀ ਫੂਲੋਂ ਨੇੜੇ ਕਿਉਂ ਆ ਗਿਆ ਕੋਪੜਾ ਆਦਮੀ ਕਿਉਂ ਆ ਗਿਆ ਉਹਦੇ ਨਾਲੇ ਤੇੜੇ ਸਾਰੇ ਹੋ ਰਿਹਾ ਹੈ ਬਿਰਾਦਰ ਖਾਦੇ ਲੜ ਲੜੇ ਇਹਦੇ ਆਲੇ-ਦਾਲੇ ਕੌਣ ਤੇ ਰੀਸ ਆਲੇ-ਦਾਲੇ ਕੌਣ ਤੇ ਸਾਰੇ ਚੋਰ ਠੱਗ ਤੇ ਵਿਸ਼ਵਾਸ ਘਾਤੀ ਦੇ ਜਾਂ ਜਾਂ ਉਹ ਸੀ ਉਹ ਸੀ ਇਹ ਬੁੱਧੀ ਨੇ ਜਿਹੜੇ ਜੀਸੂ ਕੋਲ ਇਹ ਉਹਨ DIO ਜਿਹੜੇ ਕੰਮ ਕੀਤੇ ਨੂੰ ਕੰਮ ਨਹੀਂ ਸੀ ਕੋਈ ਵੀ ਨਹੀਂ ਸੀ ਕਰਦਾ ਫਿਰ ਇਹ ਕਹਿੰਦਾ ਜੀ ਖਾਲਸੇ ਦਾ ਰਾਸ ਸੀ ਸਿੱਖ ਰਾਸਤੀ ਜੇ ਤੁਸੀਂ ਖਾਲਸੇ ਹੋ ਜਾਂ ਜੇ ਰਣਜੀਤ ਸਿੰਘ ਸਿੱਖੀ ਹੋ ਜਾ ਤੁਸੀਂ ਜਿਹੜੇ ਰਣਜੀਤ ਸਿੰਘ ਨੂੰ ਖਾਲਸੇ ਦਾ ਰਾਸ ਸਮਝਦੇ ਨੇ ਉਹ ਵਿਦਵਾਨ ਹੋ ਸਕਦੇ ਨੇ ਬੁੱਧਵਾਨ ਨਹੀਂ ਹੋ ਸਕਦੇ ਉਹਨਾਂ ਨੂੰ ਕੀ ਪਤਾ ਖਾਲਸਾ ਕੀ ਹੁੰਦਾ ਜਿੱਦਾਂ ਸਿੱਖੀ ਦਾ ਨੁਕਸਾਨ ਰਣਜੀਤ ਸਿੰਘ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਉਸਰਮਾਨ ਨਹੀਂ ਕਰ ਸਕਿਆ ਉਹਨਾਂ ਨੂੰ ਸਰ ਬrode de nuksan kar sakda ho tu bhai jahaj apna jahaj apna dushman koi aavreya dushman da areya hayat oh nuksan kar sakda sa sade vich aake oh bahar baithe aadmi kitna nuksan jat karu jehda vich ghar ch baithe ਉਹਨਾਂ ਨੇ ਆਪਣੇ ਰਾਤੇ ਚ ਹਰੀ ਪਾਵਲ ਵਾਲੀ ਗੁਰਦਾਰੇ ਹੜਦੇ ਨੂੰ ਨਾ ਜਾਤੀ ਜੇ। ਅ ਗੁਰਦਾਰੇ ਸਨਾਤਨੀ ਮਤ ਦੇ ਹੱਥੇ ਨਹੀਂ ਜੱਦੇ ਹੀ ਲਏ ਹੋਏ। ਇਹਨੂੰ ਬੜਾ ਪਤਾ ਸਿੱਖਾ ਰੂ ਕਿਸੇ ਰਾਤਰੀ ਕੀ ਹੁੰਦੀ ਹੈ। ਹਾਂ ਤਾਂ ਸਨਾਤਨ ਮਤ ਗਏ? ਆਇਆ ਕਿੱਥੇ ਗਏ? ਹਾਂ ਉਹ ਰਾਤਨ ਮਤ ਨਾਲ ਈਰਖਾ ਜ਼ਰੂਰ ਕਰਦੇ ਨੇ ਬੁਰਾ ਜ਼ਰੂਰ ਬੋਲਦੇ ਨੇ ਪਰ ਮਤ ਸਨਾਤਰੀ ਕੋਲ ਈਰਖਾ ਤਾਂ ਇਹਨਾ ਜੇ ਸਨਾਤਰੀ ਮਤ ਦਾ। ਜਿੱਦਣਾ ਮਾਤਾ ਜੂਰ ਖਬੀ ਹਟ ਜੂ ਸੇ ਇਰਖਾ ਦੀ ਕੀ ਲੋੜ ਹੈ ਤੁਹਾਨੂੰ ਕਰਨ ਦੀ ਕਿਸੇ ਨੂੰ ਜ਼ਬਰਦਸਤ ਵਾਲੀ ਦੀ ਕੀ ਲੋੜ ਪਈ ਮੱਤ ਪਛਾੜਨ ਦੀ ਲੋੜ ਹੈ ਇਰਖਾ ਦੀ ਲੋੜ ਨਹੀਂ ਆਪਾਂ ਪਛਾੜਨ ਦੀ ਲੋੜ ਉਹ ਤੁਸੀਂ ਨਫ਼ਰਤ ਕਰਦੇ ਹੋ ਜ਼ਬਰਦਸਤ ਉਹਦੇ ਵਿੱਚ ਹੈ ਮਾਤੇ ਸਾਡੇ ਵਾਲੀ ਮਾਂ ਤਾਂ ਨਫ਼ਰਤ ਸਿਖਾਉਂਦੀ ਹੋਣੀ ਹੈ ਜੇ ਸਿਖਉਂਦੇ ਨਫ਼ਰਤ ਤੁਹਾਡੇ ਜੁ ਹੁੰਦੀ ਹੋਲ ਕੋਕਾ ਤੁਹਾਡੇ ਕੋ ਮਾਤੇ ਹੋਈ ਹੈ ਖਾਂਦੇ ਹੋਈ ਕੋਈ ਨਹੀਂ ਗੋਡਾਣਾ ਨਿਕਾਣਾ ਪੀਣਾ ਗੋੜ ਖਾਣ ਜਿਹਨੂੰ ਵਧਰੂ ਓਡਾਣਾ ਘਾਹੀਏ ਗਡਾਣਾ ਦਾ ਪੀਣਾ ਨਹੀਂ ਹੋ ਤੋ ਨਾ ਗੋਡਾੜੇ ਤੋ ਨਫਰਤਾ ਗੋੜ ਖਾਂਦੇ ਗਾਂਤਾ ਕੋਈ ਹੈ ਗੋੜ ਖਾਣਾ ਗੋੜਾਣਾ ਤੋਂ ਪ੍ਰਯੋਜ ਰਖਣਾ ਉਹ ਗੋੜ ਖੋਲ ਕੇ ਪਾਣੀ ਗੋਡਾਣਾ ਬਣ ਜਾਂਦਾ ਜੇ ਸਦਾ ਗੋੜ ਖਾ ਲਿਆ ਔ ਸਿੱਧਾ ਗੋਲ ਖਾਨੇ ਤੁਸੀਂ ਗੁਰਦਾਰੇ ਚ ਸੁਨਾਸਰੀ ਬੱਤ ਗੁਡਾਣਾ ਨਹੀਂ ਸਾਖੀ ਨਹੀਂ ਸੁਣ ਸਾਖੀ ਉਹਨਾਂ ਦੀ ਗੁਡਾਣਾ ਹੋਰ ਕੀ ਆ ਉਹ ਜੇ ਰਮੈਣ ਨਹੀਂ ਸੁਣਨੇ ਗੁਡਾਣਾ ਉਹ ਇਹ ਗੱਲਾਂ ਮਾਪਾ ਭਾਤ ਵੀ ਸੁਣਨੇ ਗੁਡਾਣਾ ਉਹ ਅਰੇ ਸਿੱਧਾ ਗੋਲ ਖਾਈ ਜਾਂਦੇ ਉਹ ਗੁੜਗੀਆਂ ਚਾਰ ਪਦਾਰਥੋਂ ਨਾਲੇ ਨੇ ਤੁਹਾਡੇ ਕੋਲ ਚਾਰੇ ਜੋ ਗੋਣਾਂ ਨਾਲੇ ਨੇ ਤੁਹਾਡੇ ਕੋਲ ਸਰਬੋਤਨ ਕੋਲ ਉਹ ਨਾਲੇ ਨੇ ਤੁਹਾਡੇ ਕੋਲ ਪੁਰਬਾ ਬੋਨ ਵਾਲਾ ਤੁਹਾਡੇ ਕੋਲ 300 ਨਾਲ ਹੀ ਨੇ ਤੁਹਾਡੇ ਉਪਣੇ ਹੋਏ ਸਭ ਕੁਝ ਉਹ ਨਾਲ ਬਰੇ ਤੇ ਬਾਜੋ ਕੁਝ ਕਰਦੇ ਕੀ ਹੈ ਜਿਹੜਾ ਤੁਹਾਡੇ ਕੋਲ ਗੁਰਮਤਾਲਾ ਇਹ ਦੱਸੋ ਸੱਤਾ ਗੋੜ ਖਾਈ ਜਾਂਦੇ ਨੇ ਗੋਡਾਣੂ ਦੇ ਪਰਹੇਜ ਆ ਵੀ ਇਹ ਸੁਣਾਉਂਦੇ ਉਹ ਇਤਿਹਾਸ ਇਹ ਵੀ ਉਹ ਨਾਲ ਹੀ ਹੈ ਇਹ ਕੀ ਹੈ ਕਰਾਮਾਤਾਂ ਦੀਆਂ ਸਾਖੀਆਂ ਕੀ ਨੇ ਉਹੀ ਹੈ ਸਭ ਕੁਝ ਅਪੇਰੀ ਦੀ ਪੂਜਾ ਸਭ ਉਹੀ ਹੈ ਅਰੇ ਖੰਡਪਾੜ ਵੇਜਦੇ ਉਹਦਾ ਸਭ ਉਹੀ ਹੈ ਸਾਜ ਪਾੜ ਕਰਾਉਣਾ ਸਭ ਉਹੀ ਹੈ ਦਰਬੋਂ ਦੀ ਪੂਜਾ ਸਭ ਉਹੀ ਹੈ ਕੀ ਹੈ ਜਿਹੜਾ ਨਹੀਂ ਸਿੱਧਾ ਗੋੜ ਖਾਂਦੇ ਨਾ ਗੋਡਾ ਨਹੀਂ ਪੀਂਦੇ ਬਾਈ ਤੇ ਸਿਆਣੇ ਨੇ ਜਿਉਂ ਕਹਦੇ ਨੇ ਦੂਆ ਨੇ ਫੇਟ ਫੇਟੜ ਹੋਦੇ ਨੇ ਉਹ ਤਾਂ ਛੇੜ ਦਿੰਦੇ ਨੇ ਜੇ ਤੂੰ ਕਹਿ ਕੇ ਉਹ ਜੂ ਮੈਂ ਕਿਸ ਨੂੰ ਖੇਡਦਾ ਹੋਵੇ ਖਿਡਾਉਂਦਾ ਨਾ ਲੈਣੇ ਨਿਕਝਾਉਣ ਲੱਗ ਜਾਂਦੇ ਉਹ ਕਹਿੰਦੇ ਨਾ ਕਦੇ ਫੇਰ ਛੇੜ ਦਿੰਦੇ ਨੇ ਫੇਰ ਉਹ ਕਹਿੰਦੇ ਹਾਂ ਸਿੱਖ ਮਤ ਦਾ ਮਤ ਲੱਗੇ ਪਰ ਉਹ ਆ ਨਹੀਂ ਕਹਿੰਦੇ ਮੈਂ ਤੂੰ ਜਿੱਤਾ ਸਿੱਖਦੀ ਉਹਨਾਂ ਦਾ ਮਤਲਬ ਇਹ ਨਾ ਵੀ ਸਿੱਖ ਮਤ ਅਲੱਗ ਹੈ ਨਹੀਂ ਬੈਣਡ ਉਹ ਤਾਂ ਉਹਨਾਂ ਨੂੰ ਵੀ ਪਤਾ ਪਰ ਇਹ ਤਾਂ ਨਹੀਂ ਨਾ ਸਿੱਖ ਹੈਗੇ ਜਿਹੜੇ ਆਪਣੇ ਉਹਨੂੰ ਸਿੱਖ ਮੰਨੀ ਬੈਠੇ ਨੇ ਇਹ ਤਾਂ ਕੋੜ ਖਾਣ ਵਾਲੇ ਨੇ ਡੜਾਲਾ ਪੀਣ ਵਾਲਿਆਂ ਨਾਲ ਹੀ ਦਿਖਾ ਕਰਦੇ ਹਾਂਜੀ ਸਰਵਰ ਵਰਖਣੀ ਸਰਵਰ ਵਰਖਦੀ ਤੇ ਨਿਆ ਬੁੱਧਾਰੀ ਪੈਂਦੀ ਐ ਸਰੋਵਰੇ ਸੜਦਣੀ ਥੱਲੇ ਜਾਂ ਝੜੀ ਲੱਗਦੀ ਐ ਸਰੋਵਰ ਸਾਰੇ ਭਰ ਜਾਂਦੇ ਡੋਬੇ ਢੱਲੇ ਵਰਖਾ ਕਾਦੀ ਹੁੰਦੀ ਐ ਤੀਰਾਂ ਦੀ ਵਰਖਾ ਨਹੀਂ ਹੁੰਦੀ ਉਮਰਤੀ ਵਰਖਾ ਹੁੰਦੀ ਐ ਓਏ ਅਬਰਤ ਨੂੰ ਤੀਰ ਸਮਝ ਲੈਂਦੇ ਰਹੋ ਅਬਰ ਦੀ ਵਰਖਾ ਤੀਰਾਂ ਦੀ ਗਾਲੂ ਗੁਰਮੁਖਾਂ ਨੂੰ ਵਰਖਾ ਦੀ ਵਰਖਾ ਹੈ ਮਨ ਮੁਖਾਂ ਨੂੰ ਤੀਰ ਲੱਗਦੇ ਨੇ ਮਨ ਮੁਖਾਂ ਨੂੰ ਤੀਰਾਂ ਦੀ ਵਰਖਾ ਲੱਗਦੀ ਹੈ ਜਦ ਮਾਰ ਕੇ ਜਿਹਦਾ ਮਾਰ ਕੇ ਸੁਰਗ ਨੂੰ ਜਾਂਦਾ ਜਿਹੜਾ ਉਹਦੇ ਖਾਤਰ ਅਬਰ ਦਾ ਤੀਰ ਨੇ ਜਿਆਦਾ ਆਉਣਾ ਮੁਕਤੀ ਮਿਲਣੀ ਹੈ تیرਨਾ ਅਮਰ ਤਾਂ ਉਹ تیر ਦਾ ਔਗਣ ਕੱਟਣ ਵਾਸਤੇ ਨੇ ਔਗਣਾ ਵਾਸਤੇ تیر ਨੇ ਔਗਣਾ ਵਾਸਤੇ تیر ਔਗਣਾ ਤਾਂ ਹੁਣ ਦੁਸ਼ਮਣ ਨੇ ਜੇ ਉਹ ਡਾਕਟਰ ਟੀਕਾ ਲਾਉਂਦਾ ਉਹ ਬਿਮਾਰੀ ਨੂੰ ਲਾਉਂਦਾ ਜਦੋਂ ਬਿਮਾਰੀ हट ਫੇਰ ਨਹੀਂ ਲਾਉਂਦਾ ਤੈਨੂੰ ਨਹੀਂ ਟੀਕਾ ਲਾਉਂਦਾ ਟੀਕਾ ਤਾਂ ਰੋਗ ਤੇ ਲੱਗਦਾ ਐ ਰੋਗ ਕਰਕੇ ਲੱਗਦਾ ਉਹ ਰੋਗ ਬਿਮਾਰੀ ਨਾਲੇ ਲੜਦਾ ਜਾ ਕੇ ਦਵਾਈ ਦਰ ਨਾ ਲਾ ਤੈਨੂੰ ਤਾਂ ਲੱਗਦੀ ਮੇਰੇ ਲਾਇਆ ਨਾ ਤੇਰੇ ਕਾਲੂ ਲਾਇਆ ਜੇ ਜੇ ਤੰਦਰੁਸਤ ਹੋ ਜਾਏ ਮੈਂ ਫੇਰ ਲਾਉਂਦਾ ਤੇਰੇ ਫਰਕ ਆ ਬੋਸ ਤੇ ਪਰਧਖਣੀ ਬਤਨ ਤਲੇ ਦੋਸ਼ ਦੇ ਪਰਧਖਣੀ ਜਿਹੜੇ ਦੋਸ਼ਲੇ ਉਹਨਾਂ ਨੂੰ ਉਹਨਾਂ ਦੇ ਤੇ ਕਾਰ ਦੇਣ ਵਾਲੀ ਪਰ ਇਹ ਤਾਂ ਕੋਲੋਂ ਹੀ ਦੂਰ ਦੂਰ ਰਹੋ ਬੇਤੇ ਤੇ ਕਾਰ ਕਰਨਾ ਕੋਨਾ ਬਾਬੇ ਫਿਟਕੇ ਫਟਕੇ ਨਹੀਂ ਦੀ ਫਟਕਾਰ ਪਾ ਲੰਦੀ ਹਰੂ ਕਹਤਾ ਨਾ ਉਹ ਨੂੰ ਆਪਣੇ ਰਾਮ ਰਾਏ ਨੂੰ ਸਾਡੇ ਮੱਥੇ ਨੂੰ ਲੱਗੀ ਦੋਸੀ ਸੀ ਉਹਦੇ ਆ ਗਿਆ ਵੀ ਮੈਂ ਫਰਕ ਪਾ ਲਵਾਂ ਵਾਲੀ ਉਹ ਤਾਂ ਸਾਰੀ ਉਹ ਬਦਲ ਲੰਦਾ ਜੇ ਉਹ ਮੈਂ ਬਣਾ ਦੰਦੇ ਉਹਦੇ ਮਤਲਬ ਰਾਈਟ ਬਣਦਾ ਸੀਗਾ ਕੁਰੀਆਈ ਦਾ ਸਰੀ ਬਣੀ ਬਦਲਦਾ ਦਿੰਦਾ ਹੁੰਦਾ ਸੀ ਤੀ ਕੀਤੀ ਉਸ ਤੇ ਬੇਤਰ ਤਲੇ ਬੇਤਰ ਤਲੇ ਥੱਲੇ ਰੋਣੇ ਹੋਰ ਦਿੰਦੀ ਕਿਸ ਸਭ ਨੂੰ ਉੱਪਰ ਨੂੰ ਚੜ੍ਹਦੀ ਉੱਪਰ ਨੂੰ ਚੜੋ ਉੱਚਿਆਂ ਥੱਲੇ ਦੀਆਂ ਜੁਨਾ ਜੋ ਉੱਤੇ ਨੂੰ ਆਓ ਉੱਤੇ ਨੂੰ ਲੈ ਕੇ ਜਾਂਦੀ ਸਭ ਨੂੰ ਬੋਲ ਨਿਵਾਹਣੀ ਅਸਟਾਇਲ ਅਠਾ ਹਥਾਜੇ ਹਥਿਆਰ ਚਲਦੇ ਅਠੇ ਗੁਣਾਂ ਦਾ ਇਸਤੇਮਾਲ ਹੋ ਰਹੇ ਆ ਅਠੇ ਗੁਣਾਂ ਨਾਲ ਉਗਲ ਘਟ ਰਿਹਾ ਹੈ ਸੰਸਾਰ ਦੇ ਘਟੇ ਜਾ ਰਹੇ ਆ ਅਠੇ ਗੁਣਾਂ ਦਾ ਇਸਤੇਮਾਲ ਕਰਕੇ ਬੋਲ ਨਿਵਾਹਣੀ ਬੋਲ ਨਿਵਾਹਣੀ ਜਿਹੜੇ ਬੋਲ ਨੇ ਜੋ ਕਹਿਤਾ ਉਹ ਕਰਨੇ ਬੰਦੇ ਵਿਚਾਰ ਮਖ ਚ ਦੋ ਅਡਾਡ ਗੱਲਾਂ ਨਹੀਂ ਹੈ ਜਨਮਨ ਹੋਰ ਮਖ ਹੋਰ ਸੇ ਕਾੜੇ ਕੱਚੇ ਜੋ ਬਣੇ ਚਾਹੀ ਬੂਚੇ ਜੋ ਕਰਨਾ ਹੋਈ ਕਹਣ ਬੋਲ ਨਵਾਣ ਜੋ ਕਰਨਾ ਨਹੀਂ ਹੋ ਕਹਿਣਾ ਨਹੀਂ ਜੋ ਕਰਨਾ ਨਹੀਂ ਹੋ ਕਹਿਣਾ ਹੀ ਨਹੀਂ ਜੋ ਕਹਿਣਾ ਤੇ ਫਿਰ ਕਰ ਲੋ ਵੀ ਬੋਲ ਨਵਾਣ ਸੰਤ ਪਨਾਹਣੀ ਸੰਤਾਂ ਨੂੰ ਪਨਾਹ ਦੇਣ ਵਾਲੀ ਹੈ ਪਨਾਹ ਦੇਣੀ ਪ੍ਰਾਯਤਤੀ ਸੀ ਨੋਤੇ ਰਾਇਰੇ ਪੜਨ ਤ ਸੰਤ ਬਣ ਕਹਿਦਾ ਹੈ ਜਿਹਨੇ ਵਣ ਕਿਹਾ ਤਾਂ ਇਹੀ ਆ ਵੀ ਅਸੀਂ ਅੱਜ ਤੋਂ ਗੁਰੂ ਘਰ ਦੇ ਨਾਲ ਅਸੀਂ ਆਪਣੀ ਵੱਤ ਛੱਡਤੀ ਹੈ ਮਨਤਾ ਬਣਾ ਲੈਂਦੇ ਅਸੀਂ ਗਲਤੀ ਕੀਤੀ ਹੁਣ ਸਿੱਧੀ ਅਪਣਾਈ ਗੱਲ ਤਾਂ ਨਾ ਆਹੀ ਸੀ ਬਤ ਤਾਂ ਉਹ ਦੇਵੀ ਦੀ ਮੂਰਤੀਓ ਪੂਰਤੀ ਬੰਦਦੇ ਨਾਕੀ ਕਹੋਦੇ ਤਾਂ ਕੁਛ ਨਹੀਂ ਸਾਰਾ ਹੀ ਉਹ ਮੂਰਤੀਓ ਰੱਖੀ ਬੈਠੇ ਨਾ ਬੋਲਦੇ ਤਾਂ ਹੀ ਨੇ ਸਭ ਕੁਝ ਅਰਥ ਨਹੀਂ ਦਫਾ ਕਰਦੇ ਅਸੋ ਆਗੋਈ ਬੋਲੀ ਜਾਂਦਾ ਨੇ ਉਹਨੂੰ ਦੇਖੀ ਜਾਂਦੇ ਨੇ ਵੀ ਇਹ ਉੱਠੂਗੀ ਇਹੀ ਕਰੂਗੀ ਜੋ ਕੁਝ ਕਰੂ ਪਰਮਚ ਪਾਇਆ ਲੋਕਾਂ ਨੂੰ ਜੇ ਆ ਕੋ ਜਾਰਤ ਕਰਦੇ ਨੇ ਫਿਰ ਆਪਣੀ ਵੈਲਿਊ ਨਹੀਂ ਰਹਿਦੀ ਫਿਰ ਚੜਾਵਾਰੀ ਚੜਦਾ ਉੱਥੇ ਮੂਰਤੀ ਨੂੰ ਫਿਰ ਉਹ ਲੈ ਬਲੋ ਕਹਿੰਦੇ ਕਿ ਨੀ ਚੱਕ ਦੋ ਇਹ ਤੇ ਕੀ ਕਰਾਉਣਾ ਜਿਹਨੂੰ ਚੱਕਦਾ ਵੀ ਆਪਣੀ ਰੋਜੀ ਰੋਟੀ ਦੀ ਜਲਦੀ ਲੋਕਾਂ ਨੇ ਮੈਨੂੰ ਮੂਰਤੀ ਦਾ ਕੀ ਕਰਾਉਣਾ ਇਹਨੂੰ ਚੱਕ ਦੋ ਇਹ ਉਹ ਜੱਗ ਲੰਦਾ ਜੇ ਮੂਰਤੀ ਦੀ ਤਾਂ ਬੁੱਧਰ ਵੀ ਹੈ ਨਹੀਂ ਬੁੱਧਰ ਨਹੀਂ ਰਹਿਦਾ ਉੱਧਰ ਮੂਰਤੀ ਨਾਲੇ ਹਨ ਉੱਧਰ ਤਾਂ ਹੀ ਆਇਆ ਜੇ ਮੂਰਤੀ ਹੈ ਜੇ ਮੂਰਤੀ ਨੇ ਰੋਟੀ ਨਹੀਂ ਰਹਿਣੀ ਦਾੰਦਾਰ ਨਹੀਂ ਪ੍ਰੋਬਲਮ ਹੋਰ ਨਹੀਂ ਕਈ ਵਿੱਚ ਹੋਦੀ ਸੰਤ ਪਨਾਹਣੀ ਗੂੜ ਗਤੇ ਸੰਤ ਪਨਾਹਣੀ ਗੂੜ ਗਤੇ ਸੰਤਾਂ ਨੂੰ ਪਨਾਹ ਦੇਣ ਵਾਲੀਆਂ ਜੈ ਗੂੜ ਗਤੀ ਹੈ ਐਸੀ ਤਰੀਕ ਮਤਲਬ ਡੂੰਗੀ ਮਤਲਬ ਗਤੀ ਹੈ ਡੂੰਗੀ ਕਿ ਸੰਤ ਤੇਰੇ ਕੋ ਆ ਕੇ ਬਣਾ ਬਗਦੇ ਸੰਤ ਕਹਿੰਦਾ ਨੇ ਅਸੀਂ ਸੰਤਾਂ ਨੂੰ ਚੱਕੀ ਖੜੇ ਹੋਰ ਵਾਲੀ ਆ ਸੰਤਾਂ ਨੂੰ ਪ੍ਰਨਾਥੂ ਦੇਣ ਵਾਲੀ ਸੰਤ ਕਹਿੰਦਾ ਨੇ ਸੰਸਾਰ ਹੈ ਸਾਡੇ ਸਿਰ ਤੇ ਖੜਾ ਹੈ ਉਹ ਕਹਿੰਦਾ ਨੇ ਸੰਸਾਰ ਸਾਡੇ ਸਿਰ ਤੇ ਸੰਤਾਂ ਦੇ ਸਿਰ ਤੇ ਖੜਾ ਜਸੰਤਰਾ ਹੁਣ ਸਦਾ ਨਹੀਂ ਰਹਿ ਸਕਦਾ ਉਹ ਕਹਨਾਂ ਸੰਤਾਰ ਕੋ ਨਾ ਦੇ ਵਾਲੀ ਤੋਂ ਇਹ ਗੁਰਮਤਿ ਦੀ ਗੱਲ ਹੈ ਗੁਰਮਤਿ ਇਹੀ ਕਹਿੰਦੀ ਹੈ ਸੰਤ ਕੁਛ ਨਹੀਂ ਹੈ ਸੱਤਤਾ ਹੈ ਇਹ ਨਹੀਂ ਮੈਂ ਨਹੀਂ ਕੁਝ ਹਾਂ ਨਹੀਂ ਉਹ ਕੁਝ ਆਇਆ ਨਹੀਂ ਬੇਰਾਜ ਆ ਜਿਹੜਾ ਸੰਤ ਕਹਿੰਦੇ ਮੇਰੇ ਸਿਰ ਤੇ ਸੰਸਾਰ ਖੜਾ ਹੋ ਤਾਂ ਹੰਕਾਰੀ ਐ ਸੰਤ ਕਾ ਨੂੰ ਓਹਦਾ ਸ਼ਰੀਰ ਹੈ ਖੁਦਾ ਐ ਓਹਦਾ ਸ਼ਰੀਰ ਹੈ ਖੁਦਾ ਐ ਉਹ ਸੰਤ ਨਹੀਂ ਐ ਓਹਦਾ ਆਦਾ ਬੜਾ ਲਾਸ਼ ਐ ਐ ਤੇ ਚਰਾਸ ਹੋਰ ਐ ਕਹਦਾ ਤੇ ਚਰਾਸ ਹੋਰ ਐ ਇਹ ਬੜਾ ਲਾਸ਼ ਸਮਝੀ ਲਾ ਕੇ ਬੰਦਾ ਜਿਹੜਾ ਚੇਲਾ ਹੁੰਦਾ ਓਹ ਹੈ ਨਹੀਂ ਉਹਦੇ ਸਾਰੇ ਜਿਹੜਾ ਧਨ ਨਾ ਸਵੇਿਆਂ ਜਾਊਗਾ ਸਵੇਿਆਂ ਜਾਊਗਾ ਕਿਸਾਨਾਂ ਦਾ ਤਰਮਾ ਆਪਣਾ ਹੜਾ ਪਕਰੀ ਜਾਂਦਾ ਜੈ ਜੈ ਹੋਸੀ ਮੈਕਾਉਸਰ ਮਰਦਨੀ ਆਦ ਅਨਾਦ ਅਗਾਧ ਜੈ ਜੈ ਹੋਸੀ ਮੈਕਾਉਸਰ ਮਰਦਨੀ ਹੈ ਮੈਕਾਉਸਰ ਮਰਦਨੀ ਤੇਰੀ ਜੈ ਜੈਕਾਰ ਹੋ ਰਹੀ ਹੈ ਕਿਉਂਕਿ ਤੂੰ ਆਤਲ ਹੈ ਕੇ ਆਦ ਅਨਾਦ ਦੀ ਅਨਾਦੀ ਹੈ ਅਗਾਧ ਬ੍ਰਤੇ ਅਗਾਧ ਹੈ ਤੇਰੀ ਜਿਹੜੀ ਬਿਰਤੀਏ ਸੋਚ ਹੈ ਰੋ ਕਿਸਾਨੂੰ ਨਹੀਂ ਅਗਲੇ ਪਲ ਜਤਾਏ ਕੀ ਤੇਰੀ ਬੁੜਕੀ ਬੁੱਦੀ ਤਾਂ ਪਰੇ ਦੀ ਗੱਲ ਹੈ ਤੇਰੀ ਖੇਡ ਹੈ ਸਾਰੇ ਤੇਰੀ ਖੇਡ ਬੁੜਕੀ ਬੁੱਦੀ ਤੋਂ ਸਮਝ ਤੋਂ ਪਰੇ ਹੈ ਦੁਖਦੋਖ ਪਰਵੱਛਣੀ ਸੇਵ ਕਰਛਣੀ ਸੰਤ ਪਰਤੋਛਣੀ ਸੁਧ ਸਾਰੇ ਦੁਖਦੋਖ ਪਰਵੱਛਣੀ ਦੁਖਦੋਖ ਨੂੰ ਖਾ ਜਾਂਦੀ ਹੈ ਤੂੰ ਲੁਕ ਲੋਕਾਂ ਨੂੰ ਕਿਵੇਂ ਖਾ ਜਾਂਦੀ ਹੈ ਧੁਕ ਵਿੱਚ ਪਾਇਆ ਤੇਲ ਧੁਕ ਦਾ ਤੇਲ ਹੈ ਜਾਂ ਜੋ ਜਲਦੀ ਹੈ ਫਿਰ ਕੀ ਕਰਦੀ ਹੈ ਧੁਕ ਖਤਮ ਹਮ ਤੇਲ ਸੁੱਕ ਜਾਂਦਾ ਔਰ ਉਹ ਜਾਨਾ ਨੂੰ ਸੋਖਿਆ ਹਾਂ ਔਰ ਬੇਗੁਦੀ ਪੈਦਾ ਹੀ ਦੁੱਖਾਂ ਨੂੰ ਖਾਂਦੀ ਹੈ ਦੁੱਖਾਂ ਨੂੰ ਖਾਂਦੀ ਹੈ ਸਾਥੇ ਨਾਮ ਕੀ ਲੱਗਾਇਆ ਭੁੱਖ ਉਹ ਤੂੰ ਭੁੱਖਾ ਉਹ ਤੂੰ ਭੁੱਖਾ ਖਾਈ ਚਲੀ ਖਾਂਦੀ ਨਾਮ ਕੀ ਭੁੱਖ ਹੈ ਦੁੱਖੇ ਖਾਂਦੀ ਸੇਵਕ ਸੇਵਕ ਰਛਣੀ ਸੇਵਕਾਂ ਦੀ ਰੱਖਿਆ ਕਰਨ ਵਾਲੀ ਆ ਰੱਖਿਆ ਕਰਨ ਵਾਲੀ ਆ ਸੰਤ ਪ੍ਰਤੱਖਣੀ ਸੰਤਾਂ ਨੂੰ ਪ੍ਰਤੱਖ ਹੋ ਕੇ ਦਰਸ਼ਨ ਦੇਣ ਵਾਲੀ ਸੰਤਾਂ ਦੇ ਹਿਰਦੇ ਚ ਪ੍ਰਤੱਖ ਪ੍ਰਗਟ ਹੋ ਜਾਂਦੀ ਏ ਸ਼ੁੱਧ ਸਾਰੇ ਤੂੰ ਸਾਰੂਪ ਸ਼ੁੱਧ ਸਾਰੂਪ ਸ਼ੁੱਧ ਗਿਆਨ ਸਰੂਪ शुद्ध गाम स्वरूप है हां सारंग सनाहे दुष्ट प्रदाहे अरि दल गाहे दोखारे सारंग सनाहे जड़े सारंग ने ना बबी है उदे सारंग पानी नु उदर ओ सनाहे ਸਨਾਹ ਹੁੰਦੀ ਹੈ ਸਨਾਹ ਰੰਗ ਨੂੰ ਕਹਿੰਦੇ ਨੇ ਉਹਨਾਂ ਨੂੰ ਆਪਣੇ ਨਾਮ ਵਿੱਚ ਰੰਗ ਲੈਂਦੀ ਮਨ ਸਾਰਾ ਜਿਹੜੇ ਤੇਰੇ ਪਿਆਸ ਹੈ ਜਿਹਨਾਂ ਨੂੰ ਨਾ ਤੇਰੇ ਨਾਮ ਦੀ ਪਿਆਸ ਹੈ ਉਹਨੂੰ ਰੰਗ ਵੀ ਤੇਰੇ ਹੀ ਛੜ ਜਾਂਦਾ ਸਨਾਹੇ ਦੁਸ਼ਟ ਪ੍ਰਦਾਹੇ ਜਿਹੜੇ ਦੁਸ਼ਟ ਨੇ ਤੈਨੂੰ ਨਫ਼ਰਤ ਕਰਦੇ ਨੇ ਉਹ ਛੜ ਜਾਂਦੇ ਨੇ ਕਾਲੇ ਹੋ ਜਾਂਦੇ ਨੇ ਬਾਦਸ਼ਾਹ ਨੂੰ ਕਹੇ ਨਾ ਗਾਲਾ ਕਿਉਂ ਹੋ ਗਿਆ ਤੂੰ ਕਿਉਂ ਕਾਲਾ ਹੋ ਗਿਆ ਉਹ ਕਹਿੰਦਾ ਜੇ ਤੋਂ ਮੈਂ ਪੈਦਾ ਹੋਇਆ ਸੀ ਨਾ ਜਲ ਤੋਂ ਯਾਰ ਮੇਰੇ ਚ ਉਹਦਾ ਮੇਰੇ ਨਾਲ ਸੰਬੰਧ ਟੁੱਟ ਗਿਆ ਜਿਹੜੇ ਹੁਕਮ ਨਾਲ ਮੈਂ ਪੈਦਾ ਹੋਇਆ ਦੀ ਹੁਕਮ ਦੇ ਨਾਲ ਮੇਰਾ ਹੁਣ ਲਿੰਕ ਨਹੀਂ ਰਿਹਾ ਤਾਂ ਕਾਲਾ ਹੋ ਗਿਆ ਪੈਦਾ ਕੀਤਾ ਉਹ ਹੁਕਮ ਹੁਕਮ ਬੋੜੀ ਸੀ ਬੋੜਨ ਪਾਣੀ ਦੀ ਪੈਦਾ ਹਦੇ ਜੜਾਂ ਚ ਪਾਣੀ ਨਹੀਂ ਰਿਹਾ ਉਹ ਕਾਲਾ ਹੋ ਗਿਆ ਜਿਹੜੇ ਦੁਸ਼ਟ ਨੇ ਨਫ਼ਰਤ ਕਰਦੇ ਨੇ ਹੁਕਮ ਨੂੰ ਸੱਚ ਨੂੰ ਤੇ ਉਹਨਾਂ ਦੇ ਕਾਲੇ ਹਉ ਲਈਏ ਅਰਦਾ ਲਗਾਏ ਦੋਖਾਂ ਨੇ ਅਰਦਾ ਲਗਾਏ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਦਲਾ ਨੂੰ ਗਾ ਰਦੀ ਕੋਈ ਮੂਰੇ ਨਹੀਂ ਬੋਲਦਾ ਬੋਲਦਾ ਨਹੀਂ ਮੂਰੇ ਚੁੱਪਰ ਹੋ ਜਾਂਦੇ ਨੇ ਦੇ ਕੋਨਾ ਸਾਰੇ ਗਾ ਕੇ ਆ ਨਾਨਕ ਕੋਈ ਬੋਲੇ ਸਾਰੇ ਗਾ ਕੇ ਆ ਗਏ ਸਾਰੇ ਦਰਿਆ ਗਾਹੀਆਂ ਆਨਗਨ ਦੇ ਗਾਪ ਆ ਗਿਆ ਆ ਗਿਆ ਸਾਰੇ ਕੋਈ ਨਹੀਂ ਬੋਲਿਆ ਅਰਦਰ ਕਾਹੇ ਗੰજન ਰੋਧ ਕਰਨ ਨੇ ਹੱਥ ਜੋੜ ਤੇ ਪਾਵੇ ਕਾਲ ਮੰਡੀ ਪਾਵੇ ਰੋਦੀ ਥੋੜੀ ਮੰਡੀ ਗੰજન ਗੁਮਾਨੇ ਅਤੁੱਲ ਪਰਵਾਨੇ ਸੰਤ ਜਮਾਨੇ ਆਦ ਅੰਤੇ ਗੰજન ਗੁਮਾਨੇ ਗੋਬਨ ਨੇ ਜਿਹੜਾ ਹੰਕਾਰ ਹੀ ਨੇ ਉ ਤੋੜ ਕੇ ਰੱਖ ਤੇ ਚੂਰ-ਚੂਰ ਕਰਦੇ ਜਿਹੜੇ ਪ੍ਰਵਾਨ ਨੇ ਤੇਰੇ ਪ੍ਰਵਾਨ ਹੋ ਜਾਂਦੇ ਨੇ ਤੁਲ ਪ੍ਰਵਾਨ ਨੇ ਹੋ ਜਾਂਦੇ ਉਹਨਾਂ ਨੂੰ ਨੀ ਫੇਰ ਕੋਈ ਤੋੜ ਸਕਦਾ ਉਹਨਾਂ ਦਾ ਟੋਲੇ ਮਿਲੇ ਨਹੀਂ ਜਾ ਸਕਦਾ ਤੁਲ ਪ੍ਰਵਾਨ ਜਿਹੜੇ ਤੇਰੇ ਪ੍ਰਵਾਨ ਨੇ ਤੇਰੇ ਤੇ ਆਪਰਾਪੀ ਨੂੰ ਤੇਰੇ ਤੇ ਰੁਸ਼ਾਵਰ ਕਰਤਾ ਸੰਤ ਜਮਾਨੇ ਲੋਗੇ ਸੰਤ ਜਮਾਨੇ ਆਦੰਤੇ ਸੰਤ ਜਮਾਨੇ ਜਿਹੜੇ ਸੰਤ ਨੇ ਜਮੇ ਆਉਂਦੇ ਨੇ ਆਪਣੀ ਪ੍ਰਗਟ ਹੋ ਜਾਂਦੇ ਨੇ ਜਦ ਪਦਾਰਥ ਪਾ ਲੈਂਦੇ ਨੇ ਆਦੰਤੇ ਆਦੰਤ ਤੋਂ ਇਹੀ ਕੰਮ ਤੇਰਾ ਸਿਰ ਉੱਤੋਂ ਲੈ ਕੇ ਸੰਤਾਂ ਨੂੰ ਜਨ ਪਦਾਰਥ ਦੇ ਕੇ ਆਪਣੇ ਸੱਚਖੰਡ ਦੇ ਜਿਹੜਾ ਜੰਮਿਆ ਆ ਬੂਟਾ ਉਹ ਸੱਚਖੰਡ ਦੇ ਵਿੱਚ ਚਾ ਕੇ ਗੜ ਦਿੰਦੇ ਐਦਰੋਂ ਪਟਿਆ ਤੇ ਉਧਰ ਲਾਤਾ ਜਾ ਕੇ ਤਾਂ ਪਨੀਰੀਓ ਪੈਦਾ ਹੁੰਦੀ ਐ ਐਦਾਂ ਤਾਂ ਪਨੀਰੀਓ ਪੈਦਾ ਹੁੰਦੀ ਐ ਇੱਥੇ ਤਾਂ ਅਗਰ ਸਾਗਰ ਹੈ ਨਾ ਅਗਰ ਸਾਗਰ 'ਚ ਪਨੀਰੀਓ ਪੈਦਾ ਹੋ ਸਕਦੀ ਐ ਜਾ ਕੇ ਤਾਂ ਉਧਰੇ ਲੱਗਦਾ ਰ जय जय होसी मैखा सुर मर्दन साध परदक्षण दुष्ट हते दुष्ट हते हते हते साध परदक्षण दुष्ट हते हां जय जय होसी मैखा सुर मर्दन साध परदक्षण जड़े साध ने ओ दछणा हुंदी है कोई देना जात देड़ी दछणा तोफे बंगू ना एक दछणा ਸਾਦਾ ਨੂੰ ਪਰਦਕਸ਼ਨ ਦਿੰਦੀ ਹੈ ਸਾਦਾ ਨੂੰ ਦਛਣਾ ਦਿੰਦੀ ਹੈ ਤਾਤਾਂ ਦਿੰਦੀ ਹੈ ਸਾਦਾ ਰੂਪ ਦੁਸ਼ਟ ਜਿਹੜੇ ਨੇ ਉਹਨਾਂ ਨੂੰ ਹੱਤ ਦਿੰਦੀ ਹੈ ਦੁਸ਼ਟ ਹੱਤ ਹੱਤਿਆ ਕਰਦੀ ਹੈ ਦੁਸ਼ਟਾਂ ਦੀ ਦੁਸ਼ਟਾਂ ਨਾਸ ਕਰਦੀ ਹੈ ਦਾ ਬਿਗਾਸ ਕਰਦੀ ਹੈ ਬਿਗਾਸ ਸਾਦਾ ਜਿ ਹੁੰਦਾ ਦੁਸ਼ਟਾਂ ਦਾ ਨਾਸ ਹੁੰਦਾ ਔਗਣਾਂ ਦਾ ਨਾਸ ਹੁੰਦਾ ਸ਼ੁਭ ਗੁਣਾਂ ਦਾ ਪ੍ਰਕਾਸ਼ ਜੇ ਸੁਪੂ ਬੋਰ ਨੇ ਉਹਨਾਂ ਦਾ ਪ੍ਰਗਾਸ ਹੁੰਦਾ ਉਹ ਘਣਾਉਂਦਾ ਨਾ ਹੁੰਦਾ ਜਿਨ੍ਹਾਂ ਨੇ ਉਹ ਘੜੀ ਚੱਟਣੇ ਦਾਸ ਲਈ ਕਰਾਣਾ ਉਹ ਤੇ ਤੋਂ ਭੱਜ ਜਾਂਦੇ ਨੇ ਦੂਰ ਪਰ ਜਿਹੜੇ ਨਹੀਂ ਖੜਦੇ ਫਿਰ ਉਹ ਉਹਦੇ ਹੀ ਹੋ ਜ਼ਰੇ ਤੇ